ਕੀਆਰਪੀ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:11 ਹੋਏ ਨੇ 30 ਜਨਵਰੀ ਦਾ ਦਿਨ ਅਰਾ 2014 ਦਾ ਦਿਨ ਸੋਮਵਾਰ ਹੈ ਨਿਗਾਹਾਦਕ ਸਵਾਗਤ ਹੈ ਜੀ 17 ਮਾਗ ਨਾਨਕਸ਼ਹਿ ਸਮਤ 548 ਅੱਜ ਤੁਹਾਡੀ ਆਪਣੀ ਸੱਤ ਦੇ ਵਿੱਚ ਅੱਜ ਖਬਰਾਂ ਖਬਰਾਂ ਦੇ ਨਾਲ ਖੁੱਲੀ ਵਿਚਾਰ ਚਰਚਾ ਹੋਣੀ ਹੈ 12 ਤੋਂ 1 ਵਜੇ ਤੱਕ ਪੰਜਾਬ ਦੇ ਪਾਣੀਆਂ ਦੀ ਲੁੱਟ ਅਗਲੀ ਕੜੀ ਜਿਸ ਦੇ ਵਿੱਚ ਸਟਾਰ ਜਸਵਿੰਦਰ ਸਿੰਘ ਵਿਦੇਸ਼ਾ ਸੁਨੀਲ ਜੀ ਪਹੁੰਚਣਗੇ ਇੱਕ ਤੋਂ 2 ਵਜੇ ਤੱਕ ਡੋਨਲਡ 트ੰਪ ਵੱਲੋਂ ਰਾਸ਼ਟਰਪਤੀ 트ੰਪ ਵੱਲੋਂ ਜਿਹੜੀ ਸੱਤ ਦੇਸ਼ਾਂ ਤੇ پابੰਦੀ ਲਾਈ ਹੈ ਉਹਦੇ ਬਾਰੇ ਉਹ ਕੀ ਹੈ ਉਸਦੇ ਕਾਰਨ ਕੀ ਨੇ ਤੇ ਉਹਦੇ ਨਾਲ ਫਾਇਦਾ ਕੁਫਾਇਦਾ ਕੀ ਹੈ ਫਰਕ ਕਿੰਨਾ ਪੈਣਾ ਉਹਦੇ ਸਾਰੇ ਤੱਥ ਤੁਹਾਡੇ ਸਾਹਮਣੇ ਕਰਾਂਗਾ ਪਹਿਲੇ ਹਿੱਸੇ ਦੇ ਵਿੱਚ ਖਬਰਾਂ ਕਿਊਬੈਕ ਦੇ ਵਿੱਚ ਹੋਈ ਇੱਕ ਮਸਜਿਦ ਤੇ ਹਮਲੇ ਹੋਏ ਹਮਲੇ ਦੀ ਗੱਲਬਾਤ ਵਿੱਚ 6 ਜਣੇ ਮਾਰੇ ਗਏ ਨੇ ਦੋ ਹਮਲਾ ਕਰਨ ਵਾਲੇ ਫੜ ਲਏ ਨੇ ਇੱਕ ਮੁਸਲਮ ਮੁੰਡਾ ਤੇ ਇੱਕ ਦੂਜੇ ਧਰਮ ਦਾ ਨਹੀਂ ਪਤਾ ਲੱਗਿਆ ਪਰ ਉਹਦੇ ਨਾਂ ਤੋਂ ਦੂਸਰੇ ਦੇ ਮੁਹੰਮਦ ਨਾਂ ਦਾ ਫੜਿਆ ਗਿਆ ਕਾਰਨ ਕੀ ਹੋਇਆ ਇਸ ਖੋਲਾਂਗੇ ਪੰਜਾਬ ਦੇ ਵਿੱਚ ਵਿਦਰੋਹ ਬਹੁਤ ਹੋ ਰਿਹਾ ਹੈ ਤਨਤਾਰਨ ਦੇ ਵਿੱਚੋਂ ਇੱਕ ਵੀਡੀਓ ਆਈ ਹੈ ਉੱਥੇ ਦਾ ਐਮ.ਐਲ.ਏ ਹਰਮੀਤ ਸੰਧੂ ਉਸ ਰੈਲੀ ਦੇ ਬਾਰੇ ਸਿੱਖ ਵੌਇਸ ਨੇ ਇੱਕ ਵੀਡੀਓ ਪਾਈਆ ਜਿਹਦੇ ਵਿੱਚ ਲੋਕਾਂ ਨੇ ਬਹੁਤ ਬਦਰੋਹ ਕੀਤਾ ਇਹ ਕਾਰਨ ਪਤਾ ਨਹੀਂ ਕੀ ਹੈ ਕਿ ਲੋਕ ਇੰਨੇ ਕਿਉਂ ਦੁਖੀ ਨੇ ਤੇ ਦੂਜੇ ਬੰਨੇ ਕਾਂਗਰਸ ਤੇ ਆਪ ਵੱਲੋਂ ਵੀ ਰਾਇਲੀਆਂ ਕੀਤੀਆਂ ਗਿਆ ਆਪ ਵੱਲੋਂ ਕੇਜਰੀਵਾਲ ਵੱਲੋਂ ਕਲਕੱਤਾ ਦੇ ਵਿੱਚ ਗੁਰਮੀਤ ਸਿੰਘ ਨਾਂ ਦੇ ਇੱਕ ਖੜਕੂ ਦੇ ਜਿਹੜਾ ਇੰਗਲੈਂਡ 'ਚ ਰਹਿ ਜਿਸ ਤੇ ਸਾਰੇ ਕੇਸ ਜਿਹੜਾ ਵਰੀ ਹੋ ਚੁੱਕਿਆ ਉੱਥੇ ਰਾਤ ਰਹਿਣ ਦੇ ਕਰਕੇ ਬੜਾ ਰੌਲਾ ਪਿਆ ਪਿਆ ਸੁਖਵੀਰ ਬਾਦਲ ਤੇ ਕੈਪਟਨ ਅਮੰਦਰ ਸਿੰਘ ਦੋਨੇ ਹੀ ਕਹਿੰਦੇ ਨੇ ਅੱਤਵਾਦੀਆਂ ਦੇ ਘਰੇ ਫਿਰਦਾ ਪੰਜਾਬ ਨੂੰ ਇਹ ਲੰਬੂ ਲਾਉ। ਆ ਰਾਜਨੀਤੀ ਕਿਰਤ ਨੂੰ ਜਾ ਰਹੀ ਹੈ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਮੱਝ ਅਤੇ ਦੁਆਬੇ ਦੇ ਵਿੱਚ ਕਿਹੋ ਜਿਹਾ ਹਾਲ ਹੈ? ਤਿੰਨੇ ਪਾਰਟੀਆਂ ਦਾ ਬਰਾਬਰ ਦੀ ਗੱਲ ਕਰਕੇ ਤੁਹਾਡੇ ਸਨਮੁਖ ਮੈਂ ਕਰਾਂਗਾ। ਕੋਸ਼ਿਸ਼ ਕਰਦਾ ਮੈਂ ਪਾਰਦਰਸ਼ੀ ਰਹਿਣ ਦੀ ਗੱਲ ਪਰ ਕਦੇ-ਕਦੇ ਜ਼ਗੀਰੋਪੂਆ ਨੂੰ ਕਹ ਤੇ ਔਖੇ ਹੋ ਜਾਂਦੇ ਬੰਦੇ। ਸੁਣ ਲਿਆ ਕਰੋ ਯਾਰ। krpioreadio.com ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਤੇ ਨਾਲ ਐਪ ਡਾਊਨਲੋਡ ਕਰ ਸਕਦੇ ਹੋ ਰਿਕਾਰਡਿੰਗ ਜਿਹੜੀ ਲੋਕ ਸਭ ਤੇ ਪੈਂਦੀ ਸੀ ਉਸ ਨੂੰ ਇੱਕ ਅੱਧੇ ਦਿਨ ਚ ਸੈੱਟ ਕਰਾਂਗੇ ਕਿਉਂਕਿ ਇੱਥੇ ਹੈ ਨਹੀਂ ਉਸ ਕੋਈ ਬਦਲ ਲੱਭ ਰਹੇ ਹਾਂ ਕਿ ਕਿਸ ਤਰ੍ਹਾਂ ਤੁਹਾਡੇ ਲਈ ਇਹ ਪ੍ਰੋਗਰਾਮ ਸਾਰਮੋ ਕੀਤਾ ਜਾਵੇ ਆਪਣੇ ਫੇਸਬੁਕ ਤੇ ਲਾਈਵ ਇਸ ਕੀਤਾ ਜਾਵੇ ਜਾਂ ਇਸ ਕੀ ਕੀਤਾ ਜਾਵੇ ਅੱਜ ਆਖਣ ਤੱਕ ਸੈੱਟ ਕਰ ਲਾਂਗੇ ਲਾਈਵ ਦੇ ਵਿੱਚ ਬਾੜੀ ਖਲਜਗਣ ਬਾੜਾ ਪੈ ਜਾਂਦਾ ਕਿਉਂਕਿ ਤੁਹਾਨੂੰ ਹਰ ਵਕਤ ਤੁਸੀਂ ਉਹਦੇ ਤੇ ਫਿਰ ਸਿੱਧਾ ਹੀ ਬਹਿਣਾ ਪੈਣਾ 2 2.5 ਘੰਟੇ ਉਹੱਖਾ ਨਹੀਂ ਤੁਹਾਡੇ ਫੋਨ ਕਾਲ ਆਫ ది ਏਅਰ ਆਉਂਦੇ ਰਹਿੰਦੇ ਨੇ ਕੋਈ مشورہ ਆਉਂਦਾ ਰਹਿੰਦਾ ਉਸ ਦੇਖਾਂਗੇ ਬਦਲ ਕੋਈ ਜਾਂ ਰਿਕਾਰਡਿੰਗ ਕਰਕੇ ਪਾਵਾਂਗੇ ਲਾਈ ਵੀਡੀਓ ਦੇ ਵਿੱਚ ਫਿਰ ਉਸ ਪੈਠ ਕਰਕੇ ਦਸ਼ਮਣ ਬਾਤ ਨਾ ਕਰ ਦਿੰਦੇ ਆ ਕਈ ਵਾਰ ਪਰ ਟੌਂਕਰ ਦੇ ਨਾਲ ਹਾਥੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤ ਟੌਂਕਰਦੇ ਆ ਮੈਂ ਤਾਂ ਮਿੰਤ ਤਰਲਾ ਕਰਦਾ ਵੀ ਬਾਕੀ ਜਹਾਜ਼ ਚੜ੍ਹ ਕੇ ਗਏ ਨੇ ਤੁਸੀਂ ਵੀ ਮੜਾ ਜਾ ਦੇਖਦੇ ਪਿੰਡ ਚ ਜਾ ਕੇ ਆਪਣੇ ਵੀ ਕੀ ਕਹਾਣੀ ਹੈ ਇੱਥੇ ਸਮਰਾਜਵਾਦ ਲੈਉਣ ਨਾਲ ਕੱਖ ਨਹੀਂ ਹੋਣਾ ਆਮ ਆਦਮੀ ਪਾਰਟੀ ਦੇ ਜਹਾਜ਼ ਭਰ गए ने ਨੇ ਪੰਜ ਸਤ ਤੁਸੀਂ ਉਹ ਤੁਸੀਂ ਵੀ ਜਹਾਜ਼ ਚੜ੍ਹ ਕੇ ਜਾ ਕੇ ਦੇਖਦੇ ਤਾਂ ਸਹੀ ਆਪਣੇ ਪਿੰਡ ਚੋਂ ਤਾਂ ਵੋਟਾਂ ਪਾਉਂਦੇ ਘੱਟੋ ਘੱਟ ਸਰਕਾਰ ਨੂੰ ਇੱਥੇ ਬੈਠਿਆਂ ਕਹਾਣੀ ਨਹੀਂ ਬਣਨੀ ਕਦੇ ਉਹ ਨੂੰ ਲਿਖਦਾ ਕਦੇ ਇਹ ਨੂੰ ਲਿਖਦਾ ਪੱਤਰਕਾਰ ਸਾਰੇ ਝੂਠੇ ਐ ਤੁਸੀਂ ਉਹ ਸੱਚੇ ਆ ਸਿਆਟਲ ਦੇ ਪੇਪਰ ਕਿਤੇ ਮਿਲ ਜਾਣ ਫਿਰ ਸੱਚ ਝੂਠ ਦਾ ਦੱਸ ਦਾਂਗੇ ਛੇਤੀ ਹੋਈ ਪਰ ਥੋੜਾ ਜੇ ਕੋਈ ਸਿੱਧਾ ਚੱਲਦਾ ਨੂੰ ਸਿੱਧਾ ਚੱਲਣ ਲਿਆ ਕਰ ਦੋ ਨਾ ਗਿੱਟਾ ਫੜਿਆ ਕਰੋ ਮੁੜ ਕੇ ਔਖੇ ਹੋਵੋਗੇ ਫਿਰ 1842471550 ਕੱਢ ਕੇ ਇੱਕ ਨਾਤਰੇ ਕਰਦੇ ਹਾਂ ਪੰਥ ਦੀਆਂ ਗੱਲਾਂ ਪਹਿਲਾਂ ਆਪਣੇ ਆਪ ਨੂੰ ਸ਼ੀਸ਼ੇ 'ਚ ਖੜ ਕੇ ਵੇਖਿਆ ਕਰੋ 18442471550 on air ਨੰਬਰ ਹੈ arp radio.com ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਤੇ ਨਾਲ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਕੋਈ ਨਾ ਕੋਈ ਸੁਖ ਸੁਨੇਹਾ ਕਲ ਦੇ ਰਹੇ ਨੇ ਹਰਜੀਤ.gi@krpiaradio.com ਇਹ ਈਮੇਲ ਹੈ। ਨਿਮਟਾੜ ਜੀ ਦਾ ਨੰਬਰ 6044406462 ਹੈ info@krpiaradio.com ਉਹਨਾਂ ਦੀ ਈਮੇਲ ਹੈ। ਤੂੰ ਹੀ ਮੇਰਾ ਦਿਨ ਚੰਨਾ ਤੂੰ ਹੀ ਮੇਰੀ ਰਾਤ ਵੇ ਤੂੰ ਹੀ ਐ ਸਵੇਰਾ ਮੇਰਾ ਤੂੰ ਹੀ ਪ੍ਰਭਾਤ ਵੇ ਤੂੰ ਹੀ ਮੇਰਾ ਚੰਨ ਚੰਨਾ ਤੂੰ ਹੀ ਮੇਰਾ ਤਰਾ ਵੇ ਤੂੰ ਹੀ ਮੇਰਾ ਸਾਹ ਤੂੰ ਹੀ ਐ ਸਹਾਰਾ ਉਹੀ ਸਵੇਰਾ ਮੇਰਾ ਤੂੰ ਹੀ ਔਕਾਤ ਵੇ ਉਹੀ ਮੇਰਾ ਦਿਨ ਚੰਨ ਤੂੰ ਹੀ ਮੇਰੀ ਰਾਤ ਵੇ ਤੂੰ ਹੀ ਕਿੰਪ ਰੰਦਾ ਮੇਰਾ ਤੂੰ ਹੀ ਮੇਰੇ ਬੰਦ ਵੇ ਤੂੰ ਹੀ ਫੁੱਲ ਤੇ ਤੂੰ ਹੀ ਸੁਗੰਧ ਵੇ ਤੂੰ ਸੁਗਾਤ ਵੇ ਉਹੀ ਮੇਰਾ ਦਿਨ ਚੰਨ ਤੂੰ ਹੀ ਮੇਰੀ ਰਾਤ ਵੇ ਤੂੰ ਆ ਪ੍ਰੀਤ ਨੰਜੀ ਤੂੰ ਹੀ ਮੇਰਾ ਗੀਤ ਵੇ ਤੂੰ ਹੀ ਐ ਰਿਵਾਜ ਮੇਰਾ ਤੂੰ ਹੀ ਮੇਰਾ ਰੀਤ ਵੇ ਤੂੰ ਧਰਮ ਮੇਰਾ ਤੂੰ ਹੀ ਮੇਰੀ ਜ਼ਾਤ ਵੇ ਤੂੰ ਹੀ ਮੇਰਾ ਦਿਨ ਚ ਨਾ ਤੂੰ ਹੀ ਮੇਰੀ ਰਾਤ ਵੇ ਤੂੰ ਹੀ ਐ ਸਵੇਰਾ ਮੇਰਾ ਤੂੰ ਹੀ ਪਰਵਾਤ ਵੇ ਨੰਜੀ ਢਾਲੀਵਾਲ ਲਿਖਦਾ ਧੰਨਵਾਦ ਤੁਹਾਡਾ ਸਾਰਿਆਂ ਜਿੱਥੇ ਵੀ ਬੈਠੇ ਸੁਣ ਰਹੇ ਹੋ ਤੁਸੀਂ 41 ਡਿਗਰੀ ਹੈ ਅੱਜ ਸਿਡਨੀ ਦੇ ਵਿੱਚ ਧਰਤੀ ਹੱਲੀ ਪਈ ਆ ਇੰਨੀ ਗਰਮੀ ਬਹੁਤ ਜ਼ਿਆਦਾ ਗਰਮੀ ਹੈ ਕੱਲ ਜਿਹੜਾ ਦਿਨ ਲੰਘ ਕੇ ਗਿਆ ਹੁਣ ਤਾਂ ਸੁਨੇਹਾ ਅੱਜ ਵੀ ਦਿਨ ਦੇ ਵਿੱਚ ਬਹੁਤ ਗਰਮੀ ਹੋਣੀ ਹੈ ਪਰ ਸਾਡੇ ਦੇਸ਼ ਦੇ ਵਿੱਚ ਬੜੀ ਕਸ਼ੀਦਗੀ ਰਹੀ ਵੀਕਐਂਡ ਤੇ ਉਧਰੋਂ ਡੋਨਲਡ ਟਰੰਪ ਵੱਲੋਂ ਬੈਨ ਕਰ ਦਿੱਤਾ ਲੋਕ 에ਰਪੋਰਟ ਤੇ ਫਸ ਗਏ ਬਾਹਰ ਵੀ ਨਾ ਆਉਣ ਦਿੱਤੇ ਤੇ ਫੇਰ ਜੱਜ ਤੇ ਵਕੀਲ ਇਹਦੇ ਵਿੱਚ ਬੜੇ ਡੈਮੋਕ੍ਰੇਟਸ ਦੇ ਜਿੰਨੇ ਵੀ ਸੈਨੇਟਰ ਨੇ ਉਹਨਾਂ ਨੇ ਵੀ ਰੌਲਾ ਪਾਇਆ ਰਿਪਬਲਿਕਨ ਦੇ ਵਿੱਚੋਂ ਵੀ ਮਕੇਨ ਸੈਨੇਟਰ ਨੇ ਰੌਲਾ ਸੈਨੇਟਰ ਨੇ ਰੌਲਾ ਪਾਇਆ 에ਰਪੋਰਟ ਤੇ ਉੱਤਰੇ ਬੰਦੇ ਛੱਡ ਦਿੱਤੇ ਪਰ ਸਭ ਤੋਂ ਵੱਡੀ ਮਾੜੀ ਘਟਨਾ ਜਿਹੜੀ ਕਿ ਦੇ ਵਿੱਚ ਹੋਈ ਇੱਕ ਮਸਜਿਦ ਦੇ ਵਿੱਚ 6 ਜਣੇ ਦੋ ਨੌਜਵਾਨ ਮੁੰਡਿਆਂ ਨੇ ਮਾਰ ਕਰਦੇ ਤੇ ਦੋਨੇ ਉਹਨਾਂ ਫੜ ਲਏ ਨੇ ਬਹੁਤ ਦੁੱਖ ਦੀ ਜਿਹੜੀ ਉਹ ਕਹਾਣੀ ਹੈ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹ ਬਹੁਤ ਅਸੀਂ ਟਾਈਟ ਜਿਹੜੇ ਸਾਡੀ ਨੈਟਿਡ ਕਮਿਊਨਿਟੀ ਹੈ ਜਿਹਦੇ ਵਿੱਚ ਅਸੀਂ ਸਾਰੇ ਪਿਆਰ ਦੇ ਨਾਲ ਰਹਿੰਦੇ ਆ ਇਸ ਸੈਂਟਰ ਜਿਹੜਾ ਦ ਸੈਂਟਰ ਕਲਚਰਲ ਇਸਲਾਮਿਕ ਦੀ ਕੁਬੈਕ ਜਿਹੜਾ ਉੱਥੇ ਦੇ ਸੈਂਟਰ ਦੇ ਵਿੱਚ ਜਿਹੜਾ ਫਰਾਂਚ ਦੇ ਵਿੱਚ ਉਹ ਲਿਖ ਕੇ ਰੱਖਦੇ ਆ ਤੇ ਉਸ ਤੇ ਰਾ ਦੀ ਜਿਹੜੀ ਹੈ ਪ੍ਰੇਅਰ ਹੋ ਰਹੀ ਸੀ ਤੇ ਦੋ ਜਣੇ ਦੇ ਵਿੱਚ ਆਵੜੇ 20 ਤੋਂ 30 ਸਾਲ ਦੀ ਉਹਨਾਂ ਦੀ ਉਮਰ ਦੱਸੀ ਦੀ ਹੈ ਲੋਕ ਬਹੁਤ ਦੁਖੀ ਨੇ ਇਹ ਵੀ ਇਹ ਕੀ ਹੋਇਆ 35 ਤੋਂ 70 ਸਾਲ ਦੀ ਉਮਰ ਦੇ ਵਿੱਚ ਦੇ ਛੇ ਜਣੇ ਆ ਤੇ ਹੋਰ ਵੀ ਜ਼ਖਮੀ ਹੋਇਆ ਲੋਕ ਭੈ ਪੀਤ ਨੇ ਗਰਾਉਂਡ ਫਲੋਰ ਤੇ ਇਹ ਹਮਲਾ ਹੋਇਆ 8 ਵਜੇ ਤੇ ਪੁਲਿਸ ਭੱਜ ਕੇ ਜਾਨੂੰ ਆਈ ਜਾਨੂੰ ਬੰਦਿਆਂ ਨੇ ਕੰਮ ਕਰ ਦਿੱਤਾ ਤੇ ਉਹ ਫੜੇ ਗਏ ਸਾਰਾ ਕੈਨੇਡੀਅਨ ਜਿਹੜਾ ਭਾਈਚਾਰਾ ਇਹਦੇ ਵਿੱਚੋਂ ਇੱਕ ਦਾ ਲੈਵਾਲ ਜੁਨੀਵਰਸਿਟੀ ਦੇ ਨਾਲ ਨਾਤਾ ਜਿਹੜਾ ਹਮਲਾ ਕਰਨ ਵਾਲਾ ਉਹ ਦੱਸਿਆ ਜਾਂਦਾ ਕਿਬੈਕ ਦਾ ਐਕਸੈਂਸੀ ਉਹਦਾ ਦੋਨਾਂ ਦਾ ਦੋਨੇ ਹੀ ਫੜ ਲਏ ਇੱਕ ਮੁਸਲਮ ਮੁੰਡਾ ਹੈ ਜਿਸ ਦਾ ਅਕਬਰ ਦੇ ਉਹਨਾਂ ਨੇ ਨਾਰੇ ਲਾਏ ਮਸਜਿਦ ਦੇ ਵਿੱਚ ਸਮਝ ਨਹੀਂ ਆਉਂਦੀ ਦੋਨਾਂ ਦੇ ਮੂੰਹ ਤੇ ਉਹਨਾਂ ਮੂੰਹ ਟਕੀ ਹੋਸੀ ਨਕਾਬ ਪਾਏ ਸੀ ਕਾਰਨ ਕੀ ਹੋਇਆ ਮਸਜਿਦ ਦੇ ਵਿੱਚ ਬਹੁਤ ਚਿਰਾਂ ਦੀ ਇਕ 集ੀਦਗੀ ਜਿੰਨੇ ਵੀ ਮੁਸਲਮ ਕਮਿਊਨਿਟੀ ਆ ਉਹ ਕਹਿੰਦੇ ਅਸੀਂ ਘੱਟ ਗਿਣਤੀ ਆ ਇੱਕ ਹੁਣੇ ਜਿਹੜੀ ਸ਼ੂਟ ਹੋਈ ਆ ਅਪਡੇਟ ਇੱਕੋ ਹੀ ਸੱਤ ਤੱਕ ਸਮਝ ਨਹੀਂ ਆਉਂਦੀ ਪਹਿਲਾਂ ਕਹਿੰਦੇ ਦੋ ਫੜਲੇ ਤੇ ਹੁਣ ਇੱਕ ਹੈ ਜਸਟ ਏ ਮਿੰਟ ਅਗੋ only one suspect in deadly quebec mosque shooting police said horas <laughs> nu khol ke dasda vapark nishaan to baad par kat ginti jehdi hai quebec de vich muslim bhai chara ohna di masjidan te vich synagogue de aldale jehde yahudiyan da prayer karan da jagah ohna de aldale slogans te swabast de nishan bada kush dikhaya gaya is ghatna to baad kyuki bahut vaddi premier ne ਕਿਆ ਕਿ ਇਹ terrorism ਦੀ ਘਟਨਾ ਦੂਜੇ ਵੱਨੇ ਸੱਤ ਦੇਸ਼ਾਂ ਤੇ ਪਾਬੰਦੀ ਆ ਜਿਹੜੀ ਉਹਦਾ ਬਹੁਤ ਰੌਲਾ ਅਮਰੀਕਾ ਵਾਲੇ ਪਾਸੇ ਪਿਆ ਉਸ ਖੋਲ ਕੇ ਗੱਲ ਮੈਂ ਤੁਹਾਨੂੰ ਸਮਝਾਵਾਂਗਾ 1 ਤੋਂ 2 ਤੱਕ 트럼ਪ ਦੇ ਉਹਦੇ ਪਿੱਛੇ ਕੀ ਕਾਰਨ ਨੇ ਆਮ ਨੀਤੀ ਘਾੜੇ ਕੀ ਕਹਿ ਰਹੇ ਨੇ ਇਹਦੇ ਵਿੱਚ ਹਲ ਦੀ ਤੇ ਕ੍ਰਾਈਸਿਸ ਦੀ ਜਿੱਤ ਹੋਵੇਗੀ ਜਿਹੜੀ ਸਦਾ ਕਹਿ ਰਹੀ ਹੈ ਕਿ ਮੁਸਲਮ ਧਰਮ ਦੇ ਖਿਲਾਫ ਵੈਸਟਰਨ ਵਰਲਡ ਹੈ ਇਹ ਕੀ ਹੋਏਗਾ ਅੱਗੇ ਉਸ ਦੇ ਸਾਰੇ ਪੱਖਾਂ ਤੋਂ ਤੁਹਾਡੇ ਸੰਮੁਖ ਗੱਲਬਾਤ ਕਰਾਂਗਾ ਫਿਰ ਤੁਸੀਂ ਸ਼ਾਮਲ ਹੋ ਕੇ ਉਸ ਹੋਰ ਵਧੀਆ ਬਣਾਇਓ 1843 247 1550 ਹੁਣ ਇਹ ਮੁਰਦਿਆਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਨਾਮ ਦੱਸੇ ਸੀ ਜੀ ਕਿ ਦੇ ਵਿੱਚ ਮਸਜਿਦ ਕਬਕ ਸ਼ਹਿਰ ਦੇ ਵਿੱਚ ਕਬਕ ਦੇ ਸ਼ਹਿਰ ਦੇ ਵਿੱਚ ਜਿੱਥੇ ਮਸਜਿਦ ਦੇ ਵਿੱਚ ਹਮਲਾ ਹੋਇਆ ਸੀ ਉੱਥੇ ਦੋ ਨਾਮ ਸੀ ਜਿਹੜੇ ਸੁਨੇਹਾ ਪੜੇ ਸੀ ਉਹ ਹੁਣ ਰਿਮੂਵ ਕਰ ਦਿੱਤੇ ਆ ਉਹਨਾਂ ਦੇ ਵਿੱਚੋਂ ਇੱਕ ਸਸਪੈਕਟ ਹੈ ਦੂਜਾ ਵਿਟਨੈਸ ਹੈ ਪੁਲਿਸ ਕਨਫਰਮ ਕਰੇਗੀ ਹਲੇ ਉਹ ਗੱਲ ਵਿੱਚੇ ਰਹਿ ਗਈ ਹੈ ਪੂਰੀ ਉਹ ਸਰੂ ਨਹੀਂ ਹੋਈ ਤਾਂ ਹੀ ਦੋ ਜਣੇ ਉਹਨਾਂ ਨੇ ਫੜੇ ਨੇ ਦੋਨੇ ਦੇ 20 ਤੋਂ 30 ਸਾਲ ਦੀ ਉਮਰ ਹੈ ਤੇ ਦੋਨਾਂ ਦੇ ਵਿੱਚੋਂ ਅਸਲ ਕੌਣ ਹੈ ਸਸਪੈਕਟ ਇਹ ਇਹਨਾਂ ਦੇਸ਼ਾਂ ਦਾ ਫਰਕ ਹੈ ਜਦ ਤੱਕ ਦੋਸ਼ੀ ਉਹ ਸਿੱਧ ਸਿੱਧ ਨਹੀਂ ਹੁੰਦਾ ਉਹਨੂੰ ਕਦੇ ਵੀ ਦੋਸ਼ੀ ਨਹੀਂ ਇਹ ਕਹਿੰਦੇ ਔਰ ਪਿਛਲੇ ਦੇਸ਼ ਦੇ ਵਿੱਚ ਜਿਹਦੇ ਘਰ ਕੇਜਰੀਵਾਲ ਨੂੰ ਨਹੀਂ ਠਹਿਰੇ ਕਲਕਾ ਵਿੱਚ ਉਹ ਮੁੰਡੇ ਤੇ ਦੋਨੇ ਨੇ ਜਿਹੜੇ ਉਹ ਰੱਦ ਹੋ ਚੁੱਕ ਨੇ ਇੰਗਲੈਂਡ ਉਹ ਰਹਿ ਰਿਹਾ ਔਰ ਬਾ ਇੱਜ਼ਤ ਉਹ ਕੀਤਾ ਹੋਇਆ ਉਹ ਦੋਨੇ ਹੀ ਉਹਨੂੰ ਦੋਨੇ ਲੀਡਰ ਸੁਖਵੀਰ ਤੇ ਕੈਪਟਨ ਅਮਰਿੰਦਰ ਦੋਨੇ ਉਹਨੂੰ ਅਤਵਾਦੀ ਕਹਿ ਰਹੇ ਤੁਸੀਂ ਇਹ ਵੇਖ ਲਓ ਹਾਲ ਇਹਨਾਂ ਦਾ ਲੋਕਾਂ ਦਾ ਜਿਸ ਨੂੰ ਬਾ ਇੱਜ਼ਤ ਬਰੀ ਕੀਤਾ ਅਦਾਲਤ ਨੇ ਉਹਨੂੰ ਵੀ ਦੋਨੇ ਹੀ ਉਹ ਹੱਤਵਾਦੀ ਕਹਿ ਰਹੇ ਨੇ ਤੇ ਇਹੀ ਕੈਪਟਨ ਕਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਹੈ ਤੇ ਦੂਜੇ ਭੋਗਾਂ ਤੇ ਜਾਂਦੇ ਰਹੇ ਨੇ ਥੱਲੇ ਨਾਂ ਲਿਖ ਲਿਖ ਕੇ ਵੱਡੇ ਬਾਦਲ ਸਾਹਿਬ ਵੀ ਮੈਂ ਜਾਣਾ ਵੱਡਾ ਬਾਦਲ ਇੱਕ ਇਨਸਾਫ ਕਹ ਤੇ ਲੋਕ ਗੁੱਸੇ ਹੋ ਗਏ ਮੈਂ ਫੇਰ ਵੀ ਸਤਕਾਰ ਹੈ ਵੱਡੇ ਨੇ ਚੱਲ ਕੋਈ ਗੱਲ ਨਹੀਂ ਵੱਡੇ ਬਾਦਲ ਹੁਣੀ ਭੋਗਾਂ ਤੇ ਜਾਂਦ ਰਹੇ ਨੇ ਜੀਤ ਦੀਆਂ ਕਾਪੀਆਂ ਸਾਂਭੀਆਂ ਪਈਆਂ ਹਲੇ ਵੀ ਲੋਕਾਂ ਨੇ ਕਿੱਥੇ ਪਹੁੰਚਣਾ ਭੋਗ ਤੇ ਕਿਹੜੇ ਖਾੜਕੂ ਦੇ ਪਤੇ ਨੇ ਵੀ ਬਥੇਰੇ ਪੈਸੇ ਕਮਾਏ ਨੇ ਜਦ ਤੇ ਹੁਣ ਉਹ ਰਾਤ ਕੱਟਣ ਤੇ ਬਹੁਤ ਰੌਲਾ ਪਿਆ ਹੋਇਆ ਇਹ ਤਾਂ ਜੀ ਪੰਜਾਬ ਨੂੰ ਫੂਕ ਦੂ ਗੱਲ ਇਹ ਆ ਵੀ ਉਹਨੇ ਵੜਿਆ ਹੋਇਆ ਹੁਣ ਸਾਰਾ ਕੁਝ ਲੋਕ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਵੋਟਾਂ ਦੀ ਗੱਲ ਬਹੁਤ ਦੂਰ ਆ ਹਰਮੀਤ ਸੰਧੂ ਵਰਗੇ ਐਮਐਲਏ ਦੀ ਤਨਤੰਤ ਜਿਹਦੇ ਹੀ ਬੋਲਤੀ ਬੰਦ ਕੀਤੀ ਇੱਕ ਪਿੰਡ ਦੇ ਵਿੱਚ ਉਹ ਫੋਟੋਆਂ ਦੇ ਵਿੱਚ ਉਹਨੂੰ ਸਿੱਖ ਵੌਇਸ ਨੇ ਪਾਇਆ ਤੇ ਕਿਵੇਂ ਲੋਕ ਭਗਾ ਭਗਾ ਕੇ ਕੁਰਸੀਆਂ ਮਾਰਦੇ ਆ ਚਲੋ ਉਹਦੇ ਵਿੱਚ ਫੋਟੋ ਉਸ ਨਹੀਂ ਦਿਖਾਈ ਸਿੱਧ ਨਹੀਂ ਹੋ ਰਿਹਾ ਵੀ ਹਰਮਿਤ ਸੰਧੂ ਹੈ ਸੀ ਉੱਥੇ ਨਹੀਂ ਪਰ ਸਟਿਲ ਉਹਦੀ ਰੈਲੀ ਦੀ ਉਹ ਫੋਟੋ ਹੈ ਇਸ ਤਰ੍ਹਾਂ ਹੀ ਹੋਰ ਵੀ ਦਾਖੇ ਹਲਕੇ ਦੇ ਵਿੱਚ ਰਾਤ ਨੂੰ ਉਹਨਾਂ ਨੇ ਇੱਕ ਕਾਰ ਖੇੜ ਲਈ 41 ਪੇਟੀਆਂ ਸ਼ਰਾਬ ਦੀਆਂ ਉਹਨਾਂ ਨੇ ਕੱਲੀ ਕੱਲੀ ਚੀਜ਼ ਕੱਢ ਕੇ ਦੱਸੀ ਵੀ ਆ ਵੇਖੋ ਉਹਦੇ ਕੋਈ ਹਲੇ ਤੱਕ ਵਿਰੋਧ ਤਾਂ ਨਹੀਂ ਹੋਈ ਵੀ ਸਾਡੀ ਸ਼ਰਾਬ ਨਹੀਂ ਸੀ ਸਾਡੀ ਕੀ ਆ ਕਿ ਬ੍ਰੈਡ ਆ ਜਿਹੜੀ ਕਿਤੀ ਬ੍ਰੈਡ ਬਣਾਉਣ ਵਾਲੀ ਇੱਕ ਫੈਕਟਰੀ ਚੰਡੀਗੜ੍ਹ ਰੋਡ ਤੇ ਲੁਧਿਆਣੇ ਨੂੰ ਜਾਂ ਨੀਲੋਂਪੁਰ ਤੋਂ ਪਿਛਲੇ ਪਾਸੇ ਨੂੰ ਕਟਾਣੀ ਦੇ ਕੋਲ ਉਹਦੇ ਹੀ ਗੱਡੀ ਦੇ ਵਿੱਚੋਂ 70 ਲੱਖ ਰੁਪਏ ਫੜੇ ਨੇ ਬ੍ਰੈਡ ਵਾਲੀ ਜਿਹੜੀ ਆਪਣੇ ਬ੍ਰੈਡ ਲਿਜਾਣ ਵਾਲੀ ਬ੍ਰੈਡ ਛੱਡ ਕੇ ਆਉਣ ਵਾਲੀ ਟਰੱਕ ਦੇ ਵਿੱਚ ਇਸੇ ਬਰੈਡ ਦੀ ਗੱਲ ਚੱਲੀ ਸੀ ਕਿ ਇੱਥੇ ਸੁਖਵੀਰ ਬਾਦਲੂ ਨੇ ਰੁਕੇ ਪਰ ਉਹਦੀ ਕੋਈ ਪੁਸ਼ਟੀ ਨਹੀਂ ਕਿ ਉਹਨਾਂ ਨੇ ਕੋਈ ਹਿੱਸਾ ਹੈ ਜਾਂ ਨਹੀਂ ਉਹ ਗੱਲਾਂ ਹੀ ਨੇ ਕਿ ਇੱਥੇ ਰੁਕੇ ਵੇ ਕੀਮਤ ਵਧਾ ਦਿਓ 2 ਰੁਪਏ ਮੈਂ ਲਵਾਂਗਾ ਫਿਰ ਇਹ ਚੀਜ਼ਾਂ ਬੇਬੁਨਿਆਦ ਨੇ ਜਦ ਤੱਕ ਕੋਈ ਸਿੱਧ ਨਹੀਂ ਕੋਈ ਕਾਗਜ਼ ਨਹੀਂ ਪੱਤਰ ਨਹੀਂ ਇਸ ਪ੍ਰਚਾਰਿਆ ਨਹੀਂ ਜਾ ਸਕਦਾ ਪਰ ਸਾਡੇ ਏਰੀਆ ਦੇ ਵਿੱਚ ਇਹ ਗੱਲ ਸੀ ਕਿੱਥੋਂ ਨਿਕਲੀ ਰੱਬ ਜਾਣਦਾ ਪਰ ਬਰੈਡ ਦੇ ਵਿੱਚੋਂ ਬਰੈਡ ਵਾਲੇ ਟਰੱਕ ਦੇ ਵਿੱਚੋਂ 70 ਲੱਖ ਰੁਪਏ ਫੜ ਹੋਇਆ ਇਹ ਮਿੰਟੂ ਰੂਸਰੀਆ ਨੇ ਦਿੱਤੀ ਹੁਣ ਇਹ ਖਬਰਾਂ ਜਿਹੜੇ ਪੱਤਰਕਾਰ ਪੰਜਾਬ ਦੇ ਦਿੰਦੇ ਨੇ ਉਦਾ ਇਹ ਨਹੀਂ ਮਤਲਬ ਹੈ ਕਿ ਉਹ ਇੱਕ ਧਿਰ ਦੀ ਗੱਲ ਕਰਦੇ ਕਾਰਨ ਇਹ ਹੈ ਕਿ ਲੋਕ ਦੁਖੀ ਜਦ ਹੋ ਜਾਂਦੇ ਆ ਹੁਣ ਸਾਰੇ ਪੱਤਰਕਾਰ ਨੇ ਜਿਹੜੇ ਉਹ ਇਉਂ ਤਾਂ ਨਹੀਂ ਕਹਿੰਦੇ ਪਿੰਡਾਂ ਦੇ ਵਿੱਚ ਵੀ ਤੁਸੀਂ ਇੱਥੇ ਅਕਾਲੀਆਂ ਨੂੰ ਬਣ ਦਿਓ ਜਾਂ ਇੱਥੇ ਕਾਂਗਰਸੀਆਂ ਨੂੰ ਬਣ ਦਿਓ ਇੱਥੇ ਆਮ ਨੂੰ ਨਾ ਬਣ ਦਿਓ ਆਮ ਆਦਮੀ ਪਾਰਟੀ ਦੇ ਕਿਸੇ ਰੈਲੀ ਤੇ ਮਜਾਰੇ ਹੁੰਦੇ ਨੇ ਬਿਲਕੁਲ ਕਾਲੀਆਂ ਝੰਡੀਆਂ ਉੱਥੇ ਵੀ ਵਾਗੇ ਪੁਰਾਣੇ ਤੋਂ ਟਿਕਟ ਦੇਣ ਦੇ ਖਿਲਾਫ ਨਿਹਾਲ ਸਿੰਘ ਵਾਲੇ ਜਿਹੜੀਆਂ ਕਾਲੀਆਂ ਛੰਡੀਆਂ ਦਿਖਾਈਆਂਗੇ ਉਸ ਦੀ ਗੱਲ ਹੋਈ ਬਾਗੇ ਪ੍ਰਾਣਿਓ ਕੰਗ ਨੂੰ ਟਿਕਟ ਦਿੱਤੀ ਉਹਦੀ ਗੱਲ ਹੋਈ ਫੂਲਕਾ ਉਹਨਾਂ ਦੀ ਗੱਲ ਜਿਹੜੀ ਗੱਲ ਹੋਣੀ ਆ ਉਹ ਹੋਣੀ ਹੈ ਉਹ ਰਟਾਉਲ ਆ ਇੱਕ ਦੜਬੇ ਤੋਂ ਚਿੱਟੀ ਦਾੜੀ ਆਉਂਦੇ ਪ੍ਰਕਾਸ਼ ਕੀਤੀ ਆ ਉਹ ਗੋਡੇ ਹੱਥ ਲਾ ਰਿਹਾ ਰੌਹਲ ਦੇ ਇਹ ਜੇ ਟੁੱਕੜ ਬੋਚ ਪਿੰਪ ਨਵਾਂ ਬੰਦਿਆਂ ਨੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਦਾੜੀਆਂ ਰੱਖੀਆਂ ਉਹ ਦੋ ਟਕੇ ਦੇ ਸ਼ੌਕਰੇ ਦੇ ਗੋਡੀ ਹੱਥ ਲਾਉਂਦੇ ਨੇ ਧਿਰਗ ਸਾਡਾ ਕਾਹਦਾ ਖਾਂਦਾ ਉਨੇ ਪਿਓ ਨੂੰ ਜਦ ਕਰਮਜੀਤ ਨੂੰ ਇਹਦੇ ਪਿਓ ਨੇ ਰਜੀਵ ਨੇ ਜਦ ਕਰਮਜੀਤ ਨੂੰ ਜੇਲ੍ਹ ਚ ਕਿਹਾ ਕਹਿੰਦਾ ਤੂੰ ਮੇਰੇ ਤੇ ਹਮਲਾ ਕਰਦਾ ਸੀ ਤੇ ਤੈਨੂੰ ਪਤਾ ਟਕੇ ਟਕੇ ਨੂੰ ਤੇਰੇ ਵਿਕਦੇ ਆ ਸਿੱਖ ਉਹ ਕਹਿੰਦਾ ਸਿੱਖ ਨਹੀਂ ਵਿਕਦੇ ਸਿੱਖਾਂ ਦੇ ਲੀਡਰ ਵਿਕਦੇ ਆ ਤੂੰ ਲੋਂਗੋ ਵਾਲੀਏ ਸਾਥ ਦੀ ਮੇਰੇ ਨਾਲ ਨਾ ਗੱਲ ਕਰ ਤੈਨੂੰ ਨਹੀਂ ਪਤਾ ਸਾਡਾ ਉਹਦਾ ਕਹਿੰਦਾ ਮੇਰੇ ਕੋਲ ਹੈ ਹੀ ਕੁਝ ਨਹੀਂ ਸਿਕਲੀ ਦਾ ਬਣਿਆ ਅਸੀਂ ਮੇਰੇ ਕੋਲ ਕਿਤੇ ਮੈਨੂੰ ਮਿਲ ਜਾਂਦੀ ਤੈਨੂੰ ਮੈਂ ਦੱਸਦਾ ਫਿਰ ਵੀ ਸਿੱਖ ਕੀ ਨੇ ਤੇ ਫਿਰ ਕਿਵੇਂ ਠੋਕਦੇ ਨੇ ਉਹ ਜਿਵੇਂ 12 ਦਿਨ ਉਹ ਰਕਤ ਤੇ ਚੜ ਕੇ ਕੀੜਿਆਂ ਦੇ ਭੌਣ ਤੇ ਬਹਿ ਕੇ ਤੈਨੂੰ ਉਡੀਕਦਾ ਰਿਹਾ ਪਤਾ ਤਾਂ ਤੈਨੂੰ ਲੱਗ ਜਾਣਾ ਸੀ ਪਰ ਫਿਰ ਵੀ ਇਹ ਸਾਡਾ ਕਿਉਂਕਿ ਹੁਣ ਗੱਲ ਆਮ ਲੋਕਾਂ ਦੇ ਤਾਂ ਕਿਸੇ ਦੇ ਸਨਮਖ ਹੋਣਾ ਨਹੀਂ ਨਾ ਹੋਣਾ ਤਾਂ ਇਹਨਾਂ ਨੇ ਆ ਸਨ ਜਿਵੇਂ ਮੈਂ ਇੱਥੇ ਰੌਲਾ ਪਾਉਣਾ ਵੀ ਜਿਹੜੇ ਤੁਹਾਡੇ ਚੁਣੇ ਹੋਏ ਨੇ ਇਹਨਾਂ ਨੇ ਤੁਹਾਨੂੰ ਰਿਪਰੈਜ਼ੈਂਟ ਕਰਨਾ ਤੁਹਾਨੂੰ ਥੱਲੇ ਲੈਵਲ ਨੂੰ ਤੁਹਾਨੂੰ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਉਹ ਕਿਰੇ ਇਹਦੇ ਵਿੱਚ ਇਹੀ ਆਉਣੇ ਨੇ ਜਿਹੜੇ ਕਾਇਆਂ ਤੇ ਬੋਤ ਤੇ ਸੂਟ ਪਾ ਕੇ ਇਹਨਾਂ ਨੇ ਉਹਦੀ ਕੰਨ ਬਲੇਲ ਕੀ ਕਰਨੀ ਹੈ ਲੀਡਰ ਦੀ ਉਹੀ ਗੱਲ ਹੋਣੀ। ਇਓ ਹੀ ਕਹਾਣੀ। ਲੰਗੋਆ ਵਾਲੀਏ ਨਾਲ ਬੈਠ ਕੇ ਸਾਧ ਨਾਲ ਉਹਨੇ ਗੱਲਾਂ ਕਰ ਲੀਆਂ ਹੋਣਗੀਆਂ ਸੁਣ ਲਿਆ ਹੋਊ ਜਾਂ ਮੀਟਿੰਗਾਂ ਜਿਹੜੀਆਂ 84 ਤੋਂ ਪਹਿਲਾਂ ਕੱਢ-ਕੱਢ ਕੇ ਜੇਲ੍ਹਾਂ ਦੇ ਵਿੱਚੋਂ ਇੰਟੈਲੀਜੈਂਸੀ ਦੇ ਬੰਦੇ ਨਾਲ ਕੀਤੀ ਹੋਈ ਕਹਿੰਦੇ ਕੱਢ ਲੋ ਸਾਧ ਨੂੰ ਅੰਦਰ ਕਰਦੇ ਹੋ ਹਮਲਾ ਤੇ ਉਹ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਉਹਦੇ ਕਰਕੇ ਸਾਡੀ ਫਿਰ ਸਾਨੂੰ ਇਹ ਕੌਮ ਨੂੰ ਉਹਨਾਂ ਨੇ ਗਰਦਾਨਿਆਂ ਦਾ ਵੀ ਤੇਰੇ ਅਸੀਂ ਜਾਣਦੇ ਆ ਲੀਡਰਾਂ ਨੂੰ ਜਾਰਦਾ ਮੈਂ ਤੁਹਾਨੂੰ ਇਹ ਰਜੀਵ ਨੇ ਸਿੱਧੀ ਕਰਮਜੀਤ ਨੂੰ ਇਹ ਗੱਲ ਕਹੀ ਸੀ ਕਰਮਜੀਤ ਨੇ ਇਖਸ਼ਾਫ ਕੀਤਾ ਇਹਨੂੰ ਪੁੱਛੋ ਜੇ ਕਹਿੰਦਾ ਤੈਨੂੰ ਨਹੀਂ ਪਤਾ ਕਿਹਨੇ ਕਿਹਾ ਉਹ ਕਹਿੰਦਾ ਤੂੰ ਲੀਡਰਾਂ ਦੇ ਭਲੇਖੇ ਕੌਮ ਨੂੰ ਨਾ ਕਹੀਂ ਆ ਕੌਮ ਆ ਹੁਣ ਜਿਹੜੀ ਪੰਜਾਬ ਦੇ ਵਿੱਚ ਤਰਸੱਲੀ ਮਚਾਈ ਬੈਠੀ ਐ ਇਹ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ दारू ਦਿੱਤੀ ਭੁੱਕੀ ਦਿੱਤੀ ਗੱਡੀਆਂ ਦਿੱਤੀਆਂ ਨਹੀਂ ਅਹਜਾ ਕੁਛ ਨਹੀਂ ਗਿੱਦੜਵਾਹ ਦੀ ਰੈਲੀ ਦੇ ਵਿੱਚ ਬਾਹਰਲੇ ਬੰਨੇ ਭੁੱਖੀ ਖਾਂਦੇ ਬੰਦੇ ਉਹਨਾਂ ਦੀ ਫੋਟੋਆਂ ਕਾਂਗਰਸ ਦੀ ਦੇ ਅੰਦਰ ਅਮਰਿੰਦਰ ਕੰਡ ਕਿੱਲਣ ਲੱਗਿਆ ਹੋਵੇ ਅਸੀਂ ਨਸ਼ਾ ਬੰਦ ਕਰਦੇਾਂਗੇ ਸੰਗਤਾ ਕਰੋ ਥੋੜੀ ਬਹੁਤੀ ਖੜੋ ਤਾਂ ਸਹੀ ਕਿਤੇ ਹਾਲ ਕੀ ਹੋਇਆ ਹੋ ਰਿਹਾ ਤੁਸੀਂ ਇਹ ਵੇਖੋ ਆਮ ਲੋਕ ਜੇ ਸੜਕਾਂ ਤੇ ਆ ਗਏ ਜੇ ਮੈਂ 10 ਸਾਲ ਪਿੰਡ ਦੀ ਸਰਪੰਚੀ ਕੀਤੀ ਆ 10 ਸਾਲ ਤੇ ਪਿੰਡ ਦੇ ਲੋਕ ਮੈਨੂੰ ਤੁਰੇ ਜਾਂਦੇ ਨੂੰ ਪਏ ਚੁੱਕੇਰਦੇ ਨੇ ਹਰਦੂ ਲਾਹਨਤ ਆ ਮੇਰੀ 10 ਸਾਲ ਦੀ ਸਰਪੰਚੀ 10 ਸਾਲ ਦੀ ਸੀਐਮ ਸ਼ਿਪ ਹੋਵੇ ਇੱਕ ਘਰ ਦੇ ਵਿੱਚ ਤੇ ਛੋਟ ਪੁੱਤ ਤੇ ਪਿਓ ਦੋਨੇ ਰੂਲ ਕਰਦੇ ਹੋਣ ਤੇ ਉਹਨਾਂ ਤੇ ਲੋਕ ਵਿਰੋਧ ਇੰਨਾ ਕਰ ਰਹੇ ਹੋਣ ਉਹਦੇ ਪਿੱਛੇ ਕੋਈ ਕਾਰਨ ਹੈ ਗੱਲ ਮੰਨਣੀ ਪਊ ਜੇ ਵਾਕਈ ਇੰਨਾ ਕੁਝ ਚੰਗਾ ਹੋਇਆ ਹੁੰਦਾ ਫਿਰ ਲੋਕ ਕਮਲੇ ਨਹੀਂ ਹੈ ਕਿਸੇ ਦੇ ਬਰਗਲਾਏ ਪੰਜਾਬ ਦੇ ਲੋਕ ਨਹੀਂ ਸੜਕਾਂ ਤੇ ਆਉਂਦੇ ਜਦ ਅੱਤ ਹੁੰਦੀ ਹੈ ਫਿਰ ਉਹ ਆਉਂਦੇ ਹੁਣ ਇਹਦਾ ਵੋਟਾਂ ਦੇ ਵਿੱਚੋਂ ਕੋਈ ਵੀ ਇਹਦਾ ਰਿਜ਼ਲਟ ਹੋ ਸਕਦਾ ਇਸ ਇਸ ਜਗ੍ਹਾ ਤੇ ਵਿਰੋਧ ਦੇ ਵਿੱਚੋਂ ਜਿੱਤ ਚਲਕਦੀ ਆ ਪਰ ਜਿੱਤ ਦਾ ਤਾਂ ਅਸਲ ਪਤਾ ਮਾਰਚ ਨੂੰ ਲੱਗਣਾ 10-11 ਨੂੰ ਵੀ ਕੀ ਕਹਾਣੀ ਬਣਦੀ ਆ ਵੋਟਾਂ ਕਿੱਧਰ ਪੈਂਦੀਆਂ ਨੇ ਇਕੱਠੇ ਪਾਉਂਦੇ ਆ ਇਕੱਲੇ ਪਾਉਂਦੇ ਆ ਵਰਖਾ ਦੱਤ ਨੇ ਟਵੀਟ ਕੀਤਾ ਕਿ ਸੀਨੀਅਰ ਅਕਾਲੀ ਲੀਡਰ ਨਾਲ ਮੇਰੀ ਗੱਲ ਹੋਈ ਆ ਕਿਸੇ ਨਾਲ ਉਹਨੇ ਕਿਹਾ ਵੀ ਜੇ ਅਸੀਂ ਹਾਰਦੇ ਦਿਖਾਂਗੇ ਤਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਵਾਂਗੇ ਨਾ ਕਿ ਕੇਜਰੀਵਾੜ ਇਹ ਹੁਣ ਮੈਂ ਨਹੀਂ ਕਹਿ ਰਿਹਾ ਵਰਖਾ ਦੱਤ ਦੇ ਟਵੀਟ ਤੇ ਉਹ ਮੈਨੂੰ ਨਹੀਂ ਪਤਾ ਇਹ ਅੱਗੇ ਕੀ ਹੋਣੀ ਆ ਰਿਸ਼ਤੇਦਾਰੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਤਣਗੇ ਨਹੀਂ ਜਿੱਤਣਗੇ ਵੋਟਾਂ ਨੇ ਪਰ ਅੱਜ ਦੀ ਘੜੀ ਪੰਜਾਬ ਦੇ ਪਿੰਡਾਂ ਦੇ ਵਿੱਚ ਠੀਕ ਹੈ ਕਿਤੇ ਕਿਤੇ ਹੋਊਗਾ ਜਿਨ੍ਹਾਂ ਜਿਹੜੇ ਜਿਹੜੇ ਬੰਦੇ ਜਿਹਦੇ ਸਪੋਰਟਰ ਨੇ ਉਹਨਾਂ ਨੂੰ ਆਪਣੀ ਪਾਰਟੀ ਵਧੀਆ ਲੱਗਦੀ ਆ ਨੋ ਮੈਟਰ ਵਟ ਪਰ ਜਿਸ ਤਰ੍ਹਾਂ ਐਨਆਰਆਈਜ਼ ਨੇ ਇੱਥੋਂ ਜਾ ਕੇ ਉੱਥੇ ਬਹੁਤ ਕੰਮ ਆਪਮ ਆਦਮੀ ਪਾਰਟੀ ਕੀਤਾ ਆਪਣੇ ਟਿਕਟਾਂ ਲੈ ਗਏ ਨੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਜਾਣਾ ਚਾਹੀਦਾ ਸੀ ਆਪਣੇ ਆਪਣੇ ਪਿੰਡ ਸਾਹਮਣੇ ਚਾਹੀਦੇ ਸੀ ਜਾ ਕੇ ਜਿਨ੍ਹਾਂ ਨੂੰ ਆਉਂਦੇ ਮਿਲੇ ਨੇ ਉਹ ਆਪਣੇ ਆਪਣੇ ਪਿੰਡਾਂ ਨੂੰ ਤਾਂ ਸੰਭੋ ਜਾ ਕੇ ਉੱਥੇ ਜਾ ਕੇ ਤਾਂ ਆਪਣੀ ਪਾਰਟੀ ਨੂੰ ਵੋਟਾਂ ਪਾਓ ਇੱਥੇ ਇੱਥੇ ਤਾਂ ਕੀਤੇ ਹੁਣ ਕੱਖ ਨਹੀਂ ਹੋਣਾ ਹੁਣ ਤਾਂ ਮੈਦਾਨ ਉੱਥੇ ਭਖਿਆ ਹੋਇਆ ਹਲੇ ਵੀ ਪੰਜ ਚਾਰ ਦਿਨ ਹੈਗੇ ਨੇ ਲਾ ਲੋ ਲਾਸਟ ਜੋਰ ਲਾ ਦਿੱਤਾ ਜਿਨ੍ਹਾਂ ਨੇ ਜਾਣਾ ਸੀ ਉਹ ਤਾਂ ਜਹਾਜ਼ ਭਰ ਕੇ ਚਲੇ ਗਏ ਹਾਂ ਰੂਬੀ ਤਾਂ ਲੱਗਈ ਹੋਈ ਆ ਰੂਬੀ ਤਾਂ ਕੰਮ ਕਰ ਰਹੀ ਆ ਬਹੁਤ ਉਹ ਤਾਂ ਪੰਜਾਬ 'ਚ 5-6 ਮਹੀਨੇ ਵੈਸੇ ਹੀ ਰਹਿੰਦੇ ਪੰਜਾਬ ਨੂੰ ਪਿਉ ਬਹੁਤ ਕਰਦੇ ਆ ਉਹ ਤੇ ਹੁਣ ਉਹ ਲੱਗੇ ਹੋਏ ਨੇ ਬਹੁਤ ਜ਼ੋਰ ਦੇ ਨਾਲ ਓਏ ਜਿਹੜੀ ਇਸ ਸਾਲ ਇਸ ਵਾਰ ਦੀ ਮੈਨੂੰ ਨਹੀਂ ਲੱਗਦਾ ਵੀ ਜੇ ਤੁਹਾਨੂੰ 92 ਵਾਲੀ ਇਲੈਕਸ਼ਨ ਯਾਦ ਹੋਵੇ ਹਾਲਾਂਕਿ ਬਾਈਕਾਡ ਦੇ ਵਿੱਚੋਂ ਸਰਕਾਰ ਬਣੀ ਸੀ ਵਿਅੰਸਿਆਂ ਦੀ ਇੰਨਾ ਵਿਰੋਧ ਲੋਕਾਂ ਨੇ ਨਾਲੇ ਸਾਡੇ ਕਤਲ ਹੋ ਰਹੇ ਸੀ ਇੰਨਾ ਵਿਰੋਧ ਜਦ ਵੀ ਲੋਕਾਂ ਨੇ ਉਹਨਾਂ ਐਮਐਲਏ ਦਾ ਨਹੀਂ ਕੀਤਾ ਜਿੰਨਾ ਹੁਣ ਹੋ ਰਿਹਾ ਵੱਡੇ ਵੱਡੇ ਬੰਦੇ ਉਹਨਾਂ ਨੇ ਲੋਕਾਂ ਨੇ ਘੇਰ ਲਏ ਉਹਨਾਂ ਦੇ ਸਨਮੁਖ ਨਹੀਂ ਲੋਕ ਹੋ ਰਹੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਲੋਕ ਦੁਖੀ ਨੇ ਆਤਰ ਹੋ ਗਏ ਲੋਕ ਕਿਸੇ ਨੇ ਬਰਗਲਾਇਆ ਹੋਗੇ ਨਹੀਂ ਬਰਗਲਾਇਆ ਨਹੀਂ ਪੰਜਾਬ ਦੇ ਲੋਕ ਹੁੰਦੇ ਨਾਲੇ ਨੂਰੇ ਜ਼ੂਰ ਕੱਠ ਚ ਲਾ ਮਰਜ਼ੀ ਆਪਣੀ ਕਰਦੇ ਆ ਪਰ ਹੁਣ ਜਦ ਉਹਨਾਂ ਦੇ ਅੱਖਾਂ ਦੇ ਮੂਹਰੇ ਤੱਬਰ ਮੁੱਕ ਰਹੇ ਨੇ ਉਹ ਚੀਜ਼ ਦਾ ਦੁੱਖ ਹੈ ਜਿਹੜਾ ਉਹਨਾਂ ਨੂੰ ਉਹ ਬਹੁਤ ਵੱਡਾ ਹਲੇ ਵੀ ਮੈਂ ਗੱਲ ਕਹਣਾ ਰਿਜ਼ਲਟਸ ਕੁਝ ਵੀ ਹੋ ਸਕਦੇ ਨੇ ਪਰ ਅੱਜ ਪੰਜਾਬ ਦੀ ਸਥਿਤੀ ਇਹ ਹੈ ਕਿ ਲੋਕ ਦੁਖੀ ਨੇ ਬਗਦਿਆਂ ਜਿਹੜੀਆਂ ਕੁਰਸੀਆਂ ਨੇ ਉਹ ਨਹੀਂ ਮੈਂ ਨਹੀਂ ਹੋਰ ਕਿਤੇ ਵੇਖੀ ਆ ਪਹਿਲੀ ਵਾਰ ਵੇਖ ਰਿਹਾ ਹਨੇ ਫੇਸਬੁੱਕ ਹੁਣ ਚੱਲੀ ਹੈ ਮਤਲਬ ਕਿਊਬੈਕ ਦੇ ਵਿੱਚ ਜਦ ਦਾ ਇਸ ਗੱਲ ਤੋਂ ਪਹਿਲਾਂ ਦੱਸਾਂ ਕਿ ਕੱਲ ਚਾਈਨੀਜ਼ ਨਮਾ ਵਰਾ ਜਿਹੜਾ ਉਹਨਾਂ ਆਇਆ ਗਿਆ ਤੇ ਬਹੁਤ ਵਧੀਆ ਇਸ ਬਾਰੇ ਪ੍ਰੇਡ ਹੁੰਦੀ ਹੈ ਤੇ ਚਾਇਨਾ ਟਾਊਨ ਚਾਇਨਾ ਟਾਊਨ ਚਾਇਨਾ ਡਾਊਨ ਟਾਊਨ ਦੇ ਵਿੱਚ ਤੇ ਜਿੱਥੇ ਸਿੱਖ ਰਾਈਡਰਸ ਆਫ ਕੈਨੇਡਾ ਦੇ 20 ਦੇ ਕਰੀਬ ਸਾਡੇ ਰਾਈਡਰਸ ਮੋਟਰਸਾਈਕਲਾਂ ਦੇ ਨਾਲ ਯਖ ਸਟੰਡ ਚ ਮੀਂਹ ਦੇ ਵਿੱਚ ਪਹੁੰਚੇ ਧੰਨਵਾਦ ਹੈ ਸਾਰੇ ਰਾਈਡਰਸ ਦਾ ਤੇ ਚਾਇਨਾ ਡਾਊਨ ਟਾਊਨ ਬਿਜ਼ਨਸ ਐਸੋਸੀਏਸ਼ਨ ਨੇ ਮਾਣ ਕੀਤਾ ਨਾਲ ਵੈਨਕੂਵਰ ਦੇ ਮੇਅਰ ਗ੍ਰੈਗਰ ਰੌਬਰਟਸਨ ਜਿਹੜਾ ਚਾਈਨਿਸ ਟ੍ਰੈਡਿਸ਼ਨਲ ਡਰੈਸ ਦੇ ਵਿੱਚ ਉਸਨੇ ਸਾਰੇ ਰਾਈਡਰ ਨੂੰ ਮਿਲ ਕੇ ਵਧਾਈਆਂ ਦਿੱਤੀਆਂ ਤੇ ਨਾਲ ਹੀ ਮੁੱਖ ਮੰਤਰੀ ਨੇ ਵੀ ਉਹ ਜੀ ਲਾਲ ਜੀ ਝੱਗੀ ਪਾਈ ਸੀ ਜਿਹੜੀ ਇਹ ਚਾਈਨਿਸ ਲੋਕ ਪਾਉਂਦੇ ਆ ਤੇ ਉਹ ਵੀ ਪਹੁੰਚੇ ਹੋਏ ਸੀ ਹੱਸਦੀ ਖੇਡਦੀ ਰਹਿੰਦੀ ਹੈ ਸਾਡੀ ਮੁੱਖ ਮੰਤਰੀ ਹਰਨਜੀਤਨ ਦੇਖਿਆ ਜਾਉ ਬੰਦਾ ਖੁਸ਼ ਚਾਹੀਦਾ ਹਰ ਵਕਤ ਤਾਂ ਬੰਦੇ ਹਾਰਨ ਦੇ ਡਰ ਦੇ ਮਾਰੇ ਹਰ ਵਕਤ ਤਿਉੜੀਆਂ ਹੀ ਨਹੀਂ ਕੱਢਦੇ ਉਹਦੇ ਚੋਂ ਕਿਹੜਾ ਫਿਰ ਜਿੱਤਿਆ ਜਾਣਾ ਹਸਪੇ ਨੇ ਪਹਿਲੀ ਵਾਰ ਜਿਤਾਤੀ ਸੀ ਕ੍ਰਿਸਟੀ ਕਲਾਰਕ ਵੇਖ ਲਓ ਕੰਮ ਇਹ ਆ ਸਮਾਈਲ ਦਾ ਇਹ ਮੁੱਲ ਹੈ ਖੁਸ਼ ਰਹਿਣਾ ਚਾਹੀਦਾ ਤੋਂ ਚਾਈਨੀਜ਼ ਲੋਕਾਂ ਦਾ ਇੱਕ ਪੱਕਾ ਹੈ ਗੱਲ ਉਹ ਰਹਿਣ ਜਿੱਥੇ ਵੀ ਦੁਨੀਆ ਦੇ ਵਿੱਚ ਇੱਕ ਤਾਂ ਬਾਸ਼ਾ ਨਹੀਂ ਆਪਣੀ ਛੜਦੇ ਇੱਕ ਆਪਣਾ ਵਰਾ ਆਪ ਚੜਾਉਂਦੇ ਆ ਉਹ ਜਿਸ ਦਿਨ ਉਹਨਾਂ ਦੀ ਡੇਟ ਆਉਂਦੀ ਹੈ ਇਹ ਗੱਲ ਉਹਨਾਂ ਨੂੰ ਇਹ ਮਾਣ ਹੈ ਇਸ ਗੱਲ ਦਾ ਸਾਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਕਿਹੜਾ ਸਾਲ ਚੜਾਉਣਾ ਜਨਵਰੀ ਚੜਾਉਣੀ ਹੈ ਕਿ ਸਾਡਾ ਚੇਤ ਤੋਂ ਸ਼ੁਰੂ ਜਿਹੜਾ ਨਾਨਕ ਸ਼ਹਿ ਸੰਮਤ ਸ਼ੁਰੂ ਹੋਣੀ ਆ ਉਹ ਕਿਉਂਕਿ ਹਰ ਜਗਨੇ ਇੰਨਾ ਪਤਾ ਕਿਹੜਾ ਕੈਲੰਡਰ ਮੰਨਣਾ ਕਿਹੜਾ ਨਹੀਂ ਕਿਹੜੀ ਬਾਣੀ ਪੜ੍ਹਨੀ ਆ ਕਿਹੜੀ ਨਹੀਂ ਇਹੋ ਜੀ ਪਗ ਬੰਨਣੀਆਂ ਕਿਹੋ ਜੀ ਨਹੀਂ ਸਰਬ ਲੋ ਪੌਣਾ ਕਿ ਦੂਜਾ ਕੜਾ ਪੌਣਾ ਕਿ ਸ਼ਹਿਰਾ ਜਿਹੜਾ ਰੇਵ ਗੋਡਿਆਂ ਤੱਕ ਹੋਵੇ ਜਾਂ ਕਿੱਥੇ ਤੱਕ ਹੋਵੇ ਪਤਾ ਹੀ ਨਹੀਂ ਖਲਜਗਣੇ ਧਰਮ ਤੋਂ ਲੋਕ ਡਰਨ ਲੱਗੇ ਲੋਕ ਆਕੀ ਹੋ ਗਏ ਤੇ ਜਿਨ੍ਹਾਂ ਨੇ ਸਾਹਮਣੇ ਸਾਨੂੰ ਪ੍ਰਚਾਰਕ ਤੁਰੇ ਫਿਰਦੇ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਉੱਪੜਦੇ ਆ ਫਿਰ ਉੱਪੜਦੇ ਆ ਜਦ ਹੁਣ ਅਰਦਾਸ ਮਲੂਕੇ ਨੇ ਬੋਲੀ ਕੋਈ ਦੀ ਮੰਜੀ ਸਾਹਿਬ ਤੋਂ ਬੋਲਿਆ ਇਕ ਬਹੁਤ ਉੱਚੀ ਸੁਰ ਦੇ ਵਿੱਚ ਪਿੰਦਪਾਲ ਸਿੰਘ ਬੋਲਦਾ ਕੱਢਿਓ ਕੋਈ ਹੈ ਰਿਕਾਰਡਿੰਗ ਕਿਤੇ ਕਿਤੇ ਕਹੀ ਹੋਵੇ ਕਿਉਂਕਿ ਉਧਰੋਂ ਭਾਈ ਦਾਇਕ ਮਿਲਿਆ ਹੋਇਆ ਨਾ ਖਿਤਾਬ ਤੇ ਇਹ ਹੋਰ ਹਾਂ ਜਿਹੜੇ ਬੋਲੇ ਨੇ ਉਹ ਤੁਹਾਡੇ ਸਾਹਮਣੇ ਨੇ ਅਮਰੀਕ ਸਿੰਘ ਚੰਡੀਗੜ੍ਹ ਬੋਲੇ ਆ ਤੋਂ ਸਾਹਿਬ ਵਾਲੇ ਭਾਈ ਸਾਹਿਬ ਨੇ ਪਰਮਜੀਤ ਸਿੰਘ ਉਹ ਬੋਲਿਆ ਸਦਾਰ ਮਾਜੀ ਬੋਲਿਆ ਜਿਨ੍ਹਾਂ ਨੇ ਤੇ ਬੋਲਿਆ ਇਹ ਜਿਹੜੇ ਕੋਲ ਬਹਿ ਕੇ ਬੋਲਦੇ ਰਹੇ ਨੇ ਮਲੂਕੇ ਦੇ ਏਰੀਆ ਦੇ ਵਿੱਚ ਕਿ ਸੱਚ ਕੀ ਹੈ ਦੇ ਦੋ ਉਪਾਧੀਆਂ ਜਿੱਡੀਆਂ ਮਰਜ਼ੀ ਉਪਾਧੀਆਂ ਨੇ ਬੰਦੇ ਨਹੀਂ ਬਣਾਉਣ ਬੰਦੇ ਦਿਲ ਦੇ ਵਿੱਚੋਂ ਬੋਲਦੇ ਐਨੀਵੇਜ਼ ਫੇਰ ਆਈਏ ਵਾਪਸ ਕਿ ਨਾਲ ਇਹ ਸਾਲ ਚੜਿਆ ਤੇ ਛੰਡੇ ਆਪਣਾ ਆਪ ਸਾਲ ਮਨਾਉਂਦੇ ਐ ਤੇ ਲੋਕਾਂ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਸਾਖ ਹੈ ਜਿਹੜੀ ਉਹ ਬਣਾ ਕੇ ਰੱਖਦੇ ਐ ਇਹਨਾਂ ਵੱਲ ਝਾਕਿਆ ਕਰੋ ਥੋੜਾ ਬਹੁਤ ਕਿ ਬੱਕ ਦੀ ਮਸਜਿਦ ਦੀ ਗੱਲ ਜਿੱਥੇ ਅੱਜ ਚੱਲ ਰਹੀ ਹੈ ਉਹਦੇ ਵਿੱਚ ਜਿੱਥੇ ਦੁੱਖ ਦੀ ਘੜੀ ਹੈ ਲੋਕ ਸਾਰੇ ਨਾਲ ਖੜੇ ਨੇ ਕੱਟ ਗਿਣਤੀਆਂ ਨੂੰ ਕੱਟ ਗਿਣਤੀਆਂ ਦੇ ਨਾਲ ਖੜਨਾ ਜ਼ਰੂਰ ਚਾਹੀਦਾ ਸਿੱਖਾਂ ਦਾ 84 ਜੂਨ ਨਵੰਬਰ ਆਉਂਦਾ ਹੈ ਜਾਂ ਹੋਰ ਕਿਤੇ ਕਤਲੋਗਾਰਦ ਸਾਡੀ ਹੁੰਦੀ ਹੈ ਚਿੱਟੀ ਸਿੰਘਪੁਰਾ ਦੇ ਨਿੰਗਦਾ ਮੈਂ ਨਹੀਂ ਸੁਣੀ ਕਿਸੇ ਗੱਲ ਕਿਤੇ ਵੀ ਹਾਂ ਜੀ ਆਹ ਜੀ ਆ ਸਾਡੀ ਮੁਸਲਮ ਐਸੋਸੀਏਸ਼ਨ ਆਏ ਰਲ ਕੇ ਅੱਜ ਸਿੱਖਾਂ ਦੇ ਨਾਲ ਖੜੀ ਹੈ 84 ਦੇ ਸੰਬੰਧ ਚ ਸਾਡਾ ਕੈਂਡਲ ਲਾਈਟ ਵਿਜ਼ਲ ਹੁੰਦਾ ਮੈਂ ਨਹੀਂ ਵੇਖਿਆ ਉੱਥੇ ਕੋਈ ਮੁਸਲਮ ਭਾਈ ਜਿਹੜਾ ਨਾਲ ਖੜਾ ਹੋਵੇ ਹਾਂ ਅਸੀਂ ਤੁਹਾਡੇ ਨਾਲ ਵੀ ਸਰਦਾਰੋਂ ਖੜਦੇ ਅਸੀਂ ਜੇ ਕੋਈ ਰੱਬ ਨਾ ਕਰੇ ਮਾੜੀ ਇਹ ਜੀ ਘਟਨਾ ਹੋ ਜਵੇ ਅਸੀਂ ਪੱਬਾ ਤੇ ਹੁੰਨੇ ਬੋਰਿਆ ਬਿਸਤਰਾ ਲੈ ਕੇ ਸਭ ਤੋਂ ਅੱਗੇ ਸਵੇਰ ਤੇ ਘਟਿਆਂ ਵੱਢੀ ਟਾਕਸੋ ਚੱਲ ਰਹੇ ਨੇ ਪਰ ਯਾਦ ਰੱਖਣਾ ਚਾਹੀਦਾ ਘੱਟ ਗਿਣਤੀ ਤਾਂ ਘੱਟ ਗਿਣਤੀ ਹੀ ਹੈ ਜੇ ਇੱਕ ਦੂਜੇ ਨਾਲ ਖੜਾਂਗੇ ਤਾਂ ਹੀ ਸੌਖੇ ਰਹਿਾਂਗੇ ਨਾ ਭੁੱਲਿਆ ਕਰੋ ਜੇ ਉੱਥੇ ਵੀ ਹਾਂ ਸਾਡੇ ਤੇ ਵਕਤ ਮਾੜੇ ਚ ਕੋਈ ਬੰਦਾ ਬੋਲ ਦੇਵੇ ਪਰ ਉਹ ਇਹਨਾਂ ਦੀ ਜੜ ਅਸੀਂ ਥੱਲੇੋਂ ਕੱਢਣੀ ਹੈ ਜਦ ਉਹ ਫੀਲਿੰਗ ਹੈ ਫਿਰ ਕਹਾਣੀ ਨਹੀਂ ਬਣਦੀ ਜਾ ਸ਼ੇਰ ਆਉਂਦਾ ਹੈ ਪਿੰਡ ਵਾਲੇ ਇੱਕ ਦੋ ਵਾਰ ਉੱਠਦੇ ਤੀਜੀ ਵਾਰ ਨਹੀਂ ਉੱਠਦੇ ਕਹਾਵਤ ਹੈ ਆਪਣੀ ਹੋਏ ਬਹੁਤ ਤਖੜੀ ਆਪਣੀ ਸਾਂਝ ਹੈ ਖਾਸ ਤੌਰ ਤੇ ਲੈਦੇ ਪੰਜਾਬ ਦੇ ਵਿੱਚ ਜਿੱਥੇ ਸਾਡੇ ਅਸੀਂ ਅਜ਼ਲਾਂ ਤੋਂ ਰਹਿੰਦੇ ਆ ਸਾਡੇ ਮੁਕੱਦਸ ਸਥਾਨ ਨੇ ਤੇ ਬਹੁਤ اٹਟ ਸਾਂਝ ਹੈ ਸਾਹਿਬ ਦੀ ਜਗਾ ਜਿਹੜੀ ਬਣੀ ਹੈ ਸਭ ਤੋਂ ਵੱਡੀ ਦੁਨੀਆ ਦੇ ਲੋਕ ਧਾਕੇ ਆਉਂਦੇ ਚਾਰੇ ਵਰਨਾਂ ਨੂੰ ਸਾਂਝਾ ਉਹਦੀ ਇੱਟ ਮੁਸਲਮ ਫਕੀਰ ਨੇ ਰੱਖੀ ਸਾਡੀਆਂ ਬਹੁਤ ਸਾਂਝਾਂ ਨੇ ਪਰ ਇਹ ਨਵੰਬਰ ਜੂਨ ਸੈਂਡਲ ਲਾਈਟ ਵਿਜ਼ਲ ਇਹਦੇ ਵਿੱਚ ਯਾਦ ਰੱਖਿਆ ਕਰੋ ਮੱਥਾ ਨਾ ਟੇਕਿਆ ਜਿੱਦਣ ਗੁਰਦੁਆਰੇ ਗੱਲਾਂ ਹੁੰਦੀਆਂ ਕਾਨਫਰੰਸਾਂ ਹੁੰਦੀਆਂ ਉਹਦੇ 'ਚ ਆਇਆ ਕਰੋ ਦੋ ਚਾਰ ਬੰਦੇ ਜਿਹੜੇ ਰਾਜਨੀਤੀ ਤੌਰ ਤੇ ਸਰਗਰਮ ਨੇ ਉਹਨਾਂ ਤੋਂ ਬਿਨਾਂ ਕੋਈ ਨਹੀਂ ਬੋੜਦਾ ਪਰ ਅਸੀਂ ਸਾਨੂੰ ਇਹ ਗੁਰੂ ਨੇ ਗੱਲ ਦਿੱਤੀ ਹੈ ਕਿ ਅਸੀਂ ਹਾ ਦਾ ਨਾਹਰਾ ਚੜ੍ਹਦੀ ਕਲਾ ਦੇ ਵਿੱਚ ਸਦਾ ਜ਼ੁਲਮ ਦੇ ਖਿਲਾਫ ਖੰਡ ਦੀ ਸਾਨੂੰ ਵਿਦਵਤਾ ਹੈ ਸਾਇਦ ਸਾਡੇ ਪੱਲੇ ਢੇਲਾ ਨਹੀਂ ਫੇਰ ਵੀ ਅਸੀਂ ਮੇਲਾ ਮੇਲਾ ਕਰਨੋਂ ਨਹੀਂ ਹਟਦੇ ਅਸੀਂ ਖੜਦੇ ਆਂ ਜਦ ਕੱਲਾ ਹੋਵੇ ਕੱਲਾ ਹੀ ਨਹੀਂ ਮਾ ਉਹ ਕਹਿੰਦਾ ਜਿਹੜੀ ਗੱਲ ਸਹੀ ਆ ਉਹ ਸਹੀ ਹੈ ਉਹ ਇਹ ਜਿਹੜੀ ਘਟਨਾ ਬਹੁਤ ਮਾੜੀ ਹੋਈ ਆ ਵੱਡੀ ਕਮਿਊਨਿਟੀ ਜਿੱਥੇ ਰਹਿੰਦੀ ਆ ਜਿਸ ਤਰ੍ਹਾਂ ਸਰੀ ਦੇ ਵਿੱਚ ਬਹੁਤ ਵੱਡੀ ਮੁਸਲਮ ਕਮਿਊਨਿਟੀ ਆ ਉਹਨਾਂ ਨੂੰ ਰਲ ਕੇ ਕੁਝ ਵਧੀਆ ਇਹਦੇ ਲਈ ਪ੍ਰੋਟੈਸਟ ਜਾਂ ਕੋਈ ਕਿਵੇਂ ਕੁਝ ਵੀ ਜਾਂ ਲੋਕਲ ਜਿਹੜੀਆਂ ਕਨਸਰਨਡ ਤੁਹਾਡੇ ਸਿਟੀ ਆ ਜਾਂ ਪ੍ਰੀਮੀਅਰ ਆ ਉਹਨੂੰ ਗੱਲ ਕਰਨੀ ਚਾਹੀਦੀ ਆ ਕਿ ਸਾਡੀਆਂ ਮਸਜਿਦਾਂ ਤੇ ਵੀ ਪੁਲਿਸ ਦੀ ਨਿਗਰाह ਚਾਹੀਦੀ ਆ ਔਰ ਪੂਰੀ ਉਹਦੇ ਸਰਵੇਲੈਂਸ ਵੀਡੀਓ ਕੈਮਰੇ ਵਗੈਰਾ ਸਾਰੇ ਚਾਹੀਦੇ ਇੱਥੇ ਕੁਝ ਨਹੀਂ ਪਤਾ ਕਦ ਇਸ ਤਰ੍ਹਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਇਸ ਤੀ ਕਹਾਣੀ ਚਾਹੀਦੀ ਆ ਪਤਾ ਨਹੀਂ ਕਦ ਕਦ ਮੰਦ ਮੰਦ ਦੇ ਵਿੱਚ ਵਧੀ ਉੱਠ ਖੜਨੀ ਹੈ ਔਰ ਇਹ ਆ ਸਾਲ ਆ ਜਿਹੜਾ ਇਸ ਔਖਾ ਦੀ ਉਹ ਉੱਧ ਐਗਜ਼ੈਕਟ ਬਾਰਡਰ ਤੇ ਆਰਡਰ ਉਹਨੇ ਚਾੜੀ ਜਾੜੇ ਨੇ ਵਾਈਟ ਹਾਊਸ ਚ ਸਰਪੰਚ ਬੈਠਾ ਤੇ ਉਹਦੇ ਵਿੱਚੋਂ ਕੀ ਨਿਕਲਣੀ ਆ ਪਤਾ ਨਹੀਂ 6.5 ਇੰਚ ਦੇ ਤਾਂ ਲੰਬੇ ਦਸਤਕਤ ਨੇ ਪਤਾ ਹੀ ਨਹੀਂ ਕਿਵੇਂ ਬੋਂਦਾ ਇਫੇਰ ਦਿਖਾਉਂਦਾ ਵੀ ਆ ਵੇਖੋ ਜਿਹੜੀ ਗੱਲ ਕਹੀ ਕਰਤੀ ਜਿਹੜੇ ਬੰਦਿਆਂ ਨੇ ਵੋਟ ਪਾਈ ਐ ਉਹਨਾਂ ਦੇ ਸਾਰੇ ਦੇ ਦਿਲ ਜਿੱਤੀ ਪੁਰਿਆ ਜਾਂਦਾ ਡੋਨਲਡ 트াম্প ਕਾਰਨ ਕੁਰਸੀਆਂ ਪੈਂਦੀਆਂ ਜੈਜ਼ ਖੋਸਾ ਲਾਈਨ ਨੰਬਰ 2 ਤੁਸੀਂ ਇਰ ਤੇ ਹੋ ਹਾਂਜੀ ਭਾਈ ਮੈਂ ਮੜ ਕੇ ਗੱਲ ਕਰਨ ਸੀ ਇੰਡੀਆ ਦੇ ਇਲੈਕਸ਼ਨ ਬਾਰੇ ਮੈਂ ਬਸ ਹੁਣ ਆਇਆ ਆ ਮੁੜ ਕੇ ਕਿ ਮੈਂ ਉਹ ਤੇ ਹਫਤਾ ਲਾ ਕੇ ਆਇਆ ਤੇ ਉਸ ਹਫਤੇ ਦੇ ਵਿਚ ਵਿੱਚ ਇੰਨਾ ਯਾਦਾ ਫਰਕ ਪੈ ਗਿਆ ਸੀ ਵੀ ਮੈਂ 3 ਦਿਨ ਪਹਿਲਾਂ ਪਿੰਡ ਲਾ ਕੇ ਆਇਆ ਉੱਥੇ ਜਿੰਨੀ ਮੈਥੋਂ ਕੋਈ ਸਪੋਰਟ ਅੱਜ ਇਸ ਐਨ ਆਰ ਆਈ ਉੱਥੇ ਵਾਕਈ ਸਪੋਰਟ ਕਰ ਚੱਲਿਆ ਗਿਆ ਮੈਨੂੰ ਯਾਦ ਜੋ ਅਕਾਲੀਆਂ ਦੇ ਹੁਣ ਉੱਥੇ ਲੀਡਰ ਬਣ ਕੇ ਸਾਰੇ ਪਿੰਡਾਂ ਨੂੰ ਕਹਿਣ ਦੇਣੀ ਇਹਨਾਂ ਨੂੰ ਗੋਰਪਨ ਪਰ ਹੁਣ ਉੱਥੇ ਵਾਕਈ ਮਹਿਸੂਸ ਹੋਇਆ ਵੀ ਉੱਥੇ ਜਾ ਕੇ ਅਸੀਂ ਇਹਨਾਂ ਨੂੰ ਵਾਕਈ ਸਪੋਰਟ ਕਰਦੇ ਹਾਂ ਉਹਨਾਂ ਦੀ ਆਪ ਦੀ ਸੋਚ ਸੀ ਆਪ ਸਾਰਾ ਕੋ ਸੀ ਤੇ ਆਣੀਆਂ ਵੋਟਰ ਤੋਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਜਿਹੜੇ ਕਾਂਗਰਸੀ ਕਹ ਲੋ ਵੀ ਐਲਡਰ ਸੀਗੇ ਉਹਨਾਂ ਦੀ ਮਟੀਰ ਨੇ ਤਾਂ ਆਪ ਨੂੰ ਪਾਇਨ ਸ਼ੋ ਉਹ ਤਾਂ ਕੈਨਸਲ ਆਊਟ ਹੋਈ ਜਾਂਦੀਆਂ ਸੀਗੀਆਂ ਤੇ ਸਾਡੇ ਮਾਲਵੇ ਏਰੀਆਸ ਤਾਂ ਆਪ ਦਾ ਬਹੁਤ ਸਟਰੈਂਥ ਸੀ ਪਰ ਫਿਰ ਮੈਂ ਟੈਂਡੈਂਟ ਪੈਂਡ ਲਾ ਕੇ 2 ਦਿਨ ਚੰਦੀ ਲਾ ਕੇ ਆਇਆ ਤੇ ਜਿਉ ਮੁੜ ਕੇ ਆ ਫਿਰ ਕਹ ਲੋ ਵੀ ਸਟਰੀ ਲੈਵਲ ਬਸ ਗੋਇੰਗ ਗੋਇੰਗ ਆ ਤੇ ਹੁਣ ਜਿਵੇਂ ਜਿਵੇਂ ਦਿਨੋਂ ਦਿਨ ਆਈ ਲੱਗਦਾ ਵੀ ਆਪ ਵਾਲਿਆਂ ਦੀ ਸਟਰੈਂਥ ਵਧੀਆਂ ਜਾਂਦੀ ਹੈ ਅੱਛਾ ਲੋਕਾਂ ਦਾ ਜਿਹੜਾ ਵਿਰੋਧ ਹੈ ਤੁਸੀਂ ਮਾਲਵੇ ਦੇ ਵਿੱਚ ਐ ਤਲਵੰਡੀ ਭਾਈ ਕੋਲ ਪਿੰਡ ਆ ਤੁਹਾਡਾ ਮੈਨੂੰ ਐ ਦੱਸਿਓ ਕਿ ਵਿਕਾਸ ਦੇ ਨਾਂ ਤੇ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਮੈਂ ਅਸੀਂ ਕੀਤਾ ਵਿਕਾਸ ਦਸਾਂ ਸਾਲਾਂ ਚ ਸੜਕਾਂ ਬਣਾਤੀਆਂ ਸਗਨ ਸਕੀਮ ਜੀ ਸੁਵਿਧਾ ਸੈਂਟਰ ਬਣਾਤਾ ਬਹੁਤ ਕੁਝ ਗਿਣਦੇ ਆ ਔਰ ਸੜਕਾਂ ਬੜੀਆਂ ਵੀ ਦਿਖਦੀਆਂ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਪਰ ਲੋਕ ਦੁਖੀ ਕਿਉਂ ਨੇ ਲੋਕ ਬਾਗੀ ਕਿਉਂ ਹੋ ਗਏ ਬਾਈ ਹੁਣ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗਣ ਲੱਗੀ ਵੀ ਜਿਤੇ ਆਪਾਂ ਨੂੰ ਮੁਕਤੀ ਦੇ ਜਾਂਦੇ ਚੀਜ਼ਾਂ ਫਿਰ ਤਾਂ ਬੁਹ ਭਕਾਰੀ ਬਣ ਗਏ ਆ ਵੀ ਅਸੀਂ ਤਾਂ ਆਪ ਕਮਾ ਕੇ ਖਾਣਾ ਚਾਹੁੰਦੇ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਬਾਹਰੋਂ ਵੀ ਉਨੀ ਆਸ ਹੈ ਨਹੀਂ ਕਿ ਬਾਹਰ ਜਾਣ ਦੀ ਵੀ ਉੱਥੇ ਕੁਝ ਨਾ ਕੁਝ ਕਰਨਾ ਪੈਣਾ ਤੇ ਜਿਵੇਂ ਮੈਂ ਵੀ ਲੋਕਾਂ ਨੂੰ ਸਮਝਾਉਂਦਾ ਮੈਂ ਕਿਹਾ ਤੁਸੀਂ ਫ੍ਰੀ ਸਟ ਜਿੰਨਾ ਮਾਜੀ ਲੇਖੀ ਮੈਂ ਕਿਹਾ ਵੀ ਜਿੰਨੇ ਤੇਸ਼ ਆ ਅਮਰੀਕਾ ਦੇ ਵਿੱਚ ਕਾਲੇ ਹੋਏ ਆਪਣੇ ਕੈਨੇਡਾ ਦੇ ਵਿੱਚ ਨੇਟਿਵ ਇੰਡੀਅਨ ਹੋਏ ਮੈਂ ਕਿਹਾ ਜਿੰਨੀਆਂ ਉਹਨਾਂ ਨੂੰ ਵੱਧ ਸਹੂਲਤਾਂ ਦਿੰਦੇ ਆ ਉਹ ਉਨੇ ਹੀ ਖਰਾਬ ਹੁੰਦੇ ਆ ਉਹ ਉਨੇ ਹੀ ਥੱਲੀ ਉਹਨਾਂ ਦੀ ਕੌਮ ਜਾਂਦੀ ਆ ਮੈਂ ਕਹਾਂ ਆਪਾਂ ਨੂੰ ਤਾਂ ਇਹ ਦੀ ਲੋੜ ਹੀ ਨਹੀਂ ਆਪਾਂ ਨੂੰ 80000 ਦੀ ਕੀ ਲੋੜ ਆ ਆਪਣੇ ਹੈਗੇ ਆ ਆਪਾਂ ਨੂੰ ਇਹ ਕੱਲ ਦੀ ਕੀ ਲੋੜ ਆ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਆ ਉਦੋਂ ਹੀ ਉਹ ਲੋਕਾਂ ਦੇ ਵਿੱਚ ਕਲਿੱਕ ਹੋਣ ਲੱਗ ਗਈ ਇਸ ਗੱਲ ਵੀ ਨਹੀਂ ਵਾਕਈ ਮੈਂ ਆਪ ਕਮਾ ਕੇ ਫਿਰ ਹਰੇਕ ਬੰਦਾ ਇਹਨੂੰ ਇਹ ਪਤਾ ਲੱਗ ਗਿਆ ਵੀ ਹੁਣ ਮੈਨੂੰ ਆਪਦੇ ਪਾਪੇ ਤੋਂ ਨਹੀਂ ਪੁੱਛ ਕੇ ਮੋਟਰਸਾਈਕਲ ਲੈਣ ਦੀ ਲੋੜ ਹੋਣ ਤਾਂ 30000 ਆ ਜਾਂਦਾ ਜੇ ਮੈਂ ਜੌਬ ਵਧੀਆ ਕਰਦਾ ਹੋਊਗਾ 30-35 ਦਾ ਮੈਂ ਪੁਰਾਣਾ ਲੈ ਲਊਗਾ ਸੋ ਇੰਡੀਪੈਂਡੈਂਸ ਬਹੁਤ ਜ਼ਿਆਦਾ ਤੇ ਆਪਟਿਮਿਜ਼ਮ ਹੈ ਇਨੀ ਕਦੇ ਵੀ ਪੰਜਾਬ 'ਚ ਮੈਂ 20 ਸਾਲ ਜਾਂਦੇ ਹੋਗੇ ਮੈਂ ਇਨੀ ਆਪਟਿਮ ਉਥੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੋ ਆਪ ਦੱਸਦੇ ਵੀ ਆਹ ਚੇਂਜੇਜ਼ ਆ ਰਹੀਆਂ ਹੂੰ ਥੈਂਕ ਯੂ ਜੈਸ ਥੈਂਕ ਜੈਸ ਕੋ ਦੇ ਜੰਪਲ ਨੌਜਵਾਨ ਨੇ ਤੁਸੀਂ ਅਕਸਰ ਇਹਨਾਂ ਨੂੰ ਸੁਣਦੇ ਹੋ ਡੋਨਲਡ ਟਰੰਪ ਦੀ ਉਹਨਾਂ ਨੇ ਪ੍ਰੋਡਕਟ ਤੱਕ ਕੀਤੀ ਸੀ ਕਿ ਬੰਦਾ ਬਹੁਤ ਵਧੀਆ ਅਣਛਿਕ ਦਿਨ ਜਾ ਕੇ ਆਏ ਨੇ ਕੋਈ ਨਿੱਜੀ ਕੰਮ ਗਿਆ ਪਰ ਜਿਹੜਾ ਕੁਝ ਦੱਸਿਆ ਆ ਕੇ ਉਹ ਇਹੀ ਦੱਸਿਆ ਕਿ ਲੋਕ ਪਤਾ ਨਹੀਂ ਕਾਰਨ ਜਿਹੜਾ ਦਿਖਦਾ ਵੀ ਐ ਦਿਖਿਆ ਵਿਕਾਸ ਜਿਹੜਾ ਉਹ ਜਿਹੜਾ ਹੋਇਆ ਹੋਇਆ ਪਰ ਗੁਰੂ ਦੀ ਵੇ ਅਦਬੀ ਲੋਕਾਂ ਨੂੰ ਨਿੱਕੀ ਭੁੱਲੀ ਮਲੂਕੇ ਦੀ ਅਰਦਾਸ ਨਹੀਂ ਸਿੱਕ ਬੰਦੇ ਫੜੇ ਨਹੀਂ ਗਏ ਹੰਦੇ ਤੱਕ ਹਾਂ ਸਿੰਘ ਬੈਠੇ ਮਾਰਤੇ ਜ਼ਰੂਰ ਸ਼ਰਮਾ ਐਸਐਸਪੀ ਬਹਾਲ ਜ਼ਰੂਰ ਕਰਤਾ ਤੇ ਹੁਣ ਜਿਹੜੀਆਂ ਸੁਣ ਰਹੇ ਹੋ ਵੀਡੀਓ ਚ ਉਹ ਤੁਸੀਂ ਦੇਖਦੇ ਹੋ ਖਬਰਾਂ ਕਿਉਂਕਿ ਭਾਈ ਜੀ ਗਰਵਾਤ ਸਿੰਘ ਬਰਾੜ ਹੁਣੀ ਰਮਣਾ ਉਹਨਾਂ ਦਾ ਪ੍ਰੋਗਰਾਮ ਕਰਦੇ ਰਮਣਾ ਜੀ ਪੰਜਾਬ ਨੂੰ ਗਏ ਹੋਏ ਨੇ ਚਲੋ ਹੁਣ ਬਹੁਤ ਵਧੀਆ ਗਰਾਉਂਡ ਰਿਐਲਿਟੀ ਨਾਲੇ ਚੈੱਕ ਕਰਨਗੇ ਦੇਖਣਗੇ ਤੇ ਕੋਸ਼ਿਸ਼ ਕਰਨਗੇ ਸਾਰਾ ਕੁਝ ਫਿਰ ਆ ਕੇ ਮਲਾਂਕਣ ਕਰਨਗੇ ਵੋਟਾਂ ਦੇ ਰਿਜ਼ਲਟ ਤੋਂ ਪਹਿਲਾਂ ਦੱਸਣਗੇ ਕਿ ਲੋਕਾਂ ਨੇ ਵੋਟਾਂ ਕਿਸ ਤਰ੍ਹਾਂ ਤੇ ਕਿਹਨੂੰ ਪਾਈ ਉਥੋਂ ਦੱਸਿਆ ਬਹੁਤ ਸੌਖਾ ਤੇ ਹੁਣ ਵੇਖੇ ਹੋਣਗੇ ਨਾਲੇ ਅੱਖੀਂ ਕਈ ਵਾਰ ਪੱਤਰਕਾਰ ਕੁਝ ਹੋਰ ਦੱਸ ਦਿੰਦੇ ਨੇ ਉਥੋਂ ਬੈਠੇ ਕਿਉਂਕਿ ਝਕਾ ਹਰ ਇੱਕ ਇਨਸਾਨ ਦਾ ਪਰ ਜਿਹੜੇ ਬੰਦੇ ਸਿੱਖ ਧਰਮ ਦੀਆਂ ਝੱਟੀਆਂ ੜਾਉਂਦੇ ਰਹੇ ਨੇ ਕਮਰ ਸੰਧੂ ਵਰਗੇ ਉਹ ਜਦ ਹੁਣ ਆਪ ਦੀਆਂ ਵੋਟਾਂ ਨਾਲ ਜਿੱਤਣਗੇ ਉਹ ਸਭ ਤੋਂ ਫਿਰਦੇ ਵਿਦ ਖਬਰ ਹੈ ਮੈਂ ਨਿੱਜੀ ਤੌਰ ਤੇ ਉਸ ਨੂੰ ਮੰਨਦਾ ਕਿ ਇਹ ਬੰਦੇ ਨੇ ਸਾਡਾ ਬਹੁਤ ਸਾਡੇ ਖਿਲਾਫ ਬੋਲਿਆ ਜੂਨ 84 ਨੂੰ ਇਸ ਨੇ ਆਪਣੇ ਸ਼ਬਦ ਨਾਲ ਵਧੀਆ ਗੱਲਾਂ ਨਾਲ ਕੀਤਾ ਸੁਰਿੰਦਰ ਸਿੰਘ ਵੀ ਜਿਹੜਾ ਕਹਿੰਦਾ ਮੈਂ ਹੁਣ ਦਾੜੀ ਕੇਸ ਰੱਖ ਲੇ ਉਹ ਵੀ ਕਹਿੰਦਾ ਮੈਂ ਨੰਗੇ ਧੜੇ ਦੀ ਸਪੋਰਟ ਕਰਦਾ ਤੇ ਮਾਨਸਵਾਰ ਨਾਲ ਘੰਟਾ ਕਰਕੇ ਇਲਾਣੀਆਂ ਮੀਟਿੰਗ ਤੇ ਹੱਸ ਕੇ ਉਹਦੀਆਂ ਗੱਲਾਂ ਸੁਣ ਕੇ ਸਾਰੀਆਂ ਵਿਦਵਤਾ ਦੇ ਨਾਲ ਹੁਣ ਉਹਦੇ ਖਿਲਾਫ ਵੀ ਬੋਲਦਾ ਇਹਨਾਂ ਦਾ ਪਤਾ ਹੀ ਨਹੀਂ ਲਾਟੂਆਂ ਨੂੰ ਅਸੀਂ ਕੀ ਕਰਾਂਗੇ ਇਹਨਾਂ ਦਾ ਖਿਆਲ ਹੈ ਤੁਸੀਂ ਆਪਾਂ ਕਈ ਵਾਰ ਨਾ ਸਮਝ ਜਾਂਦੇ ਆ ਆਪਾਂ ਵਿਰੋਧ ਦੇ ਗਲਤ ਬੰਦਿਆਂ ਦੀ ਵਿਰੋਧ ਤਾਂ ਢਡੀਆਂ ਵਾਲੇ ਦਾ ਸੀ ਗਲਤ ਗਾਇਕ ਨੂੰ ਸਪੋਰਟ ਦੇਤੀ ਮੁੜ ਕੇ ਆਪੇ ਫਿਰਦਾ ਨਾ ਹੁਣ ਟਕੇ ਟਕੇ ਨੂੰ ਹਰ ਅੱਜ ਪਾਈ ਹੈ ਕਲਾਰ ਨੇ ਇੱਕ ਵੀਡੀਓ ਫੋਟੋ ਰੈਲੀਆਂ ਪਿੱਛੇ ਦੇ ਮਲੇਰਕੋਟਲੇ ਬੋਲਿਆ ਕਹਿੰਦੇ ਆਪ ਆਪ ਵੀ ਪਾਰਟੀ ਦੇ ਹੱਕ ਚ ਬੋਲ ਗਿਆ ਤੇ ਦੂਜੇ ਦਿਨ ਸਿੱਧਾ ਹੀ ਡਿੰਪੀ ਦੇ ਹੱਕ ਚ ਗਿੱਦੜ ਵਾਹੇ ਹੁਣ ਦੋਦੇ ਕਿਤੇ ਬੋਲੇ ਕੈਪਟਨ ਦੀ ਇਕੱਠ ਚ ਉਹ ਕਹਿੰਦਾ ਜਿੱਥੇ ਮਰਜ਼ੀ ਲੈ ਜਾਓ ਦਮੜੇ ਕੀ ਬਾਤ ਹੈ ਇੱਕ ਗੀਤ ਜਦ ਗਾਉਣਾ ਸਿੰਘ ਮਾਰ ਤੇ ਠੋਕਰਾਂ ਤਖਤਾਂ ਤਰ ਜਾਣ ਸੇਗਨ ਜਬਾਦਸ਼ਾ ਜਾਂ ਬਾਗੀ ਹੈ ਕਿਆ ਬਾਤ ਹੈ ਉਹ ਇਹਨਾਂ ਦਾ ਸਾਰਿਆਂ ਦਾ ਖਿਆਲ ਰੱਖਣ ਦੀ ਜ਼ਰੂਰਤ ਆ ਕਿ ਇਹ ਲੋਕ ਕਿਵੇਂ ਸਾਨੂੰ ਕਮਾਉਂਦੇ ਆ ਤੇ ਕਿਵੇਂ ਇਹਨਾਂ ਦੀਆਂ ਇਹਨਾਂ ਦੀ ਵਰਤੋਂ ਜਿਹੜੀ ਐ ਸਾਡੀ ਕਰਦੇ ਆ ਇਹ ਜੇ ਪੰਜਾਬ ਦੇ ਉਹਨਾਂ ਲੋਕਾਂ ਦਾ ਦਰਦ ਹੁੰਦਾ ਜਿਨ੍ਹਾਂ ਦੇ ਨਾਂ ਤੇ ਫਿਲਮ ਬਣਾ ਕੇ ਹਜ਼ਾਰਾਂ ਡਾਲਰ ਕਮਾਏ ਵੀ ਗੱਲ ਫਾਸੀ ਲੈ ਲਈ ਜੀ ਆਹ ਲੈ ਲਿਆ ਇੱਕ ਬਣਾਤੀ ਫਿਰ ਕਿਤੇ ਹੁਣ ਖੁੱਲ ਕੇ ਕਿਤੇ ਕਰਕੇ ਇਕੱਠ ਪੁੱਛਦਾ ਵੀ ਆਹ ਲੋਕ ਜਿਹੜੇ ਖੁਦਕੁਸ਼ੀ ਕਰ ਗਏ ਉਹਨਾਂ ਦਾ ਜਵਾਬ ਦੋ ਪਰ ਹੁਣ ਤਾਂ ਜਿਹੜੀ ਮਰਜ਼ੀ ਲੈ ਜਾਓ ਗਿੱਦੜ ਵੇ ਡੈਂਪੀ ਦੇ ਬੋਲਤਾ ਗਾ ਲਿਆ ਦੁੱਧੇ ਜਾ ਕੇ ਕੈਪਟਨ ਅਮਰਿੰਦਰ ਦੇ ਗੁਣ ਗਾ ਲਏ ਤੇ ਉਹਦੇ ਬਾਅਦ ਜਦ ਆਪਣੇ ਮਲੇਰ ਕੋਟਲੇ ਆਏ ਤਾਂ ਉੱਥੇ ਆਪ ਦੇ ਹੱਕ ਚ ਚੱਕਦੇ ਹੋ ਕੰਮ ਤਾਂ ਹੁਣ ਇਹ ਜੇ ਸਮੇਂ ਚ ਹੀ ਤੁਸੀਂ ਤੁਹਾਡੀ ਨਿਗਾਹ ਹੋਣੀ ਚਾਹੀਦੀ ਹੈ ਕਿ ਕਿੱਥੇ ਕਹਾਣੀ ਖੜਦੀ ਹੈ ਕੌਣ ਕਿੱਥੇ ਖੜਦਾ ਜਿੱਥੇ ਮਰਜ਼ੀ ਖੜਜੋ ਇੱਕ ਜਗ੍ਹਾ ਹੋਵੇ ਚੰਗਾ ਚੰਗਾ ਮਾੜਾ ਮਾੜਾ ਪਰ ਸਾਰੀਆਂ ਪਾਰਟੀਆਂ ਤੇ ਨਿਗਾਹ ਰੱਖ ਕੇ ਜਿਹੜੇ ਐਂਟੀ ਸਿੱਖ ਸੋਚ ਵਾਲੇ ਬੰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਕਮਰ ਸੰਧੂ ਵਰਗੇ ਬਣ ਰਹੇ ਨੇ ਉਹਨਾਂ ਨੂੰ ਅਸੀਂ ਕਿਵੇਂ ਕਹਿ ਦਾਂਗੇ ਕਿ ਇਹ ਬੰਦੇ ਠੀਕ ਨੇ ਬਿਲਕੁਲ ਗਲਤ ਹੈ ਮੈਂ ਪਹਿਲਾਂ ਕਿਸੇ ਦੀ ਸੀਟ ਦਾ ਹੱਕ ਲੈਣਾ ਤੇ ਫਿਰ ਇਹਨਾਂ ਤੋਂ ਕੈਬਨਿਟ ਤੇ ਬੈਠੇ ਸਾਡੇ ਲਈ ਸੋਚ ਸਾਡੇ ਲਈ ਕੀ ਕਰਨਗੇ ਇਹ ਕਾਮਰੇਡ ਸੋਚ ਵਾਲੇ ਬੰਦੇ ਸਾਨੂੰ ਕੀ ਦੇਣਗੇ ਇੱਕ ਨਹੀਂ ਹੋਰ ਵੀ ਨਿਕਲਿਆ ਆਉਣਗੇ ਇੱਕ ਗੱਲ ਆ ਵੀ ਜਿੱਤਦੇ ਨੇ ਜਿਹੜੇ ਉਹ ਆਪਣੇ ਅਕੀਦੇ ਤੇ ਕਾਇਮ ਰਹਿ ਤੇ ਜਿਹੜੀਆਂ ਗੱਲਾਂ ਕੀਤੀਆਂ ਉਹ ਹੋਣ ਜੇ ਉਹ ਗੱਲਾਂ ਨਾ ਹੋਈਆਂ ਫਿਰ ਲੋਕ ਜਿਹੜੇ ਹੁਣ ਹੱਕ ਚ ਤੁਰੇ ਫਿਰਦੇ ਆ ਇਹ ਫੇ ਘੇਰਨਗੇ ਵੀ ਬਹੁਤ ਬੁਰੇ ਤਰ੍ਹਾਂ ਬਾਕੀ ਇੱਕ ਹੋਰ ਵੀਡੀਓ ਮੈਂ ਵੇਖ ਰਿਹਾ ਸੀ ਜਤਿੰਦਰ ਪੰਨੂ ਦੀ ਜੈਡ ਪਲਸ ਸਿਕਿਉਰਿਟੀ ਦੀ ਗੱਲ ਚੱਲ ਰਹੀ ਆ ਭਗਵੰਤ ਮਾਨ ਦੀ ਦੇਖੋ ਇਹ ਗੱਲ ਬਹੁਤ ਹਲੇ ਕੱਚੀ ਆ ਇਹ ਸੀਐਮ ਸ਼ਿਪ ਦਾ ਉਹ ਦਾਅਵੇਦਾਰਤਾ ਹੈ ਖੈਰ ਮੂੰਹ ਕਹਿੰਦਾ ਪਰ ਉਹਨੂੰ ਬਣਾਇਆ ਜਾਊਗਾ ਇਹ ਵਕਤ ਦੱਸੂਗਾ ਇਹ ਹਲੇ ਦੂਰ ਦੀ ਗੱਲ ਹੈ ਬਹੁਤ ਸਿਆਣੇ ਬੰਦੇ ਪਾਰਟੀ 'ਚ ਹਲੇ ਬੈਠੇ ਆ ਜਿਹੜੇ ਕਿਸੇ ਪਾਸੇ ਗੱਲ ਕਰ ਸਕਦੇ ਆ ਬਹੁਤ ਸਿਆਣੇ ਹਾਂ ਕ੍ਰਾਊਡ ਪੋਲ ਗੱਲਾਂ ਬਾਤਾਂ ਇਕੱਠ ਜਿਹੜਾ ਉਹਦੇ ਰੈਲੀਆਂ ਤੇ ਇਕੱਠ ਹੋ ਰਿਹਾ ਬਹੁਤ ਵੱਡਾ ਇਕੱਠ ਹੋ ਰਿਹਾ ਸਿਕਿਉਰਿਟੀ ਸੈਂਟਰ ਦੇ ਐਂਡ ਦੀ ਗੱਲ ਕਰ ਰਿਹਾ ਹੈ ਉਹਨੇ ਮੰਗੀ ਆ ਜਾਂ ਨਹੀਂ ਇਹ ਉਹ ਪਿੱਛੋਂ ਗੱਲ ਕਿੱਥੋਂ ਘੁੰਮ ਰਹੀ ਆ ਕਿਤੇ ਉਈਓ ਤਾਂ ਨਹੀਂ ਖਲਜਕਣ ਪਾਉਣ ਦੀ ਆ ਉਹ ਭਾਜਪਾ ਆਪਣੇ ਮੋਦੀ ਕਹਿ ਦੇਣ ਵੀ ਹਾਂ ਅਸੀਂ ਇਹਨੂੰ ਆਪਣੇ ਤੌਰ ਤੇ ਸਾਡੀ ਇਨਵੈਸਟੀਗੇਸ਼ਨ ਇਹ ਕਹਿੰਦੀ ਆ ਕਿ ਸੀਐਮ ਦਾ ਦਾਵੇਦਾਰਾ ਕਿਤੇ ਖਲਾਰਾਂ ਦਾ ਪੈਂਦਾ ਹੋਵੇ ਰੱਬ ਜਾਣਦਾ ਪਰ ਬਦਲਾਅ ਬਹੁਤ ਛੇਤੀ ਹੈ ਤਵਕਕ ਜਿਹੜੀ ਆ ਲੋਕਾਂ ਪ੍ਰਤੀ ਤੇ ਲੋਕਾਂ ਨੂੰ ਜਿਹੜਾ ਕਹਿਣਾ ਉਹ ਬਹੁਤ ਜਲਦੀ ਬਹੁਤ ਜਲਦੀ ਬਦਲ ਰਿਹਾ ਹੈ। ਅਚਤ ਨੇ ਕਾਂਟਾ ਬਸੋ ਕੱਲ ਕੱਲਾਂ ਕਿੱਥੇ ਸੌ ਲਿਆ ਉਹ ਕਹਿੰਦੇ ਵੀ ਇਹ ਤਾਂ ਅਤਵਾਦੀ ਦੇ ਘਰੇ ਸੌ ਗਿਆ ਉਹ ਬਾ ਬਰੀ ਹੋਇਆ ਹੈ ਬੰਦਾ। ਬਸ ਹੁਣ ਕਿਉਂਕਿ ਵਿਰੋਧ ਦੇ ਵਿੱਚ ਅਸੀਂ ਕੀ ਕੀ ਕਰ ਜਾਣਾ ਇੱਕ ਦੂਜੇ ਦਾ ਵਿਰੋਧ ਦੇ ਵਿੱਚ ਉਹ ਅਸੀਂ ਕਦੇ ਨਹੀਂ ਸੋਚਦੇ। ਇਹਦੇ ਲੌਂਗ ਟਰਮ ਇਫੈਕਟਸ ਕੀ ਨੇ ਤੁਸੀਂ ਕਿਸੇ ਨੂੰ ਘੇੜ ਰਹੇ ਹੋ। ਬਾਕੀ ਦੋਨੇ ਭਾਈ ਦੇ ਜਿਹੜੇ ਬ੍ਰਦਰਸ ਬਹੁਤ ਖੁੱਲ ਕੇ ਬੋਲ ਰਹੇ ਨੇ ਇੱਕ ਬੈਂਸ ਨੇ ਸਿਮਰ ਨੇ ਗੱਲ ਜਿਹੜੀ ਇੰਟਰਵਿਊ ਮੈਂ ਸੁਣਦਾ ਤੇ ਉਹ ਕਹਿੰਦਾ ਰਿਅਲਿਟੀ ਨਹੀਂ ਹੈ ਪਾਣੀ ਆ ਰਾਇਲਟੀ ਨਹੀਂ ਹੈ ਖਰਾਤ ਨਹੀਂ ਹੈ ਅਸੀਂ ਕੀਮਤ ਮੰਗ ਰਹੇ ਹਾਂ ਬਹੁਤ ਵਧੀਆ ਉਹਨੇ ਗੱਲ ਕੀਤੀ ਵਪਾਰਕ ਸੰਸਦ ਬਾਅਦ ਵਾਪਸ ਆਉਂਦੇ ਪੰਜਾਬ ਦੇ ਜਦ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਕਿਹੜਾ ਪਾਸਾ ਜਿਹਨੂੰ ਆਪਾਂ ਸ਼ੁਰੂ ਕਰੀਏ ਤੇ ਪੰਜਾਬ ਦੇ ਨਾਲ ਹੋਏ ੱੱਕੇ ਦੀਆਂ ਗੱਲਾਂ ਜਿਹੜੇ ਅੱਜ ਬਾਹਾਂ ਕੱਢ ਕੱਢ ਕੇ ਕੇਜਰੀਵਾਲ ਨੂੰ ਕਹਿੰਦੇ ਆ ਅਤਵਾਦੀ ਦੇ ਘਰੇ ਠਹਿਰ ਗਿਆ ਧਾਰਾ 25 ਪਾੜਨ ਵੇਲੇ ਸੱਤਵਾਦੀ ਨੇ ਸ਼ਹੀਦਾਂ ਦੀ ਜਗ੍ਹਾ ਬਣਾਉਣ ਵੇਲੇ ਦਰਵਾਜ਼ਾ ਸਾਹਿਬ ਦੇ ਵਿੱਚ ਇਹ ਸੱਤਵਾਦੀ ਨੇ ਕੈਪਟਨ ਅਮਰਿੰਦਰ ਸਿੰਘ ਖਾਲਸਾਣ ਦੇ ਮਤੇ ਤੇ ਦਸਤਕਤ ਕਰੇ ਤਾਂ ਉਹ ਸੱਤਵਾਦੀ ਹੈ ਤੇ ਕੇਜਰੀਵਾਲ ਹੁਣ ਇੱਕ ਬਰੀ ਹੋਏ ਬੰਦੇ ਦੇ ਘਰੇ ਰਹਿ ਗਿਆ ਤਾਂ ਉਹ ਅਤਵਾਦੀ ਇਹਨਾਂ ਦਾ ਬੇੜਾ ਗਰਕ ਹੋਣਾ ਜਾਂ ਝੂਠੇ ਬੋਲੀ ਜਾਣਾ ਸਵੇਰ ਤੋਂ ਸ਼ਾਮ ਤੱਕ ਫਿਰ ਸੱਥਾਂ ਤੇ ਜਦ ਗੱਲ ਨਹੀਂ ਤੁਸੀਂ ਕਰਦੇ ਨਾ ਕਿਵੇਂ ਭੁੱਲ ਜਾਨੇ ਹੋ ਪੰਜਾਬ ਦੇ ਫਿਜ਼ਾ ਨੂੰ ਲਾਂਬੂ ਕਿਹਨੇ ਸਾੜੀ ਬਾਦਲ ਦੇਸ਼ ਦੇ ਕਾਨੂੰਨ ਨੂੰ ਦੇਸ਼ ਦੀ ਕਨਸਟੀਟਿਊਸ਼ਨ ਨੂੰ ਸਾੜਨ ਦੀ ਸਜ਼ਾ ਕੀ ਹੈ ਚੰਦਨ ਦੀ ਪੁਸਤਕ ਦੇ ਵਿੱਚ ਜਿਹੜੀ ਰਾਹੁਲ ਚੰਦਨ ਨੇ ਲਿਖੀ ਕੇਪੀ ਗਿੱਲ ਦੇ ਹੱਕ ਚ ਉਹਦੇ ਵਿਚ ਪੜਿਓ ਕਿਤੇ ਵੀ ਰਾਤ ਦੀਆਂ ਮਹਿਫਲਾਂ ਰਾਤ ਦਾ ਖਾਣਾ ਚੰਦਨ ਲੈਂਦਾ ਕਹਿੰਦਾ ਤੇ ਕੇਪੀਐਸ ਗਿੱਲ ਨੇ ਦੱਸਿਆ ਵੀ ਮੈਂ ਤੇ ਬਾਦਲ ਉਸ ਖੜਕੂ ਬਾਦ ਦੇ ਸਮੇਂ ਰਾਤ ਨੂੰ ਮਿਲਦੇ ਰਹੇ ਬਾਦਲ ਨਹੀਂ ਸੀ ਉਹ ਕਾਹਦੇ ਲਈ ਮਿਲਦਾ ਰਿਹਾ ਵੇਸ਼ ਨਕਸਲ ਲਹਿਰ ਦੇ ਵੇਲੇ ਕਿਹਨੇ ਮੁਕਾਬਲੇ ਬਣਵਾਏ ਮੁੰਡਿਆਂ ਦੇ ਲੋਕ ਨਹੀਂ ਭੁੱਲਦੇ ਲੋਕ ਯਾਦ ਰੱਖਦੇ ਸਾਰੀ ਜ਼ਿੰਦਗੀ ਦੀ ਕੀਤੀ ਮਿਹਨਤ ਆਖਰੀ ਵਰਿਆਂ ਦੇ ਵਿੱਚ ਕਿਸੇ ਪਾਸੇ ਨਹੀਂ ਲੱਗਦੀ ਲੱਗਦੀ ਕਿਉਂਕਿ ਲੋਕ ਇਸ ਜਗ੍ਹਾ ਤੇ ਪਹੁੰਗੇ ਉਹ ਗੱਲ ਨਹੀਂ ਸੁਣਨ ਨੂੰ ਤਿਆਰ ਇਕੱਠਾਂ 'ਚ ਉਹ ਇਹ ਹੁਣ ਡਿਸਾਈਡ ਕਰਨਗੇ ਪੰਜਾਬ ਦੇ ਵੋਟਰ ਆਪਾਂ ਡਿਸਾਈਡ ਨਹੀਂ ਕਰਨਾ ਆਪਾਂ ਪਰ ਗੱਲ ਜਿਹੜੀ ਅਸਲ ਹੈ ਉਹਦੀ ਗੱਲ ਆਪਾਂ ਨੂੰ ਕਰਨੀ ਬਣਦੀ ਤੇ ਕੌਣ ਹੁਣ ਕੀ ਕਰ ਜਿਸ ਜਿੱਥੇ ਕੇਜਰੀਵਾਲ ਨੇ ਪਾਣੀਆਂ ਤੇ ਡਬਲ ਸਟੈਂਡਰਡ ਕੀਤਾ ਕੇਜਰੀਵਾਲ ਦੀ ਵੀ ਗੱਲ ਆਪਾਂ ਕੀਤੀ ਜਾ ਕੇ ਜੇ ਦਿੱਲੀ ਕਹੇਗਾ ਪਾਣੀ ਤੁਹਾਨੂੰ ਚਾਹੀਦਾ ਪੰਜਾਬ ਕਹਿੰਦਾ ਪਾਣੀ ਤੁਹਾਨੂੰ ਚਾਹੀਦਾ ਇਹ ਗੱਲਾਂ ਗਲਤ ਨਰੰਕਾਰੀਆਂ ਦੇ ਗਿਆ ਹੱਥ ਜੋੜੀ ਖੜਾ ਉਹ ਗੱਲ ਗਲਤ ਜਿਹੜੀ ਉਹਨੇ ਕੀਤੀ ਹੈ ਕਿਉਂਕਿ ਉਹਨੇ ਪਹਿਲਾਂ ਕਿਹਾ ਸੀ ਮਡੇਰਿਆਂ ਤੇ ਨਹੀਂ ਜਾਵਾਂਗਾ ਉਹ ਜਾ ਰਿਹਾ ਪਰ ਹੁਣ ਰਾਜਨੀਤੀ ਦੇ ਪੈਂਤੜੇ ਦੇ ਵਿੱਚ ਉਹਨੂੰ ਇਹੋ ਮੈਂ ਇਹ ਜਿੱਤਣਾ ਯੂਪੀ ਵਾਲੇ ਪਾਸੇ ਨੂੰ ਨਹੀਂ ਗਿਆ ਯੂਪੀ ਬਹੁਤ ਵੱਡੀ ਹੈ ਸੈਟ ਨਹੀਂ ਸੀ ਆਉਣੀ ਲੋਕ ਉਸ ਨੂੰ ਆਰਐਸਐਸ ਦੇ ਟੀਮ ਕਹਿ ਰਹੇ ਕਿਉਂਕਿ ਬਵੇਕਨੰਦ ਫਾਊਂਡੇਸ਼ਨ ਦਾ ਉਹ ਕਿਸੇ ਸਮੇਂ ਨਾਲ ਰਿਹਾ ਤੇ ਉਹ ਕੁਝ ਗੱਲਾਂ ਨੇ ਜਿਹੜੀਆਂ ਉਸ ਵੱਲ ਸੰਕੇਤ ਕਰਦੀਆਂ ਜੈ ਸਪੈਟ੍ਰਿਓਟਿਜ਼ਮ ਦੇਸ਼ ਭਗਤੀ ਉਹਦੇ ਸਿਰ ਚੜ ਕੇ ਬੋਲਦੀ ਹੈ ਗਾਂਧੀ ਨੂੰ ਉਹ ਫਾਲੋ ਕਰਦਾ ਉਹਨੇ ਕੋਈ ਨਹੀਂ ਇਹ ਗੱਲ ਪਰ ਜਿਹੜੇ ਆਪਣੇ ਸੀ ਜਿਹੜਾ ਆਪਣਾ ਪੰਥ ਸੀ ਉਹਨਾਂ ਦੇ ਬਰਾਬਰ ਕਿਉਂ ਲੋਕ ਡਾਂਗਾ ਮੋਢੇ ਤੇ ਲੈ ਕੇ ਖੜ ਗਏ ਇਹ ਵੀ ਨਾਲ ਸੋਚਣਾ ਬਣਦਾ ਪੰਜਾਬ ਦੇ ਪਾਣੀਆਂ ਦੀ ਗੱਲ ਜਸਵੰਦਰ ਸਿੰਘ ਬਦੇਸ਼ਾ ਸਖਦੀਪ ਸਿੰਘ ਜਿਨ੍ਹਾਂ ਨੇ ਫਾਈਨਲ ਅਸਾਲਟ ਆਖਰੀ ਹਮਲਾ ਫਿਲਮ ਬਣਾਈ ਜਿਸ ਦੇ ਵਿੱਚ ਅੰਕੜੇ ਨੇ ਇਹਨੇ ਜ਼ਮੀਨ ਨੂੰ ਲੈਣ ਲਈ ਪੈਸੇ ਦਿੱਤੇ ਇਹਨੇ ਦੇਵੀ ਲਾਲ ਨਾਲ ਯਾਰੀਆਂ ਨਵਾਈਆਂ ਇਹਨੇ ਕੈਪਟਨ ਨੇ ਹਾਂ ਕਰਕੇ ਕਪੂਰੀ ਜਾ ਕੇ ਹੋਸਟ ਬਣ ਕੇ ਇੰਦਰਾ ਗਾਂਧੀ ਤੋਂ ਟੱਕ ਲਵਾਇਆ ਸਭ ਇਕੱਠੇ ਨੇ ਗੁੱਡ ਕੌਪ ਬੈਡ ਕੌਪ ਮੈਂ ਤੇਰੇ ਖਾਜ ਕਰਦਾ ਕਰਦਮ ਤੇ ਤੂੰ ਮੇਰੀ ਮਾੜ ਜੀ ਪੱਟ ਤੇ ਕਰਖ ਕਰਦੇ ਇਕੱਠਾ ਹੋ ਰਿਹਾ ਸਾਰਾ ਕੁਝ ਸੋ ਅੱਜ ਗੱਲ ਕਰਨ ਲਈ ਪੰਜਾਬ ਦੇ ਪਾਣੀਆਂ ਦੇ ਬਾਰੇ ਅੱਗੇ ਗੱਲ ਕਿ ਕਿੱਥੇ ਕਹਾਣੀ ਖੜੀ ਹੈ ਹੁਣ ਜਿਹੜੀ ਲੇਟੈਸਟ ਸਿਚੁਏਸ਼ਨ ਆ ਉਹ ਕੀ ਹੈ ਕਿੰਨਾ ਕੁ ਪਾਣੀ ਹੈ ਕਿਵੇਂ ਹੋਏਗਾ ਭਵਿੱਖ ਕਿਹਜਾ ਇਸ ਨੂੰ ਰੈਪ ਕਰਨ ਦਾ ਯਤਨ ਕਰਾਂਗੇ ਆਪਾਂ ਪਿਛਲਾ ਸਾਰਾ ਕੁਝ ਦੱਸ ਦਿੱਤਾ ਤੇ ਰਾਜੀ ਕਮਿਸ਼ਨ ਤੋਂ ਲੈ ਕੇ ਯਮਨਾ ਦਾ ਨਾਨ ਰਿਪੇਰੀਆਂ ਲਾਜ਼ ਦਾ ਪਾਣੀ ਜਾ ਰਿਹਾ ਜਿਹੜਾ ਰਾਇਲਟੀ ਇਸ ਦੀਆਂ ਗੱਲਾਂ ਇਸ ਨੂੰ ਇੰਟਰਨੈਸ਼ਨਲ ਪੱਧਰ ਤੇ ਇਹ ਚੈਲੰਜ ਹੋ ਸਕਦੀ ਹੈ ਚੀਜ਼ ਵਿਦ ਰਿਪੇਰੀਅਨ ਸਟੇਟਸ ਪਾਣੀ ਕਿਵੇਂ ਲਿਆ ਸਕਦੇ ਆ ਜੇ ਇੰਟਰਨੈਸ਼ਨਲ ਟ੍ਰਾਈਬਿਊਨਲ ਬਣ ਜਾਏ ਕੋਈ ਕਿਤੇ ਕੋਈ ਸਿੱਖ ਬਾਹਰਲੇ ਰਲ ਕੇ ਇਸ ਗੱਲ ਨੂੰ ਚੱਕ ਲੈਣ ਤਾਂ ਉਸ ਨੂੰ ਕੋਈ ਵੀ ਪੰਜਾਬ ਦੇ ਪਾਣੀਆਂ ਨੂੰ ਖੋਹ ਨਹੀਂ ਸਕਦਾ ਜਸਵਿੰਦਰ ਸਿੰਘ ਬਰੇਸ਼ਮਰ ਨਾਲ ਨੇ ਭਾਈ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਧੰਨਵਾਦ ਜੀ ਬਹੁਤ ਬਹੁਤ ਤਲਵਤਵਾਡਾ ਜੀ ਜਿਨ੍ਹਾਂ ਨੇ ਇਸ ਤੇ ਬੇਰੋਕ ਬੇਟੋਕ ਕੰਮ ਕੀਤਾ ਤੇ ਬਹੁਤ ਕੁਝ ਲੱਭ ਕੇ ਲਿਆੰਦਾ ਅੱਛਾ ਜੀ ਹੁਣ ਹੁਣ ਦੀ ਸਿਚੁਏਸ਼ਨ ਜਿਹੜਾ ਕੁਝ ਹੋ ਗਿਆ ਹੋ ਗਿਆ ਪਾਸਟ ਲੰਘ ਗਿਆ ਭਵਿੱਖ ਕਿਉਂ ਜਾਂ ਲੱਗਦਾ ਤੁਹਾਨੂੰ ਪੰਜਾਬ ਦੇ ਪਾਣੀਆਂ ਦਾ ਰਖਵਾਲਾ ਕੋਈ ਬਣ ਕੇ ਅੱਗੇ ਆਊਗਾ ਜਾਂ ਪੰਜਾਬ ਦੇ ਪਾਣੀ ਕਿਵੇਂ ਬਣਗੇ ਗਰਾਊਂਡ ਰਿਐਲਿਟੀ ਕੀ ਆ ਜਮਿਨੀ ਪੱਧਰ ਤੇ ਗੱਲ ਕਿੱਥੇ ਖੜੀ ਹੈ ਸਰਦਰਦੀ ਨੇ ਜਿਹੜੀ ਕਿਤਾਬ ਇਹ ਲਿਖੀ ਹੈ ਪੰਜਾਬ ਦੇ ਪਾਣੀਆਂ ਦੇ ਬਾਰੇ ਇਹਦਾ ਤੁਸੀਂ ਇਸ ਕਿਤਾਬ ਨੂੰ ਬੜਾ ਪ੍ਰਚਾਰਿਆ ਬੜਾ ਇਹਨੂੰ ਦੇਖਿਆ ਇਹਦਾ ਇਹਦੇ ਵਿੱਚ ਕੀ ਛੋਟੇ ਛੋਟੀ ਜੀ ਕਿਤਾਬ ਦੇ ਵਿੱਚ ਬੜਾ ਕੁਝ ਲਿਖਿਆ ਕੀ ਲਿਖਦੇ ਆ ਦਰਦੀ ਹੋਣੀ ਹੈ ਵਿੱਚ ਸਰਦਾਰ ਅਜੀਤ ਸਿੰਘ ਜੀ ਇਹਨਾਂ ਨੇ ਨਾ ਜਿਹੜੀ ਇਹ ਕਿਤਾਬ ਲਿਖੀ ਹੈ ਸਰਦਾਰ ਕਰਪਾਲ ਸਿੰਘ ਦਾਦੀ ਨਾਲ ਉਹ ਮੈਂ ਮਿਲ ਕੇ ਵੀ ਆਇਆ ਜੀ ਇਹ ਕਾਫੀ ਸਿਆਣੇ ਹੋ ਗਏ ਨੇ ਹੁਣ ਇਹਨਾਂ ਨੇ ਇਹਨਾਂ ਨੂੰ ਕਾਫੀ ਜਿਹੜੇ ਪੰਜਾਬ ਦੇ ਹੋਰ ਪਾਣੀਆਂ ਦੇ ਮਾਹਰ ਆ ਜਿਨ੍ਹਾਂ ਦੇ ਵਿੱਚ ਸਰਦਾਰ ਰਵਿੰਦਰਪਾਲ ਸਿੰਘ ਸਰਦਾਰ ਪੀਕੰਬਰ ਸਿੰਘ ਕੁਮੇਦਾਨ ਉਹ ਵੀ ਜਿਹੜੇ ਮੇਨ ਮੇਨ ਬੰਦੇ ਉਹਨਾਂ ਸਾਰਿਆਂ ਨੇ ਇਹਨਾਂ ਨੂੰ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਲਿਖੋ ਇਹਨਾਂ ਨੇ ਪਹਿਲਾਂ ਇੰਗਲਿਸ਼ ਦੇ ਵਿੱਚ ਕਿਤਾਬਾਂ ਲਿਖੀਆਂ ਸੀ ਪੰਜਾਬੀ ਦੇ ਵਿੱਚ ਇਹਨਾਂ ਦੀ ਪਾਣੀਆ ਇਹਦਾ ਭਵਿੱਖ ਕੀ ਹੈ ਇਹਨਾਂ ਨੇ ਉੱਤੇ ਦੋ ਇੱਕ ਲਾਈਨ ਲਿਖੀ ਹੈ ਜਿਵੇਂ ਪੜ ਕੇ ਸੁਣਾਉਣਾ ਸੋਤਿਆਂ ਨੂੰ ਇਹ ਕਿਤਾਬ ਉਹਨਾਂ ਨੇ ਸਮਰਪਿਤ ਕੀਤੀ ਉਸ ਅਣਜੰਮੇ ਨੇਤਾ ਦੇ ਨਾਮ ਜੋ ਪੰਜਾਬ ਨਾਲ ਬੇਇਨਸਾਫੀ ਅਤੇ ਇਸ ਦੀ ਅਣਦੇਖੀ ਨਹੀਂ ਕਰੇਗਾ ਇਤੋਂ ਦਾ ਜਾਲਾ ਲੋ ਜੀ ਜੋ ਕੁਝ ਹੋਣ ਹੋ ਜੋ ਦੇ ਨੇਤਾ ਉਥੇ ਕਰ ਰਹੇ ਆ ਉਹਦੇ ਬਾਰੇ ਪਾਣੀਆਂ ਦੇ ਮਾਹਰ ਕੀ ਸੋਚਦੇ ਆ ਉਹਨਾਂ ਦਾ ਅੰਦਾਜ਼ਾ ਇਹਨਾਂ ਤੋਂ ਕੋਈ ਵੀ ਆਸ ਨਹੀਂ ਰੱਖੀ ਜਾ ਸਕਦੀ ਜੇ ਤਰੀਕਿਆਂ ਦੇ ਸਿਆਸੀ ਸਿਆਸੀ ਸਿਆਸੀ ਤਰੀਕਿਆਂ ਦੇ ਨਾਲ ਵਿਚਰਦੇ ਆ ਜੀ ਮੈਂ ਹੋਰ ਆਰਟੀਕਲ ਪੜ੍ਹ ਰਿਆ ਸੀਗਾ ਉਹਦੇ ਵਿੱਚ ਇੱਕ ਪਾਣੀਆਂ ਦੇ ਵਿਦਵਾਨ ਨੇ ਇਹ ਲਿਖਿਆ ਜੀ ਵੀ ਜਿਹੜੀਆਂ ਸਿਆਸੀ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਪੰਜਾਬ ਦੇ ਲੀਡਰਾਂ ਵੱਲੋਂ ਜਿਹੜੀਆਂ ਉਹਨਾਂ ਨੇ ਉਹਨਾਂ ਵੱਲੋਂ ਕੋਰਟ ਦੇ ਲੋਅਰਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਜਾਂ ਉਹਨਾਂ ਦੇ ਵਿੱਚ ਕਾਫੀ ਫਰਕ ਆ। ਕੋਰਟ ਦੇ ਵਿੱਚ ਲੋਅਰ ਜੋ ਕਹਿੰਦੇ ਆ ਜਾ ਕੇ ਤੇ ਜੋ ਸਿਆਸੀ ਲੋਕ ਬਿਆਨ ਦਿੰਦੇ ਆ ਉਹ ਮੈਚ ਨਹੀਂ ਖਾਂਦੇ ਜਦੋਂ ਉਹ ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦੇ ਆ ਜਦੋਂ ਰੱਖਣਾ ਦਿੰਦੇ ਆ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਨਾ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਇੱਕ ਤਾਂ ਪਿਛਲੇ ਟਾਕ ਸ਼ੋਅ ਦੇ ਵਿੱਚ ਮੈਂ ਜਿਹੜਾ ਬਾਰੇ ਥੋੜੀ ਜਿਹੀ ਦੁਬਾਰਾ ਚ ਸੋਚਿਆ ਦੱਸਣਾ ਚਾਹੁੰਦਾ ਵੀ ਪੰਜਾਬ ਦਾ ਤਕਰੀਬਨ 22000 ਕਰੋੜ ਰੁਪਏ ਦਾ ਪਾਣੀ ਹਰ ਸਾਲ ਬਾਹਰ ਜਾਂਦਾ ਜੀ। ਗੈਰ ਆਈ ਪੇਰੀਆਂ ਸਟੇਟਾਂ ਤੁਸੀਂ ਯਾਦ ਰੱਖੋ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਾ ਜਾਣ ਦੇਣ ਵਾਲੀ ਗੱਲ ਜਿਹੜੀ ਆ ਉਹ ਹੁਣ ਬੂੰਦ ਕਿਹੜੀ ਆ ਜੀ ਇਹ ਨਹੀਂ ਸਮਝ ਲੱਗ ਰਹੀ ਵੀ ਕਿਹੜੀ ਬੂੰਦ ਦੀ ਅਸੀਂ ਗੱਲ ਕਰਦੇ ਪਾਣੀ ਹਰ ਰੋਜ਼ ਵਗਦਾ। ਹਰ ਰੋਜ਼ ਭਾਖੜਾ ਨਹਿਰ, ਗੰਗ ਕਨਾਲ ਤੇ ਰਾਜਸਥਾਨ ਨਹਿਰ ਰਾਹੀਂ ਪਾਣੀ ਹਰ ਰੋਜ਼ ਵਗ ਰਿਹਾ ਜੀ ਹਰ ਰੋਜ਼ ਹਜ਼ਾਰਾਂ ਕਿਊਸਿਕ ਤਕਰੀਬਨ 18000 ਕਿਊਸਿਕ ਪਾਣੀ ਹਰ ਰੋਜ਼ ਵਗਦਾ ਅੱਛਾ ਇਹ ਕਿਸਮ ਇੱਕ ਸਮਝਾਇਓ ਲੋਕਾਂ ਨੂੰ ਥੋੜ੍ਹਾ ਜਿਹਾ ਇੱਕ ਤਾਂ ਭਾਖੜਾ ਜਾ ਰਹੀ ਹੈ ਜਿਹੜਾ ਭਾਖੜਾ ਨਹਿਰ ਆ ਉਹਦੇ ਵਿੱਚ ਰਸਤਾ ਨੂੰ ਪਾਣੀ ਜਾਂਦਾ ਜੀ ਅੱਛਾ ਜਿਹੜੀ ਗੰਗ ਨਹਿਰ ਆ ਦੂਜੀਆਂ ਨਹਿਰਾਂ ਜਿਹੜੀਆਂ ਨੇ ਜਿਹੜੀਆਂ ਦੋ ਹਰੀਕੇ ਤੋਂ ਬਦੋ ਨਾਲ ਜਾਂਦੀਆਂ ਨੇ ਉਹਨਾਂ ਵਿੱਚ ਪਾਣੀ ਜਾਂਦਾ ਨਾ ਉਹਦੇ ਵਿੱਚ ਜ਼ਿਆਦਾ ਪਾਣੀ ਜਾਂਦਾ ਜੀ ਰਾਜਸਥਾਨ ਨੂੰ ਜਿਹੜੀ ਸਾਡੀ ਲੜਾਈ ਹੈ ਨਾ ਜੀ ਮੇਨ politcal ਲੜਾਈ ਸਾਡੀ ਪੇਪਰਾਂ ਦੇ ਵਿੱਚ মিডিਏ ਦੇ ਵਿੱਚ ਕੋਰਟਾਂ ਦੇ ਵਿੱਚ ਚੱਲੀ ਹੁ ਹਰਿਆਣਾ ਨਾ ਚੱਲ ਰਹੀ ਪਾਣੀ ਸਾਡਾ ਜਿਹੜਾ ਆ 11 11 ਮਿਲੀਅਨ ਏਕੜ ਫੁੱਟ ਦੇ ਨੇੜੇ ਤੇਰੇ ਰਾਜਸਥਾਨ ਚੁੱਪਚੀਪੇ ਲਈ ਜਾਂਦਾ ਜੀ ਰਾਜਸਥਾਨ ਦਾ ਕਦੀ ਰੋਲਾ ਨਹੀਂ ਪੈਂਦਾ ਜੀ ਤੁਸੀਂ ਦੇਖੋ ਕਦੀ ਉਹਦਾ ਜ਼ਿਕਰ ਨਹੀਂ ਹੁੰਦਾ ਫਿਰ ਜਿਹੜਾ ਆਪਾਂ ਵਰਡ ਯੂਜ਼ ਕੀਤਾ ਜਿਵੇਂ ਬੈਂਸ ਬ੍ਰਦਰਸ ਨੇ ਕੀਤਾ ਹੁਣ ਅਕਾਲੀ ਸਰਕਾਰ ਬੇਲੇ ਵੀ ਮਤੇ ਬੇਲੇ ਆਇਆ ਸਾਨੂੰ ਪਾਣੀਆਂ ਦੀ ਕੀਮਤ ਚਾਹੀਦੀ ਹੈ ਜੀ ਕੀਮਤ ਰੌਇਲਟੀ ਨਹੀਂ ਇਹ ਗੱਲ ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਰੱਖਣੀ ਪੈਣੀ ਆ ਸਾਰਿਆਂ ਜਿੰਨੇ ਵੀ ਵੀਰ ਭੈਣਾ ਅਸੀਂ ਇਸ ਮਸਲੇ ਤੇ ਕੰਮ ਕਰਦੇ ਆ ਅਸੀਂ ਵੀ ਤੁਹਾਡੇ ਵਰਗੇ ਹੀ ਆਮ ਵਰਕਰ ਆ ਅਸੀਂ ਅਸੀਂ ਕੋਈ ਮਾਹਰ ਨਹੀਂ ਹੈਗੇ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਆ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਨਾਲੇ ਬੇਨਤੀ ਆਲਵੇਸ ਕਰਦੇ ਆ ਤੁਸੀਂ ਆਪ ਇਹ ਲੱਭ ਕੇ ਪੜੋ ਇਹ ਕਿਤਾਬਾਂ ਲਿਆਓ ਆਪ ਪੜੋ ਤੁਸੀਂ ਮਾਰਾਂ ਨਾਲ ਗੱਲ ਕਰੋ ਉਹ ਜਿਹੜੀ ਉਹਦੇ ਵਿੱਚ ਵੀ ਇੱਕ ਬੜਾ ਇੰਟਰਸਟਿੰਗ ਇਸ਼ੂ ਆ ਜੀ ਉਹ ਜਿਹੜੀ ਜਿਹੜੀ ਜਿਹੜੀ ਅੰਗਰੇਜ਼ਾਂ ਵੇਲੇ ਲਿਆ ਨਿਕਲੀ ਸੀਗੀ ਨਾ ਜੀ ਜਿਹੜਾ ਸਮਝੌਤਾ ਅੰਗਰੇਜ਼ਾਂ ਨਾਲ ਹੋਇਆ ਜੀ ਉਸ ਸਮਝੌਤੇ ਦੇ ਤਹਿਤ ਵੀ ਰਾਜਸਥਾਨ ਵਾਲੇ ਪਾਣੀ ਲਈ ਜਾਂਦੇ ਆ ਉਹ ਉਹ ਸਮਝੌਤਾ ਅੱਜ ਵੀ ਵੈਲਿਡ ਆ ਨੇ 1.1 ਮਿਲੀਅਨ ਪਾਣੀ ਅਸੀਂ ਲੈ ਰਹੇ ਆ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਜਿਹੜਾ ਸਮਝੌਤਾ ਹੋਇਆ ਸਾਡਾ ਬਾਕੀ ਉਹ ਲੈ ਰਹੇ ਆ ਆਜ਼ਾਦੀ ਤੋਂ ਬਾਅਦ ਵਾਲੇ ਸਮਝੌਤੇ ਨੇ ਜਿਹੜਾ 1955 ਦੇ ਵਿੱਚ ਹੋਇਆ 1955 ਦੇ ਵਿੱਚ ਜਿਹੜਾ ਸਮਝੌਤਾ ਨਹੀਂ ਸੀਗਾ ਜੀ ਉਹ ਇੱਕ ਮੀਟਿੰਗ ਸੀਗੀ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਹੋਣਾਂ ਦੇ ਦੱਸਣ ਅਨੁਸਾਰ ਉਹਦੇ ਵਿੱਚ ਇਹ ਅਨਾਉਂਸ ਕਰ ਦਿੱਤਾ ਗਿਆ ਰਾਜਸਥਾਨ ਨੂੰ ਪਾਣੀ ਦੇਣਾ ਉਸ ਮੀਟਿੰਗ ਦੇ ਜਿਹੜੇ ਮਿੰਟਸ ਸੀਗੇ ਉਹ ਭੇਜੇ ਗਏ ਜੀ ਉਸ ਟਾਈਮ ਜਿਹੜੇ ਪੰਜਾਬ ਦੇ ਸੰਜਾਈ ਮੰਤਰੀ ਸੀਗੇ ਉਹਨਾਂ ਨੇ ਉਹਨਾਂ ਨੂੰ ਸਿਰਫ ਉਹਨਾਂ ਨੇ ਉਹਨੂੰ ਸਿਰਫ ਉਹਤੇ ਇੱਕ ਨੋਟ ਲਿਖ ਕੇ ਭੇਜਤਾ ਮਿੰਟਸ ਕਨਫਰਮ ਕੀਤੇ ਜਾਂਦੇ ਆ ਕੋਈ ਅਪਰੂਵਲ ਨਹੀਂ ਕੀਤਾ ਸੀ ਕੋਈ ਪੰਜਾਬ ਦੀ ਵਿਧਾਨ ਸਭਾ ਨੇ ਉਹਨੂੰ ਅਪਰੂਵਲ ਨਹੀਂ ਦਿੱਤਾ ਉਦੋਂ ਰਾਜਸਥਾਨ ਨੂੰ ਠੱਕੇ ਨਾਲ ਪਾਣੀ ਦਿੱਤਾ ਗਿਆ ਜੀ ਮੇਰੇ ਕੋਲ ਪੇਪਰ ਆ ਜੀ ਇਹ ਮੈਂ ਰਾਜਸਥਾਨ ਦੀ ਵੈਬਸਾਈਟ ਤੋਂ ਲਿਆਂਦਾ ਕੱਢ ਕੇ ਉਹਦੇ ਤੇ ਉਹਨਾਂ ਨੇ ਲਿਖਿਆ ਹੋਇਆ ਜਿੱਥੇ ਜਿੱਥੇ ਉਹਨਾਂ ਨੂੰ ਪਾਣੀ ਮਿਲਦਾ ਰਾਜਸਥਾਨ ਨੂੰ ਉਹ ਨਹੀਂ ਸਾਰਾ ਡਾਟਾ ਦਿੱਤਾ ਹੋਇਆ ਰਾਵੀ ਬਿਆਸ 프리 ਪਾਰਟੀਸ਼ਨ ਉਹ ਨਹੀਂ ਲਿਖਿਆ ਹੋਇਆ 1.11 ਮਿਲੀਅਨ ਏਕੜ ਫੁੱਟ ਮਿਲਦਾ ਪਾਰਟੀਆਂ ਟੂ ਦਾ ਐਗਰੀਮੈਂਟ ਬੀਕਾਨੇਰ ਉਸ ਐਗਰੀਮੈਂਟ ਦੇ ਤਹਿਤ ਹਾਲੇ ਵੀ ਪਾਣੀ ਲਈ ਜਾਂਦੇ ਜੀ ਉਹ ਆਜ਼ਾਦੀ ਤੋਂ ਬਾਅਦ ਫਿਰ ਰਾਵੀ ਬਿਆਸ ਚੋਂ 8.60 ਮਿਲੀਅਨ ਏਕੜ ਫੁੱਟ ਮਿਲਦਾ ਉਹਨਾਂ ਨੂੰ ਹਰਿਆਣਾ ਪੰਜਾਬ ਰਾਜਸਥਾਨ ਦਾ ਐਗਰੀਮੈਂਟ ਜਿਹੜਾ ਹੋਇਆ ਜਿਹੜਾ ਸੋ ਕਾਲਡ 1985 ਦੇ ਵਿੱਚ ਦੁਬਾਰਾ ਇਨੂੰ ਦੁਬਾਰਾ ਦੁਬਾਰਾ ਕਿਉਂ ਕੀਤਾ ਗਿਆ ਜੀ ਇਹ ਤੇ ਮੈਂ ਬਾਅਦ ਚ ਆਉਣਾ ਪਹਿਲਾਂ ਮੈਂ ਪੜ੍ਹ ਕੇ ਖੜਾਣਾ ਸੱਤ ਲੋਚੋ ਲੈ ਰਹੇ ਜੀ ਉਹ 1.41 ਮਿਲੀ ਨੈਕੜ ਫੁੱਟ ਜਿਹੜਾ ਪਾਖੜਾ ਵਾਲਾ ਤੁਸੀਂ ਕਹਿੰਦੇ ਜਾਂਦਾ ਪੰਜਾਬ ਐਂਡ ਰਾਜਸਥਾਨ ਉੱਚ ਪਾਰਟੀਆਂ ਐ ਐਗਰੀਮੈਂਟ ਇਹ ਜਿਹੜਾ ਪਾਖੜਾ ਵਾਲੀ ਵੀ ਨਹੀਂ ਗੱਲ ਹੁੰਦੀ ਜੀ ਤੁਸੀਂ ਕਦੇ ਦੇਖਿਓ ਅਸਲੀ ਪਾਣੀਆਂ ਦੀ ਰੌਲਾ ਪੈ ਰਿਹਾ ਰਾਵੀ ਬਿਆਸ ਜਿਹੜੇ ਸਰਪਲੱਸ ਵਾਟਰਸ ਸ਼ੋਅ ਕਰ ਦਿੱਤੇ ਗਏ ਉਹ ਸਰਪਲੱਸ ਨਹੀਂ ਸੀਗੇ ਪਰ ਕਰ ਦਿੱਤੇ ਗਏ ਪਾਖੜਾ ਵਾਲੇ ਪਾਣੀ ਦਾ ਵੀ ਨਹੀਂ ਰੌਲਾ ਪੈਂਦਾ ਜੀ ਇਹ ਵੀ ਆਜ਼ਾਦੀ ਤੋਂ ਬਾਅਦ ਤੁਰੰਤੀ ਵੰਡ ਦਿੱਤਾ ਗਿਆ ਉਹ ਉਹ ਵੀ ਚੁੱਪਚਾਪ ਹੀ ਤੇ ਲਈ ਜਾਂਦੇ ਰਾਜਸਥਾਨ ਵਾਲਿਆਂ ਨੇ ਜਿਹੜੇ ਰਾਜਸਥਾਨ ਵਾਲੇ ਕੀ ਕਰਦੇ ਆ ਰਾਜਸਥਾਨ ਵਾਲਿਆਂ ਨੇ ਹੁਣ ਸਟੇਟਮੈਂਟ ਦਿੱਤੀ ਜੀ ਜਦੋਂ ਆਹ ਰੋਲਾ ਰੋਲਾ ਪਿਆ ਜੀ ਬਹੁਤ ਪੰਜਾਬ ਵਾਲਿਆਂ ਨੇ ਆਪਣਾ ਪੈਸਿਆਂ ਦਾ ਪਾਇਆ ਨਾ ਜੀ ਮਤਰਾ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਵੀ ਵੀ ਵਿਲ ਨਾਟ ਪੇ ਇਹ ਸਿੰਗਲ ਪੈਨੀ ਉਹਨਾਂ ਦੇ ਇੱਕ ਮੰਤਰੀ ਦਾ ਬਿਆਨ ਆਇਆ ਵੀ ਅਸੀਂ 1981 ਦੇ ਸਮਝੌਤੇ ਅਨੁਸਾਰ ਪਾਣੀ ਲੈ ਰਹੇ ਆਂ ਪੰਜਾਬ ਤੋਂ ਅਸੀਂ ਕੋਈ ਵੀ ਪੈਨੀ ਨਹੀਂ ਪੇ ਕਰਨੀ ਹੁਣ ਸੋਚਣ ਵਾਲੀ ਗੱਲ ਆ ਜੀ ਦੇਖੋ ਉਹਨਾਂ ਦਾ ਇੱਕ ਜ਼ਿੰਮੇਵਾਰ ਮੰਤਰੀ ਬਿਆਨ ਦੇ ਰਿਹਾ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੁਸੀਂ 1981 ਤੱਕ ਪਾਣੀ ਕਿਹੜੇ ਸਮਝੌਤੇ ਦੇ ਤਹਿਤ ਲੈਂਦੇ ਰਹੇ ਪਾਣੀ ਦੇ ਪੈਸੇ ਕਹਿੰਦੇ ਨੇ ਆ ਫਿਰ ਜੇ ਤੁਸੀਂ ਆਹ ਤਾਂ ਤੱਕ ਚੈਲੰਜ ਨਹੀਂ ਹੋਇਆ ਜੀ ਉਹ ਪੋਲਿਟੀਕਲ ਗਲਿਆਰਿਆਂ 'ਚ ਘੁੰਮਦਾ ਰਿਹਾ ਜਦੋਂ 79 ਦੇ ਵਿੱਚ ਆ ਕੇ ਅਕਾਲੀ ਸਰਕਾਰ ਵੇਲੇ ਇਹਨਾਂ ਨੇ ਐਸਵਾਈਐਲ ਸ਼ੁਰੂ ਹੋਣ ਤੋਂ ਬਾਅਦ ਉਹਦੀ ਜਿਹੜੀ ਪੇਪਰਵਰਕ ਸ਼ੁਰੂ ਹੋਣ ਤੋਂ ਬਾਅਦ ਲੈਂਡ ਐਕਵਾਇਰ ਹੋਣੀ ਸ਼ੁਰੂ ਹੋਣ ਤੋਂ ਮਤਾ ਇਦਾਂ ਸੀ ਐਕਤੋਂ ਬਾਅਦ 779 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਜਦੋਂ 1778 ਨੂੰ ਚੈਲੰਜ ਕੀਤਾ ਨਾ ਜੀ ਉਦੋਂ ਰੌਲਾ ਪੈਣਾ ਸ਼ੁਰੂ ਕੀਤਾ ਸੀਗੀ ਉਹਨਾਂ ਨੇ ਕਿਹਾ ਵੀ ਇਹਨੂੰ ਥੋੜਾ ਜਿਆ ਹੋਰ ਲੀਗਲੀ ਪੱਕਾ ਕੀਤਾ ਜਾਵੇ ਉਹਨੇ ਤਿੰਨੇ ਮੁੱਖ ਮੰਤਰੀਆਂ ਨੂੰ 1981 ਦੇ ਵਿੱਚ ਬਿਠਾ ਕੇ ਤੁਸੀਂ ਦੇਖੋ ਡੇਟ ਕਿਹੜੀ ਚੂਜ਼ ਕੀਤੀ ਗਈ ਜੀ 31 ਦਸੰਬਰ 1981 ਲੋਕ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਆ ਤੇ ਪੰਜਾਬ ਪੰਜਾਬ ਦੀ ਸ਼ਾਹ ਰਗ ਵੱਢਣ ਦਾ ਇੰਤਜ਼ਾਮ ਕੀਤਾ ਉਸ ਨਾਈਟ ਦੇ ਵਿੱਚ ਤਿੰਨੇ ਮੁੱਖ ਮੰਤਰੀਆਂ ਦੇ ਸਾਈਨ ਕਰਾ ਲਿੱਤੇ ਜੀ ਉੱਤੇ ਮੁੱਖ ਮੰਤਰੀਆਂ ਦੇ ਕੋਲ ਜਿਹੜੇ ਸੰਵਿਧਾਨਕ ਮਾਹਰ ਆ ਪੰਜਾਬ ਦੇ ਪਾਣੀਆਂ ਦੇ ਮਾਹਰ ਆ ਸਾਰੇ ਇਹ ਕਹਿੰਦੇ ਆ ਵੀ ਮੁੱਖ ਮੰਤਰੀ ਦੇ ਕੋਲ ਇਕੱਲੇ ਕੋਈ ਪਾਵਰ ਨਹੀਂ ਵੀ ਉਹ ਸਟੇਟ ਦੇ ਬਿਹਾਵ ਦੇ ਉੱਤੇ ਸਮਝੌਤਾ ਕਰੀ ਜਾਵੇ ਸੰਵਿਧਾਨ ਆ ਉਹ ਵਿਧਾਨ ਸਭਾ ਨੂੰ ਪਾਵਰ ਦਿੰਦਾ ਪਰ ਇੱਥੇ ਸਾਡੇ ਨਾਲ ਧੋਖਾ ਹੋਇਆ ਜੀ ਫਿਰ ਰਾਜਸਥਾਨ ਵਾਲਿਆਂ ਨੇ ਜਿਹੜਾ ਉਦੋਂ 1955 ਵਾਲਾ ਐਗਰੀਮੈਂਟ ਸੀਗਾ ਉਹਦੇ ਵਿੱਚ ਲਿਖਿਆ ਸੀ ਉਹਦੀ ਕਲੋਜ਼ 5 ਦੇ ਵਿੱਚ ਵੀ ਪੈਸਿਆਂ ਦਾ ਇਸ ਸਟੋਰੇਜ ਦੇ ਖਰਚੇ ਦਾ ਜਿਹੜਾ ਬਾਅਦ ਦੇ ਵਿੱਚ ਗੱਲ ਕੀਤੀ ਜਾਊਗੀ ਬਿਲਕੁਲ ਜੀ ਉਹ ਫਾਈਲਾਂ ਚ ਦੱਬ ਦਿੱਤਾ ਐਨੇ ਸਾਲ ਹੁਣ ਤੁਸੀਂ ਅੰਦਾਜ਼ਾ ਲਾਓ ਜੀ ਉਸ ਟਾਈਮ ਦਾ ਸਾਨੂੰ ਸਾਨੂੰ ਮਹਿਸੂਸ ਨਹੀਂ ਹੋਇਆ ਪੰਜਾਬੀਆਂ ਨੂੰ ਠੀਕ ਠਾਕ ਸਗੇ ਖਲਾਅ ਪਾਣੀ ਦਾ ਥਰੀ ਜਾਂਦਾ ਸੀ ਪਾਣੀ ਉੱਪਰਲੇ ਲੈਵਲ ਤੇ ਹੀ ਸਾਨੂੰ ਵੀ ਨਹੀਂ ਲੱਗਦਾ ਸੀ ਕਿਸੇ ਨੂੰ ਆਪਾਂ ਵੀ ਉੱਥੋਂ ਹੀ ਆਏ ਵੀ ਪਾਣੀ ਨਾਲ ਸੋਚਿਆ ਨਹੀਂ ਸੀ ਹੈ ਨਾ ਬਾਅਦ ਜਦੋਂ ਫਿਰ ਗਰਾਊਂਡ ਵਾਟਰ ਹੁਣ ਹਰੇਕ ਸਾਲ ਖੁੱਟਾਂ ਦੇ ਹਿਸਾਬ ਨਾਲ ਥੱਲੇ ਜਾਣ ਲੱਗ ਗਿਆ ਹੌਲ ਹੌਲ ਢੋਲਾ ਜਿਆਦਾ ਪੈਣ ਲੱਗ ਗਿਆ ਜਦੋਂ ਮਹਿਸੂਸ ਹੋਣ ਲੱਗਿਆ ਪਰ ਸਾਡੀ ਜਿਹੜੀ ਪ੍ਰੋਬਲਮ ਸਾਡੇ ਵਾਸਤੇ ਇਹ ਹੋ ਗਈ ਜੀ ਕਿ ਸਾਡੇ ਇਸ ਨੇਚਰਲ ਰਿਸੋਰਸ ਨੂੰ ਫ੍ਰੀ ਦੇ ਵਿੱਚ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਦੂਜੀਆਂ ਸਟੇਟਾਂ ਤੋਂ ਸਾਨੂੰ ਕੁਝ ਵੀ ਫ੍ਰੀ ਨਹੀਂ ਮਿਲਦਾ ਪੰਜਾਬ ਨੂੰ ਸਾਨੂੰ ਕੋਈ ਵੀ ਚੀਜ਼ ਨਹੀਂ ਮਿਲਦੀ ਤੁਸੀਂ ਦੇਖੋ ਥਰਮਲ ਪਲਾਂਟ ਸਟੈਕ ਨੇ ਪੰਜਾਬ ਨੇ ਕਿੰਨੇ ਲੱਖਾਂ ਕਰੋੜਾਂ ਦਾ ਕੋਲਾ ਉੱਥੇ ਲੱਗਦਾ ਹੋਣਾ ਜੀ ਸਾਨੂੰ ਉਹ ਬਿਜਲੀ ਕਿੰਨੀ ਮਹਿੰਗੀ ਪੈ ਰਹੀ ਆ ਪੰਜਾਬ ਦੇ ਪਾਣੀ ਤੋਂ ਬਣਨ ਵਾਲੀ ਬਿਜਲੀ ਮੁਫਤ ਦੇ ਵਿੱਚ ਉਹਨਾਂ ਸਟੇਟਾਂ ਨੂੰ ਉਸੇ ਮਾਤਰਾ ਨਾਲ ਵੰਡ ਦਿੱਤੀ ਗਈ ਜਿਵੇਂ ਪਾਣੀ ਵੰਡਿਆ ਗਿਆ ਇਹ ਅਸੀਂ YouTube ਵੀ ਕਰੀ ਗੱਲ ਨਹੀਂ ਹੁੰਦੀ ਤੁਸੀਂ ਮੀਡੀਆ ਦੇ ਵਿੱਚ ਖਾ ਲੈ ਬਿਜਲੀ ਦੀ ਕੋਈ ਗੱਲ ਹੀ ਨਹੀਂ ਕਰਦਾ ਜੀ ਬਿਜਲੀ ਸਾਡੀ ਵੀ ਲੁੱਟ ਲਈ ਗਈ ਗੈਰ ਸਵਿਧਾਨਕ ਤਰੀਕਿਆਂ ਦੇ ਨਾਲ ਪਰ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਜੀ ਉਹ ਸੱਲੀ ਇੱਕ ਪਾਰਟੀ ਨਹੀਂ ਅਸੀਂ ਕਹੂੰਗਾ ਸਾਰੇ ਹੀ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਜਿਆਦਾ ਬਿਜੀ ਰਹੇ ਜੀ ਇਹਨਾਂ ਦੀਆਂ ਮੈਂ ਦੋ ਤਿੰਨ ਐਗਜ਼ਾਮਪਲ ਦੇਣੀਆਂ ਚਾਹੁੰਦਾ ਜੀ ਇਹਨਾਂ ਦੀਆਂ ਨਿਊਜ਼ ਰਿਪੋਰਟਰਸ ਜਿਹੜੀਆਂ ਮੈਂ ਗੱਲ ਕਰਦਾ ਕਿਉਂਕਿ ਇਹਨਾਂ ਨੇ ਜਨਾਇ ਕੀਤੀਆਂ ਸਾਨੂੰ ਕਿਤੇ ਲੱਭੀਆਂ ਨਹੀਂ ਕਿਸੇ ਵੀ ਭੈਣ ਕੋਲ ਸਾਨੂੰ ਦੇ ਸਕਦਾ ਜੀ 2005 ਦੇ ਵਿੱਚ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਦੇ ਵਿੱਚ 2005 ਦੇ ਟਾਈਮ ਦੇ ਵਿੱਚ 2007 ਚ ਅਕਾਲੀ ਸਰਕਾਰ ਆਈ ਬਾਅਦ ਚ ਉਸ ਟਾਈਮ ਦੇ ਦਾ ਫੈਸਲਾ ਦੇ ਹੈੱਡ ਵਰਕਸ ਜਿਹੜੇ ਆ ਰਾਜਸਥਾਨ ਦੇ ਹਵਾਲੇ ਕਿੱਥੇ ਜਾਣ ਉੱਥੇ ਇੱਕ ਬੰਦੇ ਨੇ ਪਟੀਸ਼ਨ ਕਰ ਦਿੱਤੀ ਰਾਜਸਥਾਨ ਦੇ ਨਹੀਂ ਜੀ ਉਹਦੇ ਬਿਹਾਫ ਤੇ ਉਹਨਾਂ ਨੇ ਫੈਸਲਾ ਦਿੱਤਾ ਕਮਾਲ ਅੱਛਾ ਉਹਦੇ ਬਾਅਦ ਕੈਪਟਨ ਮਿੰਦਰ ਸਿੰਘ ਦਾ ਬਿਆਨ ਆਇਆ ਜੀ ਅਸੀਂ ਇਸ ਪਟੀਸ਼ਨ ਨੂੰ ਚੈਲੰਜ ਕਰਾਂਗੇ ਜਿਹੜਾ ਇਹ ਫੈਸਲੇ ਨੂੰ ਚੈਲੰਜ ਕਰਾਂਗੇ ਅਸੀਂ ਦਾ ਪੈਨਲ ਬਣਾ ਰਹੇ ਜੀ ਤੇ ਕਿਤੇ ਉਹ ਵੀ ਰਿਕਾਰਡ ਨਹੀਂ ਲੱਭਦਾ ਜੀ ਵੀ ਇਹ ਚੈਲੰਜ ਹੋਇਆ ਰਾਜਸਥਾਨ ਹਾਈ ਕੋਰਟ ਦਾ ਗੂਗਲ ਤੋਂ ਸਰਚ ਕਰਕੇ ਕੱਢ ਕੇ ਪੜਿਆ ਜਾ ਸਕਦਾ ਕਹਿੰਦੀ ਵੀ ਉਹਨੂੰ ਦੋ ਰਾਜਸਥਾਨ ਵਾਲਿਆਂ ਨੂੰ ਦੋ ਉਪਕਸ਼ਾ ਦੇ ਪੰਜਾਬ ਦੇ ਹੈੱਡਵਰਕ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਕਹਿੰਦੇ ਸਾਡਾ ਕੰਟਰੋਲ ਚਾਹੀਦਾ ਪੰਜਾਬ ਵਾਲਿਆਂ ਨੂੰ ਚਾਹੀਦਾ ਪਾਣੀ ਫੁੱਲ ਛਡਾਉਣ ਲਈ ਫਿਰ ਦੋ 2005 6ਵੇਂ ਦੇ ਵਿੱਚ ਹੀ ਬਣੀ ਹੈ ਜੀ ਹਾਂਸੀ ਪਟਾਣਾ ਨਹਿਰ ਹਾਂਸੀ ਪਟਾਣਾ ਨਹਿਰ ਦੀ ਕਦੀ ਗੱਲ ਨਹੀਂ ਹੁੰਦੀ ਨਹੀਂ ਹੁੰਦੀ ਹਰਿਆਣੇ ਵੱਲੋਂ 109 ਕਿਲੋਮੀਟਰ ਲੰਮੀ ਨਹਿਰ ਪੁੱਟ ਕੇ ਜੀ ਹਰਿਆਣੇ ਨੇ ਉਹ ਪਖੜਾ ਮੇਨ ਲਾਈਨ ਦੇ ਨਾਲ ਲਿਆ ਕੇ ਛੱਡੀ ਹੋਈ ਆ ਜਿਹਦੇ ਵਿੱਚੋਂ ਪਾਣੀ ਵੀ ਛੱਡ ਲੈਣਾ ਸੀ ਜੀ ਨੰਦੇ ਦੇ ਵਿੱਚ ਆ ਕੇ ਪੰਜਾਬ ਗਵਰਨਮੈਂਟ ਨੇ ਉਹ ਜਿਹੜੇ ਕਾੜਾਤਾ ਉਹ ਸਟੇ ਪੈਂਡਿੰਗ ਪਿਆ ਹੋਇਆ ਜੀ ਅੱਜ ਵੀ ਐਨੀ ਟਾਈਮ ਉਸ ਨਹਿਰ ਦੇ ਵਿੱਚ ਪਾਣੀ ਛੱਡਿਆ ਜਾ ਹਾਲਾ ਜੇ ਕੱਲ ਨੂੰ ਉਹ ਕੋਰਟ ਦੇ ਵਿੱਚੋਂ ਉਹ ਪੱਟੀ ਪਈ ਹੈ ਜੀ ਰੈਡੀ ਪਈ ਆ ਨਹਿਰੋ ਉਹ ਜਿਹੜੀ ਹਾਸੀ ਬਟਾਲਾ ਨਹਿਰ ਦਾ ਦੇਖੋ ਪੰਜਾਬ ਦੇ ਲੀਡਰ ਕਦੀ ਜਿਗਮ ਨਹੀਂ ਕਰਦੇ ਤੁਸੀਂ ਤੁਸੀਂ ਦੇਖਿਓ ਐਸਵਾਈਐਲ ਐਸਵਾਈਐਲ ਐਸਵਾਈਐਲ ਚ ਸਾਨੂੰ ਉਲਝਾ ਦਿੱਤਾ ਜੀ ਐਸਵਾਈਐਲ ਦਾ ਜਿਹੜਾ ਐਸਵਾਈਐਲ ਦਾ ਜਿਹੜਾ ਸੁੱਕੀ ਨਹਿਰ ਆਣਾ ਜੀ ਇਹ ਬੋਟਾ ਵਾਲੀ ਨਹਿਰ ਬਣ ਗਈ ਹਾਂ ਬਸ ਹਾਂ ਇਹ ਬੋਟਾ ਵਾਲੀ ਨਹਿਰ ਬਣਾਤੀ ਹਾਸੀ ਬਟਾਲਾ ਨਹਿਰ ਪੱਟੀ ਗਈ ਆ ਜੀ ਉਹ 2000 ਬਟਾਲਾ ਨੂੰ ਫੀਡ ਕਿਨੇ ਕਰਨਾ ਪਾਖੜਾ ਨੇ ਪਾਖੜਾ ਦੇ ਵਿੱਚ ਉਹਨਾਂ ਨੇ ਪਾਖੜਾ ਪਾਖੜਾ ਦੇ ਵਿੱਚ ਪਾਣੀ ਪੁੱਜ ਪਾਖੜਾ ਦੇ ਵਿੱਚ ਪਾਣੀ ਹੋਰ ਛੱਡ ਕੇ ਤੁਸੀਂ 220 115 ਦੀਆਂ ਅਖਬਾਰਾਂ ਕੱਢੋ ਜੀ 215 ਦੀਆਂ ਕਿਸਾਨ ਯੂਨੀਅਨਾਂ ਦੇ ਸ ਉਦੋਂ 400 ਕਿਊਸਿਕ ਵੱਧ ਪਾਣੀ ਛੱਡਿਆ ਛੱਡਣ ਦਾ ਰੋਲਾ ਪਿਆ ਪਾਖੜਾ ਕਨਾਲ ਦੇ ਵਿੱਚ ਉਹਨੂੰ ਪੰਜਾਬ ਸਰਕਾਰ ਨੇ ਕਿਤੇ ਵੀ ਡਿਨਾਈ ਨਹੀਂ ਕੀਤਾ ਜੀ ਵੀ ਇਹ ਹੋ ਰਿਹਾ ਕਿ ਨਹੀਂ ਹਾਂ ਉਹ ਪਾਣੀ ਪਾਖੜਾ ਦੇ ਵਿੱਚੋਂ ਜਿੰਨਾ 3.5 ਮਿਲੀਕੜ ਫੁੱਟ ਉਹਨਾਂ ਨੂੰ ਮਿਲਣ ਦਾ ਜਿਹੜਾ ਵਾਅਦੇ ਕੀਤੇ ਗਏ ਸੀ ਜਿਹੜੇ ਗੈਸਬਧਾਨਕ ਤੌਰ ਤੇ ਉਹਦੇ ਨਾਲੋਂ ਅੱਧਿਓਂ ਵੱਧ ਪਾਣੀ ਉਹ ਪਾਖੜਾ ਦੇ ਥਰੂ ਉਦਾਂ ਹੀ ਲਈ ਜਾਂਦੇ ਸੀ ਪਹਿਲਾਂ ਹੀ ਐਸਵਾਈਐਲ ਦਾ ਤਾਂ 1.6 ਮਿਲੀਅਨ ਇਕੜ ਫੁੱਟ ਦਾ ਰੋਲਾ ਲੈ ਜਾਂਦਾ ਉਹ ਪਾਣੀ ਹੈ ਹੀ ਨਹੀਂ ਸਾਡੇ ਕੋਲ ਕਿਉਂਕਿ ਸੋ ਗੈਸਬਧਾਨਕ ਸਮਝੌਤੇ ਜੀ ਵੀ ਇੱਕਦਾਲ ਲਿਖੀ ਸੀ ਜੇ دریاਵਾ ਚ ਪਾਣੀ ਦੀ ਸਪਲਾਈ ਘਟ ਜੂਗੀ ਉਸੇ ਉਸੇ ਰੇਸ਼ੋ ਦੇ ਨਾਲ ਸਟੇਟਾਂ ਨੂੰ ਉਹਦੀ ਪਾਣੀ ਘਟਾ ਪਾਣੀ ਘਟਾ ਦਿੱਤਾ ਜੋ ਉਹਦੀ ਕੋਈ ਗੱਲ ਨਹੀਂ ਕਰਦਾ ਜੀ ਕੋਈ ਇਹ ਗੱਲ ਨਹੀਂ ਕਰਦਾ ਵੀ ਸਾਡੇ ਕੋਲ ਉਹਨਾਂ ਪਾਣੀ ਹੈ ਨਹੀਂ ਅਸੀਂ ਆਪਣੇ ਸਾਡੇ ਆਪਣੇ ਦੇ ਵਿੱਚ ਇੱਕ ਹੋਰ ਗੱਲ ਇੱਕ ਸਮਝੌਤੇ ਚ ਲਈ ਪੰਜਾਬ ਪਹਿਲਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਫੇਰ ਪਾਣੀ ਦੇਊਗਾ ਜੀ ਦੂਜੀਆਂ ਸਟੇਟਾਂ ਉਹਦੇ ਤੇ ਵੀ ਸਾਡੇ ਲੀਡਰ ਨਹੀਂ ਖੜਦੇ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਨੇ ਪੰਜਾਬ ਦੀਆਂ ਨਹਿਰਾਂ ਬੰਦ ਕਰਕੇ ਵੀ ਦੂਜੀਆਂ ਸਟੇਟਾਂ ਨੂੰ ਪਾਣੀ ਪੂਰਾ ਕਰਨ ਦੇ ਦੋਸ਼ ਲੱਗਦੇ ਆ ਜੀ ਇਹ ਇਹ ਦੇ ਇਹਦੇ ਬਾਰੇ ਤਾਂ ਦੇਖੋ ਸਿਆਸੀ ਲੋਕਾਂ ਨੂੰ ਪਤਾ ਹੋਊਗਾ ਕਿ ਸਚਾਈ ਕੀ ਹੈ ਜੀ ਹਨਾ ਖਵਾਲਾਂ ਦੇ ਵਿੱਚ ਬਿਆਨ ਲੱਗਦੇ ਆ ਇਹ ਇਹ ਬੜੀ ਜੀ ਸਟੋਰੀ ਆ ਨਾ ਜੀ ਬੜੀ ਕ੍ਰਿਚਲ ਸਟੇਜ ਤੇ ਪਹੁੰਚੀ ਹੋਈ ਹੈ ਜੀ ਹੁਣ ਇਹ ਕਰਦੇ ਆ ਜੀ ਅੱਜਵਾਰ ਵਪਾਰਕ ਸੰਲੇਸ਼ਣ ਸਿੰਘ ਗੋਣੀ ਸਿੰਘ ਗੋਣਾ ਨੂੰ ਠੀਕ ਕਰ ਲਈ ਹੁਣ ਕੀ ਕਰ ਸਕਦੇ ਆ ਆ ਤਾਂ ਚੀਜ਼ਾਂ ਪਾਸਟ ਦੀਆਂ ਪਰ ਦਸਤੀਆਂ ਆਵੇ ਅਕਰਤਾ ਹੁਣ ਇਸ ਗਰਾਉਂਡ ਰਿਐਲਿਟੀ ਤੇ ਜ਼ਮੀਨੀ ਪੱਧਰ ਤੇ ਹੁਣ ਕੀ ਕੀਤਾ ਜਾ ਸਕਦਾ ਤੇ ਰਾਜਨੀਤਿਕ ਜਿਹੜੇ ਰਾਸਲੇ ਹੋ ਰਹੇ ਨੇ ਰਾਜਨੀਤਿਕ ਪਾਰਟੀਆਂ ਜ਼ੋਰ ਚਾ ਰਹੀਆਂ ਨੇ ਤਿੰਨੇ ਪਾਰਟੀਆਂ ਦਾ ਮੁਲਾਂਕਣ ਕਰਾਂਗੇ ਕਿ ਕਿਹੜੀ ਪਾਰਟੀ ਕੀ ਕਰ ਸਕਦੀ ਹੈ ਇਹਨੀਆਂ ਨੇ ਕੀ ਕੀਤਾ ਤੇ ਜਿਹੜਾ ਹੁਣ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਆਜੂ ਕੀ ਇਹਨਾਂ ਦੇ ਰਾਹੀਂ ਕੁਝ ਹੋ ਸਕਦਾ ਹਲੇ ਭਵਿੱਖ ਹੈ ਪਰ ਮੂਰੇ ਗੱਲ ਨਹੀਂ ਕਰ ਸਕਦੇ ਪਰ ਕਿਵੇਂ ਹੋਊਗਾ ਦੋ ਜਗ੍ਹਾ ਤੇ ਸੈਂਟਰ ਦੇ ਵਿੱਚ ਰੂਲ ਕਰਨ ਦੀ ਚਾਹਵਾਨ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਗੱਲ ਕਿਵੇਂ ਹੋ ਜੇ ਦੇਸ਼ ਇੱਕ ਹੈ ਰਾਜਸਥਾਨ ਨੂੰ ਪਾਣੀ ਦੀ ਜ਼ਰੂਰਤ ਹੈ ਪੰਜਾਬ ਪਾਣੀ ਦਿੰਦਾ ਪਰ ਪੰਜਾਬ ਕੋਲ ਪਾਣੀ ਹੋਊ ਤਾਂ ਹੀ ਅੱਗੇ ਜਾਊ ਨਾ ਵਪਾਰ ਖੰਦੇਸ਼ਾਂ ਤੋਂ ਬਾਅਦ ਵਾਪਸ ਆਉਂਦੇ ਇਹਨਾਂ ਵੀਰਾਂ ਨੇ ਜਿਹੜੇ ਆਮ ਰੋਜ਼ ਮਰਦ ਦੀ ਜ਼ਿੰਦਗੀ ਸਾਡੇ ਦਿਹਾੜੀਆਂ ਕਰਕੇ ਬੱਚੇ ਆਪਣੇ ਪਾਲਦੇ ਆ ਇਹਨਾਂ ਦੀ ਸਿੱਧਤ ਹੈ ਕਿ ਸਾਡੀ ਹੂਕ ਆ ਪਹਿਲੀ ਪੀੜ੍ਹੀ ਦੀ ਪੰਜਾਬ ਚੋਂ ਆਇਆਂ ਦੀ ਅਸੀਂ ਲੇੜਾ ਮਾਰਨੀਆਂ ਨੇ ਪਰ ਉਹ ਲੇੜਾ ਕਿੰਨਾ ਚਿਰ ਵੱਜਣੀਆਂ ਨੇ ਇਹ ਵੀ ਸਾਨੂੰ ਪਤਾ ਜਿੱਦਣ ਅਸੀਂ ਅੱਖਾਂ ਮੀਚ ਕੇ ਜਿਹੜੇ ਅਸੀਂ ਇੱਥੇ ਜੰਮੇ ਆ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਲਈ ਨਹੀਂ ਤਰਫਣਾ। ਅਵੈਂਚੂਰਲੀ ਕੀ ਹੋਣਾ? ਮੇਰੇ ਬਹੁਤ ਵਾਰ ਮਨ 'ਚ ਸਵਾਲ ਹੁੰਦਾ ਹੈ ਕਿ ਉਹ ਰਾਜੇ ਰਾਜ ਕਿਹਦੇ ਤੇ ਕਰਨਗੇ ਜੇ ਲੋਕ ਉੱਜੜ ਗਏ। ਸਾਡ ਅੱਜ ਰਾਜਿਆਂ ਨੂੰ ਕੁਝ ਨਹੀਂ ਹੁੰਦਾ। ਰਾਜਿਆਂ ਦੇ ਪੈਸੇ ਸੈੱਟ ਨੇ, ਰਾਜੇ ਫਲਾਈ ਕਰਕੇ ਦੂਜੀ ਜਗ੍ਹਾ ਚਲੇ ਜਾਣਗੇ ਪਰ ਪੰਜਾਬ ਦਾ ਭਵਿੱਖ ਪਾਣੀਆਂ ਤੋਂ ਬਿਨਾ ਕਿਉਂ ਜਿਹਾ ਹੋਏਗਾ? ਹੁਣ ਸਰਸਕ੍ਰੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਫਾਈਨਲ ਸੌਲਟ ਫਿਲਮ ਉਹਨਾਂ ਨੇ ਬਹੁਤ ਮਿਹਨਤ ਨਾਲ ਬਣਾਈ। ਇੱਕ ਘੰਟੇ ਦੇ ਵਿੱਚ ਸਭ ਤੁਹਾਨੂੰ ਪਤਾ ਲੱਗਦਾ ਅਸਲ ਗਰਾਉਂਡ ਰਿਐਲਿਟੀ ਕੀ ਹੈ ਬਾਈ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਹਰਜੀਤ ਵੀਰ ਅੱਛਾ ਬਾਈ ਜੀ ਇਹ ਹੁਣ ਗੱਲਾਂ ਹੋ ਗਈਆਂ ਆਪਾਂ ਸਮਝਾਤੀਆਂ ਤਿੰਨ ਕੜੀਆਂ ਦੇ ਵਿੱਚ ਹੁਣ ਇਮੀਡੀਏਟ ਜਿਹੜਾ ਐਕਸ਼ਨ ਹੋ ਸਕਦਾ ਜਿੱਥੋਂ ਇਸ ਗੱਲ ਨੂੰ ਪੰਜਾਬ ਦਾ ਜਾ ਰਿਹਾ ਪਾਣੀ ਰੁਕ ਸਕਦਾ ਇੱਕ ਤਾਂ ਰੀਚਾਰਜ ਕਰਨ ਦੀਆਂ ਗੱਲਾਂ ਨੇ ਵੀ ਚਲੋ ਝੋਨਾ ਦਾ ਲਾਏ ਹੋਏ ਨਾ ਲਾਏ ਉਹ ਤਾਂ ਅਲੱਗ ਗੱਲ ਆ ਪਰ ਜਿਹੜਾ ਜਾਂਦਾ ਦਿਨ ਰਾਤ ਵਗਦਾ ਪਾਣੀ ਹੈ ਨਾਨ ਰਿਪੇਰੀਅਨ ਸਟੇਟਸ ਨੂੰ ਉਹਦੀ ਸ਼ੁਰੂਆਤ ਕਿੱਥੋਂ ਹੋ ਸਕਦਾ ਬੇਈਤੀ ਇਹ ਹੈ ਇਸ ਚੀਜ਼ ਨੂੰ ਜੇ ਰੋਕਣਾ ਜੇ ਨੱਥ ਪਾਉਣੀ ਆ ਲੋਕਾਂ ਦੇ ਆਭਾਰ ਤੋਂ ਬਿਨਾ ਇਹ ਪੋਸੀਬਲ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਪੋਲੀਟੀਕਲ ਪਾਰਟੀਆਂ ਵੱਲ ਵੀ ਦੇਖਦੇ ਆ ਨਾ ਏਸੈਂਸ਼ੀਅਲੀ ਪੋਲੀਟੀਕਲ ਪਾਰਟੀਆਂ ਦੀ ਮਜਬੂਰੀ ਵੀ ਉਦੋਂ ਹੀ ਬਣਦੀ ਹੈ ਜਦੋਂ ਲੋਕ ਮਜਬੂਰੀ ਬਣਾਉਂਦੇ ਆ ਉਹਨਾਂ ਦੀ ਠੀਕ ਕੋਈ ਵੀ ਪ੍ਰੋਸੈਸ ਆ ਜਿਹੜਾ ਜਿੰਨਾ ਚਿਰ ਲੋਕਾਂ ਦੇ ਵਿੱਚ ਇਹ ਇੱਕ ਜਮੈਂਨੇ ਲੋਕ ਲਹਿਰ ਦੇ ਰੂਪ 'ਚ ਇਹ ਇਸ਼ੂ ਨਹੀਂ ਖੜਦਾ ਤੇ ਪੰਜਾਬੀਆਂ ਦਾ ਇਸ਼ੂ ਬਣ ਕੇ ਨਹੀਂ ਇਹ ਉੱਠਦਾ ਕਿਉਂਕਿ ਜਦੋਂ ਹੀ ਇਹਨਾਂ ਨੇ ਇਸ ਇਸ਼ਿਊ ਨੂੰ ਇੱਕ ਸੈਕਸ਼ਨ ਦਾ ਇਸ਼ਿਊ ਬਣਾਤਾ ਜਿਹਦੇ ਵਿੱਚ ਉਹ ਮਾਰਨੇ ਸਿੱਖ ਦਾ ਬਣਾਦਾ ਫਿਰ ਉੱਤਰਾ ਬਣਾਤਾ ਫਿਰ ਉਹਨਾਂ ਨੂੰ ਉਹਨੂੰ ਕੁੱਚਣ ਲਈ ਕੋਈ ਟਾਈਮ ਨਹੀਂ ਲੱਗਣਾ ਬਹੁਤ ਛੇਤੀ ਬੜੇ ਆਰਾਮ ਨਾਲ ਕੁੱਚੜ ਸਕਦੇ ਲੱਗਣ ਇਸ ਕਰਕੇ ਜਿੰਨਾ ਚਿਰ ਸਮੁੱਚੇ ਪੰਜਾਬੀਆਂ ਦਾ ਇਸ਼ਿਊ ਨਹੀਂ ਬਣਦਾ ਤੇ ਇੱਕ ਲਾਮਬੰਦੀ ਦੇ ਨਾਲ ਖੜਦੇ ਨਹੀਂ ਇਹਦੇ ਤੇ ਕੁਝ ਵੀ ਐਕਸਪੈਕਟ ਕਰਨਾ ਮੇਰਾ ਖਿਆਲ ਆ ਵੀ ਐਵੇਂ ਹਵਾ ਚ 12 ਮਾਰਚ ਤੋਂ ਦੇ ਕੀ ਕੀਤਾ ਜਾ ਸਕਦਾ ਟੈਕਨੀਕਲਟੀ ਕਿੱਥੋਂ ਸ਼ੁਰੂ ਹੋ ਸਕਦੀ ਹੁਣ ਜਿਵੇਂ ਵੀ ਆਪਣੇ ਕਈ ਵਾਰ ਦਿਮਾਗ ਚੋਂ ਦਾ ਜੀ ਸੁਪਰੀਮ ਕੋਰਟ ਚ ਚਲੇ ਜਾਈਏ ਇੱਥੇ ਚਲੇ ਟੈਕਨੀਕਲ ਆਪਣਾ ਦੇਖਣਾ ਹੋਵੇ ਤਾਂ ਜਿਹੜਾ 1966 ਦਾ ਰੀਆਰਗੇਨਾਈਜੇਸ਼ਨ ਐਕਟ ਆ ਉਹ ਪੰਜਾਬ ਦੇ ਸਾਰੇ ਹੱਕ ਉਹੀ ਇੱਕਥੋਂ ਲੈਂਦਾ ਜਿਹੜੀਆਂ ਬਾਅਦ ਵਾਲੀਆਂ ਗੱਲਾਂ ਨਾ ਵੀ ਕੀ ਅਸੀਂ ਕਰਨਾ ਨਹੀਂ ਕਰਨਾ ਜਿੰਨਾ ਚਿਰ ਪਾਣੀਆਂ ਦੇ ਹੱਕ ਪੰਜਾਬ ਕੋਲ ਵਾਪਸ ਨਹੀਂ ਆਉਂਦੇ ਜਿੰਨਾ ਚਿਰ ਉਹ ਰੀਆਰਗੇਨਾਈਜੇਸ਼ਨ ਐਕਟ ਨੂੰ ਰੱਦ ਕੀਤਾ ਜਾਂਦਾ ਉਹ ਉਹਨਾਂ ਚਰਤਾں ਬਿਲਕੁਲ ਕਿਸੇ ਵੀ ਤਰ੍ਹਾਂ ਦੀ ਪ੍ਰੋਸੀਡਿੰਗ ਆ ਜਿਹੜੀ ਉਹ 20 25 25 ਸਾਲਾਂ ਲੰਮ ਖਦੀ ਰਹੂਗੀ ਆਪਾਂ ਹੋਰਾਂ ਕੇਸਾਂ 'ਚ ਵੀ ਦੇਖਿਆ ਕਿਉਂਕਿ ਜਿਹਦੇ ਤੋਂ ਆਪਾਂ ਇਨਸਾਫ਼ ਮੰਗਦੇ ਜਿੰਨਾ ਚਿਰ ਆਪਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਕੀ ਇਹ ਪਿਲੇਖੇ ਚ ਹੋਈ ਚੀਜ਼ ਆ ਕਿ ਇਹ ਗਲਤੀ ਨਾ ਹੋਈ ਚੀਜ਼ ਹੈ ਕਿ ਕੀ ਇਹ ਜਾਣਬੁੱਝ ਕੇ ਗਣੀ ਨਹੀਂ ਮਿਤੀ ਸ਼ਾਹੇਸ਼ਾ ਹੁਣ ਜੇ ਕੋਈ ਕੰਮ ਮੈਂ ਗਣਮਤ ਕੇ ਕਰ ਰਿਹਾ ਤੇ ਤੁਸੀਂ ਮੇਤੋਂ ਆ ਕੇ ਉਹੀ ਚੀਜ਼ ਐਕਸਪੈਕਟ ਕਰਦੇ ਮੈਂ ਤਾਂ ਸਾਰੂਗਾ ਹੀ ਮੈਂ ਤਾਂ ਉਹਨੂੰ ਲਟਕਾਉਂਗਾ ਕਿਉਂਕਿ ਮੈਨੂੰ ਕੋਈ ਭਲੇਖਾ ਨਹੀਂ ਹੈਗਾ ਤੇ ਮੈਂ ਕੀ ਕੀਤਾ ਮੈਂ ਤਾਂ ਉਹਨੂੰ ਇੱਕ ਬਿਲਕੁਲ ਪਲੈਨਿੰਗ ਨਾ ਕੀਤਾ ਹਾਂ ਜਿਹੜਾ ਟਰੋੜਾ ਸਟੈਪ ਹੋਊ ਮੈਂ ਉਹਨੂੰ ਕਿਵੇਂ ਹੈਂਡਲ ਕਰਨਾ ਉਹਦੀ ਫਰਦਰ ਪਲੈਨਿੰਗ ਤੇ ਪੈ ਜੂਗਾ ਸੋ ਆਪਾਂ 84 ਦੇ ਜਿੰਨੇ ਜਿਹੜਾ ਸਾਰੇ ਐਪੀਸੋਡ ਨੂੰ ਦੇਖੀਏ ਜਸ ਤਰੀਕੇ ਨਾਲ ਵੀ ਸਿੱਖਾ ਨੇ ਉਹਨਾਂ ਉਹਦੇ ਤੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਆ 30 ਸਾਲ ਹੋ ਗਏ ਕਿਵੇਂ ਲਟਕਾਇਆ ਪਾਣੀ ਦਾ ਸੁਪਰੀਮ ਕੋਰਟ ਨੇ ਕਿਵੇਂ ਲਟਕਾਇਆ ਇਹ ਹੋਰ 20 50 ਸਾਲ ਲਟਕਦਾ ਫਿਰੂਗਾ ਕਿਉਂਕਿ ਜਿੰਨਾ ਚਿਰ ਇਹਦੀ ਜੜ ਨਹੀਂ ਮਟੋ ਜਾਂਦੀ ਤੇ ਲੋਕਾਂ ਦੇ ਵਿੱਚ ਇੱਕ ਕਲੈਕਟਿਵ ਨਹੀਂ ਆਉਂਦੀ ਵੀ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਪਾਣੀਆਂ ਨੂੰ ਨਹੀਂ ਬਚਾਉਣਾ ਹੁਣ ਗੱਲ ਪਾਣੀ ਤੇ ਨਹੀਂ ਸਿਰਫ ਖੜੀ ਹੁਣ ਗੱਲ ਪੰਜਾਬ ਦੀ ਹੋਂਦ ਤੇ ਖੜੀ ਵੀ ਕੀ ਉਸ ਖਿੱਤੇ ਦੇ ਵਿੱਚ ਜਿਵੇਂ ਪੰਜਾਬ ਅੱਜ ਬਸਦਾ ਪੰਜਾਬ ਐ ਹੋਊਗਾ ਜਾਂ ਪੰਜਾਬ ਇੱਕ ਡੇਜ਼ਰਟ ਲੈਂਡ ਤੇ ਉੱਥੋਂ ਦੇ ਜਿਹੜੇ ਵਸਿੰਦੇ ਆ ਹਰੇਕ ਨਾ ਭਲੇਖਾ ਹੋਊਗਾ ਕਿਸੇ ਨੂੰ ਹੋਊਗਾ ਜੀ ਮੈਂ ਗੁਰਗਾਹ ਤੇ ਜਾਊਂਗਾ ਕਿਸੇ ਨੂੰ ਹੋਊਗਾ ਮੈਂ ਦਿੱਲੀ ਚ ਜਾਊਂਗਾ ਦੂਜਿਆਂ ਨੂੰ ਕਿਸੇ ਨੂੰ ਕੈਨੇਡਾ ਜਾਂ ਸਾਊਦੀ ਅਰਬ ਦਾ ਹੋਊਗਾ ਤੇ ਬਾਕੀ ਮਿਲੀਅਨਸ ਨੂੰ ਤਾਂ ਕੁਛ ਨਹੀਂ ਦਖਦਾ ਉਹ ਉਸ ਕਿਤੇ ਨੇ ਉੱਥੇ ਐਗਜ਼ਿਸਟ ਕਰਨਾ ਤਾਂ ਵੇਟ ਇਸ ਜਾਂ ਉੱਥੋਂ ਉੱਜੜਨਾ ਉੱਥੇ ਗੱਲ ਖੜੀ ਆ ਸਿਰਫ ਪਾਣੀਆਂ ਤੇ ਜਾਣ ਕੇ ਨਾ ਦੇਖੀ ਵੀ ਚੱਲ ਪਾਣੀ ਹੋਈ ਸਹੀ ਸਰਕਾਰ ਜੇ ਕੋਈ ਸਿਹਰ ਦਾ ਆਜਵੇ ਜਿਹੜਾ 1966 ਦਾ ਤੁਸੀਂ ਕਹਿੰਦੇ ਹੋ ਜਦ ਹੋਇਆ ਉਦੋਂ ਜੇ ਠੀਕ ਕਰਨਾ ਵੇ ਧਰਾਮਾ 78 79 80 ਨੇ ਜਿਹੜੀਆਂ ਰੱਦ ਕਰਨੀਆਂ ਹੁਣ ਉਹਦੇ ਲਈ ਕਰਨਾ ਕੀ ਪੰਜਾਬ ਦੇ ਵਿਧਾਨ ਸਭਾ 'ਚ ਮਤਾ ਕਰਨਾ ਪਊ ਜਾਂ ਸੁਪਰੀਮ ਕੋਰਟ 'ਚ ਫੇਰ ਦੇਣਾ ਵੇ ਦੇਖੋ ਜੱਨਾਚਰ ਦਾ ਸੁਪਰੀਮ ਕੋਰਟਾਂ ਵਾਲੇ ਚੱਕਰ ਚ ਜੇ ਪਹਿਲੀ ਤਾਂ ਗੱਲ ਜਿਵੇਂ ਆਪਾਂ ਕਹਿੰਦੇ ਹ ਸਹਾਰਦ ਤੋਂ ਤੋਂ ਸਾਡਾ ਕੀ ਭਾਵ ਆ ਕਿ ਉਹ ਸਰਕਾਰ ਨੇ ਨੈਸ਼ਨਲ ਲੈਵਲ ਤੇ ਕੁਝ ਕਰਨਾ ਰਾਜ ਕਰਨਾ ਹੁਣ ਜੇ ਉਹਨਾਂ ਨੇ ਹਿੰਦੋ ਜਿਹੜੀ ਵੀ ਪਾਰਟੀ ਆ ਰਿਗਾਰਡਲੈਸ ਉਹ ਨੈਸ਼ਨਲ ਪਾਰਟੀ ਦੇ ਤੌਰ ਤੇ ਉਹਨਾਂ ਨੇ ਰਾਜ ਕਰਨਾ ਉਹਨਾਂ ਦੇ ਲਈ ਪੰਜਾਬ ਕੱਖ ਨਹੀਂ ਕੱਖ ਨਹੀਂ ਹੈਗਾ ਉਹ ਉਹ ਉਹ ਵਰਤਿਆ ਜਾ ਸਕਦਾ ਉਹ ਸਪੈਂਡ ਕੀਤਾ ਜਾ ਸਕਦਾ ਹੈਗਾ ਕਿਉਂਕਿ ਉੱਥੋਂ ਆਪਾਂ ਨੂੰ ਦੇਖਣਾ ਪੈਣਾ ਕੀ ਦੇ ਤੌਰ ਤੇ ਪੰਜਾਬ ਕੀ ਕਰ ਸਕਦਾ ਸੈਟਅਪ ਦੇ ਵਿੱਚ ਉਹ 356 ਦੇ ਵਿੱਚ ਉਹ ਪੰਜਾਬ ਦੇ ਉਹ ਬੰਦੇ ਕੀ ਕਰ ਸਕਦੇ ਨੇ ਜਿੰਨਾ ਚਿਰ ਸਾਨੂੰ ਇਸ ਪੂਰੇ ਉਹ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਸਾਡੀ ਔਕਾਤ ਕੀ ਆ ਉਸ ਸਾਰੇ ਸੈਟਅਪ ਦੇ ਵਿੱਚ ਉਹਨਾਂ ਚਿਰ ਅਸੀਂ ਅਮੇਂ ਬੇ ਲੋੜੀਆਂ ਤਾਂ ਲਾ ਸਕਦੇ ਆ ਪਰ ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਕਿਉਂਕਿ ਹਲੇ ਤਾਂ ਅਸੀਂ ਪੰਜਾਬੀ ਨਹੀਂ ਇਕੱਠੇ ਹੋ ਕੇ ਖੜੇ ਹੋਏ ਜਦੋਂ ਅਸੀਂ ਉਹ ਅਵੇਅਰਨੈਸ ਦੇ ਨਾਲ ਇੱਕ ਸਮੁੱਚਾ ਪੰਜਾਬ ਖੜਾ ਹੋਊਗਾ ਉਦੋਂ ਉਹਦੇ ਸਮੀਕਰਨ ਬਦਲ ਸਕਦੇ ਨੇ ਪਰ ਅੱਜ ਦੀ ਤਰੀਕ 'ਚ ਜਿਵੇਂ ਅੱਜ ਅਸੀਂ ਹੈਗੇ ਆ ਅੱਜ ਦੀ ਤਰੀਕ 'ਚ ਕੁਛ ਵੀ ਕਹਿਣਾ ਮੇਰਾ ਖਿਆਲ ਆ ਐਮੀ ਸੁਪਨੇ ਦੇਖਣ ਦੇ ਬਾਰੇ ਜੀ ਜਿਵੇਂ ਜਿਸ ਤਰ੍ਹਾਂ ਤੁਸੀਂ ਆਸਵੰਦ ਨਹੀਂ ਹੋ ਜਾਂ ਆਪਾਂ ਆਸਵੰਦ ਨਹੀਂ ਜਿਹੜੇ ਆਪਾਂ ਹੁਣ ਦੁਖੀ ਆ ਜੇ 50ਆਂ ਦੇ ਨੇੜੇ ਆਪਾਂ ਪੁਰਖ ਬਜ਼ੁਰਗ 75 ਦੇ ਨੇ ਸਾਡੀ ਪੀੜ੍ਹੀ ਤੁਰ ਗਈ ਜਿਹੜੇ ਬਾਹਰੋਂ ਆਪਾਂ ਬੋਲਦੇ ਆ ਉੱਥੇ ਤਾਂ ਬੋਲਦਾ ਨਹੀਂ ਕੋਈ ਪਰ ਇਹ ਸਥਾਤੀ ਛੇਤੀ ਹੱਲ ਨਹੀਂ ਉਹ ਦੇ ਤੱਕ ਅਜੇ ਤੋਂ 15-20 ਸਾਲਾਂ ਤੱਕ ਨੀਅਤ ਹੋ ਚੁੱਕੀ ਹੈ ਨਹੀਂ ਆਸਵੰਦ ਬਿਲਕੁਲ ਮਰਾਸ਼ਾ ਲੱਗਦੀ ਜ਼ਰੂਰ ਹੈਗੀ ਹੈ ਕਿਉਂਕਿ ਜਦੋਂ ਤੁਸੀਂ ਗਰਾਊਂਡ ਰਿਐਲਿਟੀ ਨੂੰ ਦੇਖਦੇ ਆ ਪਰ ਮਰਾਸ਼ਾ ਇਸ ਲੈਵਲ ਤੇ ਵੀ ਨਹੀਂ ਹੈ ਮੇਰਾ ਉਹ ਕਹਿਣ ਦਾ ਸਰ ਭਾਵੇ ਆ ਵੀ ਅਸੀਂ ਕਿਹੜੀ ਚੀਜ਼ ਨੂੰ ਸੁਪਨੇ 'ਚ ਵਸਾ ਕੇ ਕਈ ਵਾਰ ਅਸੀਂ ਗਲਤ ਭਲੇਖਿਆਂ ਦੇ ਵਿੱਚ ਗਲਤ ਮਾਪਦੰਡ ਲੈ ਕੇ ਇੱਕ ਡ੍ਰੀਮ ਜਿਹਾ ਲੈ ਲੈਂਦੇ ਆ ਵੀ ਯਾਰ ਇਹਨੂੰ ਕਰਤਾ ਹੁਣ ਹਰਜੀਤ ਸਿੰਘ ਆ ਗਿਆ ਹੁਣ ਹਰਜੀਤ ਸਿੰਘ ਸਾਰਾ ਕੁਝ ਸੱਤ ਕਰ ਦੂਗਾ ਉਹੋ ਭਲੇਖੇ 'ਚ ਨਾ ਜਾਈਏ ਅਸੀਂ ਅਸੀਂ ਰਿਐਲਿਟੀ ਨੂੰ ਫੇਸ ਕਰੀਏ ਪਰ ਜਿਹੜੇ ਲੋਕਾਂ ਨੇ ਉੱਠ ਕੇ ਪੰਜਾਬੀਆਂ ਦਾ ਇਹ ਕੈਰੇਕਟਰ ਵੀ ਹੈ ਇੱਕ ਉਹਨਾਂ ਨੇ ਬ੍ਰਿਟਿਸ਼ ਤੇ ਅਫਦਾਲੀ ਤੱਕ ਨੂੰ ਚੱਲਦਾ ਕਰਤਾ ਉਹ 20ਵੀਂ ਆਪਾਂ ਨੂੰ ਹਿਸਟਰੀ ਭੁੱਲਣੀ ਚਾਹੀਦੀ ਪਰ ਉਹਦੇ ਲਈ ਇੱਕ ਕੰਡੀਸ਼ਨ ਉਹਦੇ ਲਈ ਉਹਨਾਂ ਨੂੰ ਉੱਠਣਾ ਪਊਗਾ ਇਸ ਕਰਕੇ ਜਿਹੜੇ ਸਾਡੇ ਐਕਸ਼ਨ ਆ ਜਾਂ ਜਿਹੜੀਆਂ ਵੀ ਸਾਡੀਆਂ ਕੋਸ਼ਿਸ਼ਾਂ ਉਹ ਕੋਸ਼ਿਸ਼ਾਂ ਗਲਤ ਫੇਮ ਚ ਨਹੀਂ ਹੋਣੀਆਂ ਚਾਹੀਦੀਆਂ ਉਹ ਕੋਸ਼ਿਸ਼ਾਂ ਸਹੀ ਡਾਇਰੈਕਸ਼ਨ ਚ ਹੋਣੀਆਂ ਚਾਹੀਦੀਆਂ ਪੰਜਾਬੀਆਂ ਨੂੰ ਇੱਕਜੁੱਟ ਕਰਕੇ ਖੜੇ ਕਰਨ ਵੱਲ ਜਿਹੜੀਆਂ ਕੋਸ਼ਿਸ਼ਾਂ ਉਹ ਫਲ ਲਿਆਉਣਗੀਆਂ ਪਰ ਉੰਜੀ ਉਸ ਸਾਰੇ ਕੰਮ ਨੂੰ ਛੱਡ ਕੇ ਬਹੁਤ ਕੁੱਕ ਜੇ ਕੋਈ ਸੋਲੂਸ਼ਨ ਕੱਢਣੇ ਜਾਂ ਕਿਸੇ ਕੰਟੇਜਾਂ ਪਾਰਟੀ ਤੋਂ ਬਹੁਤ ਐਕਸਪੈਕਟ ਕਰ ਲੈਣਾ ਉਹ ਮੇਰਾ ਖਿਆਲ ਸਾਨੂੰ ਜਾਦੇ ਫ੍ਰਸਟ੍ਰੇਸ਼ਨ ਦਾ ਕਾਰਨ ਬਣੂਗਾ ਆਪਾਂ ਕਹਾਂਗੇ ਵੀ ਏ ਵੀ ਨਹੀਂ ਸੀ ਬੀ ਵੀ ਉਹ ਹੋ ਸੀ ਵੀ ਉਹ ਜੇ ਨਿਕਲ ਗਿਆ ਹੁਣ ਨਹੀਂ ਕੁਝ ਕਿਉਂਕਿ ਅਸੀਂ ਆ ਗਲਤ ਥਾਵਾਂ ਤੇ ਲਾ ਕੇ ਰੱਖਣ ਲੱਗ ਜਾਂਦੇ ਹਾਂ ਸੋ ਇਹ ਉਹ ਮੇਰਾ ਪੁਆਇੰਟ ਠੀਕਾ ਮੇਰੀ ਨਿਰਾਸ਼ਾ ਨਹੀਂ ਸੀ ਭ੍ਰਸ਼ਟਾਚਾਰ ਤੋਂ ਇਮਾਨਦਾਰੀ ਲੋਕਾਂ ਨੂੰ ਨੌਕਰੀਆਂ ਦੇ ਕੇ ਲੋਕਾਂ ਨੂੰ ਬਰਗਲਾ ਕੇ ਜੇ ਇੱਕ ਕਿਸੇ ਚੀਜ਼ ਕਿਸੇ ਪਾਰਟੀ ਨੇ ਕਿਸੇ ਸਰਕਾਰ ਨੇ ਲਾਮਬੰਦ ਕਰਤਾ ਉਹਨੂੰ ਸਭ ਚੰਗਾ ਲੱਗਣ ਲੱਗਾ ਜੇ ਹੁਣ ਮੈਂ ਅੱਖਾਂ ਮੀਚਦਾ ਮੇਰੇ ਗਵਾਂਢ ਫਸਟ ਪਟਿਆਲਾ ਫੀਡਰ ਨੂੰ ਨਿੰਗਦੀਆਂ ਮੈਂ ਉਹ ਚਨਾਉਂਦਾ ਰਿਹਾ ਮੈਨੂੰ ਨਹੀਂ ਲੱਗਦਾ ਵੀ ਕਿਤੇ ਉਹਦੇ ਵਿੱਚ ਪਾਣੀ ਸੁੱਕ ਜਾਊ 80% ਸਿੱਖ ਤੇ ਪੰਜਾਬੀ ਓਹੀ ਵੀ ਐਵੇਂ ਯਾਰ ਉੱਥੇ ਜੇ ਲੋਕਾਂ ਦੀ ਮੁੱਢਲੀ ਮੁੱਢਲੀਆਂ ਜ਼ਰੂਰਤਾਂ ਕਿਸੇ ਸਰਕਾਰ ਨੇ ਪੂਰੀਆਂ ਕਰਤੀਆਂ ਲੋਕਾਂ ਦਾ ਧਿਆਨ ਹੀ ਡਾਇਵਰਟ ਪਾਣੀ ਤੋਂ ਕਰਤਾ ਫੇਰ ਕੀ ਹੋਵੇ ਨਹੀਂ ਦੇਖੋ ਇੱਕ ਤਾਂ ਸਾਨੂੰ ਜਿਹੜਾ ਵੀ ਸਾਡੇ ਆਲੇ-ਦਾਲੇ ਜੋ ਵੀ ਕੁਝ ਹੁੰਦਾ ਉਹ ਜਿੰਨਾ ਮਰਜ਼ੀ ਨੈਗੇਟਿਵ ਹੋਵੇ ਉਹਦੇ ਵਿੱਚੋਂ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਸਕਦਾ ਜੇ ਇੱਕ ਚੀਜ਼ ਲਈ ਕੋਈ ਵੀ ਵੀਰ ਭੈਣ ਇਕੱਠੇ ਹੋ ਕੇ ਕੁਝ ਚੀਜ਼ ਕਰ ਸਕਦੇ ਕੀ ਅਸੀਂ ਜਿੰਨੇ ਵੀ ਪੰਜਾਬੀ ਬਾਹਰ ਬੈਠੇ ਆ ਜਦੋਂ ਜਿਹਨੂੰ ਜਿਹਨੂੰ ਵੀ ਇਹ ਅਹਿਸਾਸ ਹੋਣ ਲੱਗ ਗਿਆ ਵੀ ਸਾਡੀ ਜਿਹੜੀ ਹੋਂਦ ਖਤਰੇ 'ਚ ਆ ਸਿਰਫ ਇਹ ਇੱਕ ਕਹੋ ਵੀ ਇੱਕ ਭਰਮ ਨਹੀਂ ਹੈਗਾ ਇਹਦੇ ਇਹਦੇ ਪੁਖਤਾ ਐਵਿਡੈਂਸ ਨੇ ਦੁਨੀਆ ਦੇ ਵਿੱਚ ਹੋ ਚੁੱਕਿਆ ਜਮਾਨੀਕ ਆਪਣੇ ਪੰਜਾਬੀ ਚ ਵੀਰ ਕਹਾਵਤਾਂ ਕੋਈ ਮੇਰੇ ਵਰਗਾ ਮੂਰਖ ਟਾਣੇ ਤੇ ਬੈਠਾ ਵੱਢੀ ਜਾਂਦਾ ਸੀ ਉੱਠੇ ਪਾਸੇ ਤੇ ਉਹਦੇ ਕੋਲ ਬਜ਼ੁਰਗ ਨਿੰਘਿਆ ਜਾਂਦਾ ਕਹਿੰਦਾ ਉਹ ਕਾਕਾ ਡੱਗ ਪਿੰਗਾ ਉਹ ਕਹਿੰਦਾ ਲਸਾਰੀ ਦੁਨੀਆ ਟਾਣਾ ਵੱਢਦੀ ਐ ਮੈਂ ਕਿਵੇਂ ਡੱਗ ਪੂੰਆ ਕਹਿੰਦੇ ਵੱਢਦੀ ਤਾਂ ਹੈਗੀ ਐ ਪਰ ਤੂੰ ਵੱਢਦਾ ਪੱਖੇ ਬੰਨੇ ਹੋ ਉਹ ਜਦੋਂ ਟੜਮ ਡਿੱਗਿਆ ਉਦੋਂ ਉਹਨੂੰ ਪਤਾ ਲੱਗਿਆ ਠੀਕ ਓਵੇਂ ਹੀ ਹੁਣ ਜਿਹੜੀਆਂ ਦੁਨੀਆ ਦੀਆਂ ਟੌਪ ਐਕਸਪਰਟ ਇੰਸਟੀਚੂਨਾਂ ਜਾਂ ਐਕਸਪਰਟ ਆ ਉਹ ਓੰਜੀ ਨਹੀਂ ਕਹਿ ਰਹੇ ਵੀ ਇਹ ਬੰਦਰ ਹੋ ਉਹਨਾਂ ਕੋਲ ਕੋਈ ਤੱਥ ਨਹੀਂ ਕੋਈ ਆਧਾਰ ਆ ਕੋਈ ਐਵੀਡੈਂਸ ਨਹੀਂ ਤੇ ਹੋ ਚੁੱਕਿਆ ਮਿਲੀਅਨਸ ਲੋਕ ਪ੍ਰਵਾਸ ਕੀਤੇ ਥਾਂ ਥਾਂ ਤੇ ਜਿੱਥੇ ਡੈਜਟ ਹੋਇਆ ਸੇਮ ਪੈਟਰਨ ਤੇ ਹੋਇਆ ਉਹਨਾਂ ਦੇ ਤੇ ਉਹਦੇ ਵਿੱਚ ਕੋਈ ਦਿਨ ਦੂਰ ਨਹੀਂ ਹੈ ਕੋਈ ਸਿਰਫ ਖਿਆਸ ਰਾਹੀ ਨਹੀਂ ਹੈਗੀ ਸਾਨੂੰ ਉਹ ਅਸੀਂ ਉਸ ਰਾਹਾਂ ਤੇ ਪੁਰੇ ਹੋਏ ਆ ਇਸ ਕਰਕੇ ਜਦੋਂ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਉਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ ਫਿਰ ਅਸੀਂ ਐਕਚੁਅਲੀ ਉੱਠਾਂਗੇ ਜਿਹੜੀ ਆਪਣੀ ਸਾਰਿਆਂ ਦੀ ਅੱਜ ਵੀ ਆਪਾਂ ਪੰਨਾਂ 'ਤੇ ਰਲ ਕੇ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਅਹਿਸਾਸ ਜਿਹੜਾ ਸਾਨੂੰ ਇਨਫੋਰਮੇਸ਼ਨ ਸਾਨੂੰ ਮਿਲੀ ਤੁਹਾਡੇ ਜਰੀ ਆਪਾਂ ਲੋਕਾਂ ਤੱਕ ਗਾਹ ਕੋਸ਼ਿਸ਼ ਤੇ ਮੇਰਾ ਖਿਆਲ ਉਹੀ ਇੱਕ ਰਸਤਾ ਵਾ ਵਪਾਰਕ ਸੰਚੇਦ ਤੋਂ ਬਾਅਦ ਜਸਵਿੰਦਰ ਸਿੰਘ ਬਦੇਸ਼ਾ ਦੇ ਨਾਲ ਗੱਲਬਾਤ ਕਰ ਬਹੁਤ ਇਹ ਤਿੰਨ ਕੜੀਆਂ ਦੇ ਵਿੱਚ ਸਾਰਾ ਪੰਜਾਬ ਦੇ ਪਾਣੀਆਂ ਦੀ ਗੱਲ ਤੁਹਾਨੂੰ ਦੱਸੀ ਲੋਕੋ ਪੜੋ ਸਮਝੋ ਪੰਜਾਬ ਦੇ ਪਾਣੀਆਂ ਦਾ ਦਰਦ ਸਦਾ ਦਰਦੀ ਦੀ ਕਿਤਾਬ ਆ ਪੰਜਾਬ ਦੇ ਪਾਣੀਆਂ ਦੀ ਲੁੱਟ ਅਰਲ ਸੀ ਦੀ ਉਸ ਦਿਨ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਪੰਜਾਬ ਦੇ ਰਸ਼ੀਆ ਦੇ ਵਿੱਚ ਇੱਕ ਝੀਲ ਜਿਹਦੇ ਆਲੇ-ਦਾਲੇ ਲੱਖਾਂ ਹੀ ਲੋਕ ਵਸੇ ਹੋਏ ਸੀ ਕਿਸ ਤੋਂ ਚ ਜਦ ਗਈ ਦਰਿਆਵਾਂ ਦੇ ਮੁੱਖ ਮੋੜ ਤੇ ਰਸ਼ੀਆ ਨੇ ਉਹ ਰੇਗਿਸਤਾਨ ਬਣਾਤਾ ਸ਼ਿਪ ਮਸ਼ੇਰਿਆਂ ਦੇ ਖੜੇ ਉਸ ਤਰ੍ਹਾਂ ਹੀ ਖੜੇ ਨੇ ਹੁਣ ਉਹਦੇ ਜਿਹੜੇ ਮਿਨਰਲ ਸੀ ਉਹ ਕੈਮੀਕਲ ਦਾ ਰੂਪ ਧਾਰ ਕਰਕੇ ਜਦ ਹਵਾ ਉੱਡਦੀ ਆ ਲੋਕਾਂ ਦੇ ਫੇਫੜਿਆਂ 'ਚ ਜਾ ਕੇ ਲੋਕ ਮਾਰ ਰਹੀ ਆ ਤੁਹਾਨੂੰ ਯਾਦ ਆ ਸੀਬੀਸੀ ਦੀ ਡਾਕੂਮੈਂਟਰੀ ਤੇ ਆਪਾਂ ਇੱਕ ਗੱਲ ਕੀਤੀ ਸੀ ਸਭ ਦੇਸ਼ਾ ਤੁਸੀਂ ਕੁਛ ਸ਼ੇਅਰ ਕਰਨਾ ਚਾਹੋ ਇਹਦੇ ਵਿੱਚ ਜੇ ਅੱਜ ਇਹਨੂੰ ਆਪਾਂ ਸਮ ਕਰਦੇ ਆਂ ਸੀਰੀਜ਼ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਕਿੱਦਾਂ ਨੂੰ ਸੋਚਣ ਤੇ ਕੀ ਕੀ ਕਰ ਸਿੰਘ ਜੀ ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਵੀ ਅਸੀਂ ਵੀ ਆਮ ਪੰਜਾਬੀਆਂ ਪੰਜਾਬੀਆਂ ਅਸੀਂ ਕਿਸੇ ਪੋਲਿਟਿਕਲ ਕਾਰਨ ਕਰਕੇ ਨਹੀਂ ਇਹ ਬਚਾਰ ਤੁਹਾਡੇ ਰੱਖ ਰਹੇ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਈਸ਼ੂ ਦੇ ਉੱਤੇ ਕੰਮ ਕਰ ਰਹੇ ਹਾਂ ਅੱਜ ਨਹੀਂ ਕਰਨ ਲੱਗੇ ਇਲੈਕਸ਼ਨਾਂ ਦੇ ਨੇੜੇ ਆ ਕੇ ਨਹੀਂ ਕਰਨ ਲੱਗੇ ਸਾਨੂੰ ਤੁਸੀਂ ਮੰਚ ਪ੍ਰੋਵਾਈਡ ਕੀਤਾ ਜਿੰਨੀ ਵਾਰੀ ਵੀ ਅਸੀਂ ਗੱਲ ਕੀਤੀ ਤੇ ਤੇ ਤੋ ਕਈ ਬੰਦੇ ਇਹਨੂੰ ਪੋਲਿਟਿਕਲ ਸਟੇਟ ਤਰੀਕੇ ਦੇ ਨਾਲ ਰਿਐਕਟ ਕਰਦੇ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਤੁਸੀਂ ਕਰੀ ਚੱਲੋ ਭਰਾਓ ਇਸ ਕੰਮ ਨੂੰ ਸਾਂਝਾ ਕੰਮ ਸਮਝ ਕੇ ਸਾਰੇ ਕੇ ਅਵੇਰਨੈਸ ਲਿਆਉਣ ਲਈ ਸਮਝ ਕੇ ਤੁਸੀਂ ਇਹ ਵੀ ਸਾਡਾ ਜਿਹੜਾ ਸਨੇਹਾ ਆ ਲੋਕਾਂ ਤੱਕ ਪਹੁੰਚਾਓ ਵੀ ਸਾਡੇ ਨਾਲ ਹੋ ਕੀ ਰਿਹਾ ਸਰਦਾਰ ਕਰਪਾਲ ਸਿੰਘ ਦਰਦੀ ਦੀ ਕਿਤਾਬ ਬਾਰੇ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਮੈਂ ਮਿਸ ਕਰ ਗਈ 120 ਪੰਨਿਆਂ ਦੀ ਸਾਰੀ ਕਿਤਾਬ ਆ ਛੋਟੀ ਕਿਤਾਬ ਇਹਦੇ ਵਿੱਚ ਉਹਨਾਂ ਨੇ ਤਕਰੀਬਨ ਸਾਰੇ ਸਮਝੌਤੇ ਜਿਹੜੇ ਗੈਰ ਸੰਵਿਧਾਨਕ ਸਮਝੌਤੇ ਹੋਏ ਉਹਨਾਂ ਦੇ ਵਿੱਚ ਕੀ ਕੀ ਹੋਇਆ ਪੰਜਾਬੀ ਦੀ ਟ੍ਰਾਂਸਲੇਸ਼ਨ ਉਹਨਾਂ ਨੇ ਸਾਰੀ ਇਹ ਨੇ 1954 ਦਾ ਜਿਹੜਾ ਜਮਨਾ ਦੇ ਪਾਣੀਆਂ ਬਾਰੇ ਪੰਜਾਬ ਦਾ ਸਮਝੌਤਾ ਸੀ ਉਹਦਾ ਵੀ ਜ਼ਿਕਰ ਕੀਤਾ ਜੀ ਹੁਣ ਆਪਾਂ 1981 ਵਾਲੇ ਸਮਝੋਤੇ ਦੀ ਗੱਲ ਕੀਤੀ ਸੀ ਉਹ ਪਾਣੀ ਮੰਗੀ ਜਾਂਦੇ ਵੀ ਸਾਡਾ ਤੁਹਾਡੇ ਨਾਲ ਸਮਝੌਤਾ ਪੰਜਾਬ ਦਾ ਸਮਝੌਤਾ ਸੀਗਾ ਜੀ ਉਸ ਟਾਈਮ ਸਾਂਝਾ ਪੰਜਾਬ ਸੀ ਜਮਨਾ ਦਰਿਆ ਦੇ ਪਾਣੀ ਦਾ 2000 ਸਨ 2000 ਤੱਕ ਪੰਜਾਬ ਨੂੰ ਮੁੜ ਕੇ ਕਿਸੇ ਮੀਟਿੰਗ 'ਚ ਹੀ ਨਹੀਂ ਸੱਦੇ ਜੀ ਉਹਨੇ ਉਹ ਜਮਨਾ ਦਰਿਆ ਪੂਰਾ ਹਰਿਆਣੇ ਨੂੰ ਦੇ ਜਿਹੜੇ ਪੰਜਾਬ ਦੇ ਕੋਲ ਦਰਿਆ ਸੀ ਉਹਨਾਂ ਤੇ ਹਰਿਆਣਾ ਅੱਜ ਵੀ ਪਾਣੀ ਮੰਗੀ ਜਾਂਦਾ ਜੀ ਇਹ ਇੱਕ ਸਾਡੀ ਇੱਕ ਤਾਂ ਵੱਧ ਕਿਸਮਤੀ ਜੀ ਵੀ ਦੇਖੋ ਸਾਡੇ ਜਿਹੜੇ ਨੇਤਾ ਆ ਉਹਨਾਂ ਨੇ ਆ ਹੁਣ ਕਿਤੇ ਟਾਮੀ ਟਾਮੀ ਬਿਆਨ ਦੇ ਵਿੱਚ ਜਮਨਾ ਦਰਿਆ ਦੀ ਗੱਲ ਕਰਦੇ ਆ ਇੱਕ ਹੋਰ ਬੜਾ ਇੰਟਰਸਟਿੰਗ ਇਸ਼ੂ ਆ ਜੀ ਇਸ ਪੰਜਾਬ ਦੀ ਪਾਣੀਆਂ ਦੀ ਜਿਹੜੀ ਗੈਰਸੰਵਿਧਾਨਿਕ ਲੁੱਟ ਨਾਲ ਸਾਨੂੰ ਕੱਲਾ ਪਾਣੀ ਦੇ ਪੈਸੇ ਜਾਂ ਪਾਣੀ ਦਾ ਹੀ ਨੁਕਸਾਨ ਨਹੀਂ ਹੋਇਆ ਪੰਜਾਬ ਦੇ 3 ਚਾਰ ਜ਼ਿਲ੍ਹਿਆਂ ਨੂੰ ਇਹਨਾਂ ਦੋ ਵੱਡੀਆਂ ਨਹਿਰਾਂ ਨੇ ਸੀਮ ਦੀ ਸਮੱਸਿਆ ਦੇ ਨਾਲ ਕਰੋੜਾਂ ਦਾ ਨੁਕਸਾਨ ਕੀਤਾ ਜੀ ਉੱਥੇ ਪਿੰਡਾਂ ਦੇ ਪਿੰਡ ਪ੍ਰਭਾਵਿਤ ਹੋਏ ਇਹ ਵੀ ਮਸਲਾ ਕਦੀ ਮੀਡੀਆ ਜੀ ਨਹੀਂ ਆਉਂਦਾ ਜੀ ਇਹ ਸਟੇਟ ਜਿਹੜੀਆਂ ਸਟੇਟਾਂ ਨੂੰ ਇਹ ਪਾਣੀ ਜਾਂਦਾ ਜੀ ਉਹਨਾਂ ਉਹ ਸਟੇਟਾਂ ਉਹਨਾਂ ਪਿੰਡਾਂ ਨੂੰ ਮੁਆਵਜ਼ਾ ਦੇਣ ਜਿਨ੍ਹਾਂ ਦੀ ਫਸਲਾਂ ਮਰੀ ਜਾਂਦੀਆਂ ਜਿਨ੍ਹਾਂ ਦੇ ਘਰ ਉਹਨਾਂ ਨੂੰ ਦੁਬਾਰਾ ਬਣਾਉਣੇ ਪੈਂਦੇ ਪਾਣੀ ਇਹਨਾਂ ਉੱਪਰ ਆ ਗਿਆ ਉਸ ਵਸੇਬਾਰੇ ਕੋਈ ਗੱਲ ਨਹੀਂ ਕਰਦਾ ਜੀ ਉਹਦੇ ਬਾਰੇ ਵੀ ਇਸ ਬੁੱਕ ਦੇ ਵਿੱਚ ਵੀ ਉਹ ਨਹੀਂ ਕੀਤਾ ਸਾਨੂੰ ਇਹ ਵੱਡੀ ਸਮੱਸਿਆ ਖੜੀ ਹੋ ਰਹੀ ਆ ਇੱਕ ਇੱਕ ਭਾਈ ਸਾਹਿਬ ਉਹ ਦਿਨ ਆਏ ਸੀਗੇ ਮੈਨੂੰ ਕਹਿੰਦੇ ਸੀ ਉਹ ਜਿਹੜੀ ਲਾਈਨਿੰਗ ਉਹਦੀ ਨਹਿਰ ਦੀ ਖਰਾਬ ਹੋਈ ਆ ਵੀ ਪੰਜਾਬ ਵਾਲੇ ਰਿਪੇਅਰ ਨਹੀਂ ਕਰਾਉਂਦੇ ਉਹ ਜਿਹੜਾ ਇਹ ਦੋਨਾਂ ਰਾਜਾਂ ਦੇ ਵਿੱਚ ਜਿਹੜਾ ਐਗਰੀਮੈਂਟ ਆ ਕੇ ਨੇ ਰਿਪੇਅਰ ਕਰਾਉਣੀਆਂ ਪਰ ਪੰਜਾਬ ਦੀ ਜ਼ਮੀਨ ਲਈ ਗਈ ਜੀ ਉਹ ਨਹਿਰ ਬਣਾਉਣ ਲਈ ਉਸ ਟਾਈਮ ਹਜ਼ਾਰਾਂ ਏਕੜ ਪੰਜਾਬ ਵਾਸੀਆਂ ਨੂੰ ਨਕਸਾਰ ਹੋਇਆ ਪੰਜਾਬ ਦੇ ਕਿਸਾਨ ਜਿਹੜੇ ਉਸ ਇਲਾਕੇ 'ਚ ਬੈਠੇ ਆ ਨਹਿਰ ਦੇ ਆਲੇ ਦੁਆਲੇ ਉਹ ਸਫਰ ਕਰ ਰਹੇ ਆ ਇਹ ਜਿਹੜੀ ਗੱਲ ਆ ਇਧਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਇਹ ਜਿਹੜਾ ਮਸਲਾ ਨਾਲ ਜੀ ਇਹਦਾ ਇਹਦਾ ਜਿਹੜਾ ਤੁਸੀਂ ਮੈਨੂੰ ਪੁੱਛਿਆ ਸੀ ਵੀ ਕੀ ਕੰਨ ਪੰਜਾਬੀਆਂ ਨੂੰ ਅਸੀਂ ਇਹੀ ਬੇਨਤੀ ਕਰਦਾ ਮੈਂ ਅਸੀਂ ਸਾਰੇ ਆਪਣੇ ਜਿੰਨੇ ਜਿੰਨੇ ਵੀਰ ਵੀ ਕੰਮ ਕਰਦੇ ਆ ਵੀ ਭਰਾਓ ਇਹਦੇ ਬਾਰੇ ਤੁਸੀਂ ਆਪ ਖੋਜ ਕਰੋ ਡਾਕੂਮੈਂਟਰੀ ਸਰਦਾ ਸਦੀ ਸਿੰਘ ਉਹਨਾਂ ਦੀ ਟੀਮ ਨੇ ਬਣਾਈ ਇਹਨੂੰ ਦੇਖੋ ਕਿਸੇ ਚੀਜ਼ ਤੇ ਤੁਹਾਨੂੰ ਕੁਐਸਚਨ ਹੈ ਤੁਸੀਂ ਉਹਦਾ ਆਨਸਰ ਲੱਭਣ ਦੀ ਟਰਾਈ ਕਰੋ ਤੁਸੀਂ ਆਰਟੀਕਲ ਵਿਦਵਾਨਾਂ ਦੇ ਲੱਭੋ ਪੜ੍ਹੋ ਫੇਸਬੁੱਕ ਪੇਜ ਦੇ ਉੱਤੇ ਜਾਓ ਫੇਸਬੁੱਕ ਪੇਜ ਦੇ ਉੱਤੋਂ ਤੁਸੀਂ ਸੱਜ ਤੋਂ ਇਨਫੋਰਮੇਸ਼ਨ ਲੈ ਸਕਦੇ ਤੁਹਾਨੂੰ ਕੋਈ ਇਨਫੋਰਮੇਸ਼ਨ ਜਰੂਰੀ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਅਸੀਂ ਇਹ ਜਿਹੜੇ ਪੇਜ ਬਣਾਏ ਆ ਉਹਨਾਂ ਵੀਰਾਂ ਦੱਸਣ ਲਈ ਵੀ ਅਸੀਂ ਇਹ ਲਾਈਕਸ ਲੈਣ ਲਈ ਨਹੀਂ ਬਣਾਏ ਇਹ ਸਿਰਫ ਸਨੇਹਾ ਦੇਣ ਲਈ ਬਣਾਇਆ ਸਾਡਾ ਸਨੇਹਾ ਆ ਜਿੱਥੇ ਅਸੀਂ ਅੱਜ ਦੇ ਰਹੇ ਆ ਲੱਖਾਂ ਲੋਕਾਂ ਤੱਕ ਪਹੁੰਚ ਜਾਂਦਾ ਜੀ ਫੇਸਬੁੱਕ ਪੇਜ ਵੀ ਉਹੋ ਜਿਹੇ ਹੈਗੇ ਜਿਨ੍ਹਾਂ ਤੇ ਸਾਨੂੰ ਪੋਸਟ ਕਰਨ ਦੀ ਅਥੋਰਟੀ ਦਿੱਤੀ ਹੋਈ ਉਹਨਾਂ ਪੇਜਾਂ ਨੇ ਉਹ ਉਹਨਾਂ ਦੇ ਉੱਤੇ ਲੱਖਾਂ ਲੱਖਾਂ ਬੰਦੇ ਹੈਗੇ ਆ ਉਹਦੇ ਤੇ ਐਡ ਅਸੀਂ ਉਹਦੇ ਤੇ ਆਪਣਾ ਮੈਸੇਜ ਦੰਦੇ ਆ ਸੋ ਅਸੀਂ ਇਸ ਇਹਨੂੰ ਕੋਈ ਅਸੀਂ ਕੋਈ ਆਪਣੀ ਪਪੂਲੈਰਿਟੀ ਲੈਣ ਲਈ ਨਹੀਂ ਬਣਾਇਆ ਹੋਇਆ ਇਹ ਸਾਡਾ ਇੱਕ ਸਨੇਹਾ ਆ ਅਸੀਂ ਚਾਹੁੰਦੇ ਵੀ ਤੁਸੀਂ ਵੀ ਇਹ ਕੰਮ ਕਰੋ ਸਾਰੇ ਜਣੇ ਆਪਣੇ-ਆਪਣੇ ਜਿਹੜੀ ਤੁਹਾਡੇ ਕੋਲ ਸੋਸ਼ਲ ਮੀਡੀਆ ਉਹ ਜਿਹੜਾ ਸੋਰਸ ਆ WhatsApp ਆ ਉਹਦੇ ਆਪਣੇ ਇਲੈਕਟ੍ਰੋਨਿਕ মিডিਏ ਨਾਲ ਜਾਂ ਤੁਸੀਂ ਪਰਸਨ ਟੂ ਪਰਸਨ ਇਹ ਜਿਹੜੀ ਪ੍ਰੋਬਲਮ ਆ ਇਹ ਇਹ ਜਿਹੜੀ ਇਹਨੂੰ ਇਹਨੂੰ ਹੱਲ ਕਰਨ ਲਈ ਸੰਵਿਧਾਨਕ ਤੌਰ ਦੇ ਉੱਤੇ ਸਾਨੂੰ ਜਿਹੜਾ ਆ ਆਪਣੀ ਆਵਾਜ਼ ਠਾਉਣੀ ਚਾਹੀਦੀ ਆ 78 79 80 ਦੀ ਤੁਸੀਂ ਗੱਲ ਕੀਤੀ ਸਦਾਹੀ ਸੁਖਦੀਪ ਸਿੰਘ ਨੇ ਦੱਸਿਆ ਇਹਦੇ ਬਾਰੇ 70 78 80 ਦੇ ਵੱਲ ਧਿਆਨ ਹੀ ਨਹੀਂ ਜਾਣ ਦਿੱਤਾ ਜਾਂਦਾ ਜੀ ਇਹਨੂੰ ਰੱਦ ਕਰਾਉਣ ਦੀ ਮੰਗ ਵੱਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਅਸੀਂ ਚਲ ਜਾਂਦੇ ਜੀ 78 79 80 ਦਾ ਰੌਲਾ ਨਹੀਂ ਪੈਂਦਾ ਉੱਥੇ ਇਹਨੂੰ ਵੈਲਿਡ ਜਣ ਕੇ ਫੈਸਲਾ ਸੁਣਾਇਆ ਜਾਂਦਾ 1981 ਦੇ ਸਮਝੌਤੇ ਨੂੰ ਵੈਲਿਡ ਜਣ ਕੇ ਫੈਸਲਾ ਸੁਣਾਇਆ ਜਾਂਦਾ 1985 ਦੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਵੈਲਿਡ ਜਣ ਕੇ ਫੈਸਲਾ ਸੁਣਾਇਆ ਜਾਂਦਾ ਚਲੋ 70 79 80 ਨੂੰ ਚੈਲੰਜ ਨਹੀਂ ਕੀਤਾ ਪੰਜਾਬ ਦੇ ਲੀਡਰਾਂ ਨੇ ਜਾਂ ਪੰਜਾਬ ਦੇ ਕਿਸੇ ਆਪੋਜੀਸ਼ਨ ਪਾਰਟੀ ਨੇ ਉਦੋਂ ਬਾਅਦ 1981 ਦੇ 1985 ਦੇ ਰਜੀਵ ਲਾਉਂਦੋਵਾਲ ਸਮਝੌਤੇ ਨੂੰ ਵੀ ਅਜ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ ਜੀ ਇੱਕ ਨਿਊਜ਼ ਆਈ ਜੀ ਦੱਬ ਮੀ ਜੀ ਨਿਊਜ਼ ਆਉਂਦੀ ਆ ਜੀ ਉਹ ਮੈਂ ਟਰਾਈ ਕੀਤੀ ਉਹਨੂੰ ਕਨਫਰਮ ਕਰਨ ਮੇਰੇ ਕੋਲ ਰੈਜ਼ੋਲੂਸ਼ਨ ਦੀ ਕਾਪੀ ਵੀ ਹੈਗੀ ਆ ਵੀ 1985 ਦੇ ਵਿੱਚ ਬਨਾਲਾ ਗਵਰਨਮੈਂਟ ਵੱਲੇ ਉਹਨਾਂ ਨੇ 1981 ਦੇ ਪਾਣੀਆਂ ਵਾਲੇ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ ਇੱਕ ਲਾਈਨ ਦੇ ਛੋਟਾ ਜਿਹਾ ਮਤਾ ਹੈ ਜੀ ਉਹਨਾਂ ਦਾ ਉਹਦੇ ਬਾਰੇ ਵੀ ਪੰਜਾਬ ਸਰਕਾਰ ਦਾ ਕਿਤੇ ਵੀ ਸਟੈਂਡ ਸਪਸ਼ਟ ਨਹੀਂ ਹੋਇਆ ਵੀ ਇਹ ਸਮਝੌਤਾ ਰੱਦ ਕਰ ਦਿੱਤਾ ਸੀ ਸਾਊਥ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਾਊਥ ਦੇ ਵਿੱਚ ਰੌਲਾ ਪਾਣੀਆਂ ਸਟੇਟਾਂ ਦੇ ਵਿੱਚ ਉਥੇ ਦੇ ਕਿਸਾਨਾਂ ਨੇ ਕੇਸ ਕੀਤਾ ਸੀਗਾ ਜੀ ਜਾ ਉੱਥੇ ਵੀ ਚੱਲਦਾ ਉਹ ਅੰਤਰਰਾਜੀ ਦਰਿਆ ਆ ਉਹਨਾਂ ਦਾ ਜ਼ਿਆਦਾ ਆਪਣੇ ਅੰਤਰਰਾਜੀ ਦਰਿਆ ਨਹੀਂ ਹੈਗੇ ਸਾਡੇ ਪੰਜਾਬ ਦੇ ਜਿਹੜੇ ਪੰਜਾਬ ਉਹਨਾਂ ਰਾਵਣ ਦਰਿਆਵਾਂ ਦਾ ਉੱਥੇ ਉਹ ਸਾਂਝੇ ਓਨਰ ਸੀਗੇ ਉੱਥੇ 1983 ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਵੀ ਇੱਕ ਪਟੀਸ਼ਨ ਕੀਤੀ ਸੀਗੀ ਉਹ ਵੀ ਉਹਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਸੁਪਰੀਮ ਕੋਰਟ ਦੇ ਵਿੱਚ ਉਸ ਤੋਂ ਬਾਅਦ ਉਹ ਪਤਾ ਨਹੀਂ ਕਿੱਥੇ ਗਈ ਜੀ ਉੱਥੇ ਕੀ ਬਣਿਆ ਜੀ ਉਹਨੂੰ ਮਤਲਬ ਕਿਹਾ ਜੀ ਇਹ ਕੇਸ ਉੱਥੇ ਚੱਲੂਗਾ ਜਿਹੜੇ ਪੰਜਾਬ ਹਾਈ ਹਰਿਆਣਾ ਹਾਈ ਕੋਰਟ ਦੇ ਜੱਜ ਸੀ ਉਹਨਾਂ ਨੇ ਉੱਤੇ ਸੁਣਵਾਈ ਮੁਕਰਾਂ ਕਰ ਦਿੱਤੀ ਸੀ ਉਸ ਜਸਟਿਸ ਦੀ ਟ੍ਰਾਂਸਫਰ ਕਰ ਦਿੱਤੀ ਗਈ ਜੀ ਰਾਤੋਂ ਰਾਤ ਉਹ ਸੁਣਵਾਈ ਨਹੀਂ ਹੋਣ ਦਿੱਤੀ ਗਈ ਹੁਣ ਪਰ ਇਸ ਗੱਲ ਦਾ ਜਵਾਬ ਕੌਣ ਦੇਊਗਾ ਵੀ ਉਸ ਬਾਅਦ ਪੰਜਾਬ ਦੀ ਕਿਸੇ ਧਿਰ ਨੇ ਵੀ ਅੱਜ ਤੱਕ ਰਜੀਵ ਲੰਗੋਵਾਲ ਸਮਝੌਤੇ ਨੂੰ ਚੈਲੰਜ ਕਿਉਂ ਨਹੀਂ ਕੀਤਾ 1981 ਵਾਲੇ ਨੂੰ ਕਿਉਂ ਨਹੀਂ ਕੀਤਾ ਚੈਲੰਜ ਇਹ ਅਸੀਂ ਮੰਨਦੇ ਆ ਇਹ ਗੈਰ ਸੰਵਿਧਾਨਕ ਆ ਪੰਜਾਬ ਦੀਆਂ ਗਵਰਨਮੈਂਟਾਂ ਨੇ ਕਿਉਂ ਨਹੀਂ ਚੈਲੰਜ ਕੀਤਾ ਜੀ ਖਾਸੀ ਬਟਾਣਾ ਨਹਿਰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ 109 ਕਿਲੋਮੀਟਰ ਪੱਟ ਲਈ ਐਸਵਾਈਐਲ ਖੁਦ ਪੱਟ ਕੇ ਦੇਣ ਦਾ ਫੈਸਲਾ ਕਰਿਆ ਸਾਡੇ ਲੀਡਰ ਪੱਟਣ ਦੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਪੂਰੀ ਪੱਟੀ ਨੂੰ ਚੰਡੀਗੜ੍ਹ ਦੇਣੋਂ ਉਹਨਾਂ ਨੇ ਮਨਾਂ ਵੀ ਕਰ ਦਿੱਤਾ ਫੇਰ ਵੀ ਇਹਨਾਂ ਨੇ ਨਹਿਰ ਪੱਟਣੀ ਜਾਰੀ ਰੱਖੀ ਵੀ ਅਸੀਂ ਪੱਟ ਕੇ ਦਵਾਂਗੇ ਹਾਂ ਹੁਣ ਇਹਨਾਂ ਗੱਲਾਂ ਦੇ ਜਵਾਬ ਤਾਂ ਇਸ ਦਾ ਇਸ ਦਾ ਔੜ ਵਾਲੀਆਂ ਜਨਰੇਸ਼ਨਾਂ ਇਹਨਾਂ ਨੂੰ ਪੁੱਛੂਗੇ ਜੀ ਪੰਜਾਬ ਦੇ ਲੀਡਰਾਂ ਪਰ ਮੈਂ ਇਹ ਬੇਨਤੀ ਕਰਦਾ ਸਾਰੇ ਵੀਰਾਂ ਭੈਣਾਂ ਨੂੰ ਮੈਂ ਤੁਸੀਂ ਆਪ ਇਸ ਮਸਲੇ ਨੂੰ ਸਟੱਡੀ ਕਰੋ ਇਸ ਮਸਲੇ ਨੂੰ ਸਮਝੋ ਇਸ ਮਸਲੇ ਨੂੰ ਜਿਵੇਂ ਵੀ ਆਪਾਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣਾ ਜਿਹੜਾ ਸੁਨੇਹਾ ਗਾਹਾਂ ਪਹੁੰਚਾਓ ਤਾਂ ਕਿ ਸਾਡੇ ਸਾਰੇ ਪੰਜਾਬੀਆਂ ਨੂੰ ਪਤਾ ਲੱਗੇ ਵੀ ਸਾਡੇ ਨਾਲ ਹੋਇਆ ਕੀ ਹੈ ਸਕਰੀਪ ਸਿੰਘ ਜੀ ਅਖੀਰ ਚ ਇੱਕ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹਿਊਮੈਨਿਟੀ ਦੀ ਗੱਲ ਸ਼ੁਰੂਆਤ ਦੇ ਭੱਲੇ ਦੀ ਕੌਮ ਗੱਲ ਕਰਦੀ ਹੈ ਜਦ ਇਹ ਗੱਲ ਚੱਲਦੀ ਹੈ ਪੰਜਾਬ ਦੇ ਪਾਣੀ ਦੀ ਰਾਜਸਥਾਨ ਨੂੰ ਜਾਂਦਾ ਪਾਣੀ ਰਾਜਸਥਾਨ ਵਾਲੇ ਔਖੇ ਹੋ ਜਾਂਦੇ ਨੇ ਇੱਥੇ ਵੀ ਬਹੁਤ ਨੇ ਜਿਹੜੇ ਗੰਗਾਨਗਰ ਸਾਡੇ ਉਸ ਏਰੀਆ ਚ ਰਹਿੰਦੇ ਉਹ ਕਹਿੰਦੇ ਯਾਰ ਸਾਨੂੰ ਪਾਣੀ ਨਹੀਂ ਮਿਲਦਾ ਅਸੀਂ ਬੂੰਦ ਨੂੰ ਤਰਸਦੇ ਆਂ ਕਣ ਤੁਸੀਂ ਕਿੱਥੋਂ ਲਿਆਂਦਾ ਹਿਮਾਚਲ ਉੱਪਰੋਂ ਉਹਦਾ ਪਾਣੀ ਫਿਰ ਹਿਮਾਚਲ ਵਾਲੇ ਤੁਹਾਨੂੰ ਰੋਕ ਦੇਣ ਤੁਸੀਂ ਕਿੱਥੋਂ ਲਾਓਗੇ ਇਹਦੇ ਹਰੇਕ ਪੰਜਾਬੀ ਦੇ ਮਨ 'ਚ ਆਉਂਦਾ ਮੈਂ ਸਮਝਦਾ ਵੀ ਪੰਜਾਬੀ ਦੇ ਮਨ 'ਚ ਵੀ ਆਉਂਦਾ ਇੱਕ ਕਾਰਨ ਆ ਕਿਉਂਕਿ ਜਿਹੜੀ ਅਸੀਂ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਆ ਨਾ ਸਾਡੇ ਪਿਓ ਦਾਦਿਆਂ ਤੋਂ ਅਸੀਂ ਸੁਣਦੇ ਆਏ ਆ ਭਲੇ ਬੰਦੇ ਕਹਿ ਦਿੰਦੇ ਆ ਜੀ ਅਸੀਂ ਸਿਰਫ ਪਾੜਨ ਤੱਕ ਰਹਿੰਦੇ ਆ ਅਸੀਂ ਸਿੱਖੀ ਕਦਰਾਂ ਕੀਮਤਾਂ ਤੇ ਨਹੀਂ ਚੱਲਦੇ ਉਹ ਸਾਡੇ ਦੇ ਵਿੱਚ ਰਚੀ ਹੋਈ ਆ ਪਹਿਲੀ ਚੀਜ਼ ਹੀ ਸਾਡੇ ਮਨ 'ਚ ਜਦੋਂ ਦੂਜੇ ਬਾਰੇ ਆਉਂਦੀ ਆ ਆਉਂਦਾ ਏ ਤੇ ਆਉਣਾ ਚਾਹੀਦਾ ਵੀ ਆ ਹੁਣ ਇਹਦੇ ਇਹ ਦੋ ਤਰੀਕਿਆਂ ਨਾਲ ਮੈਂ ਸਵਾਲ ਦਾ ਅਨਸਰ ਕਰਨਾ ਚਾਹੂੰਗਾ ਇੱਕ ਹੈਗਾ ਜਿਹੜਾ ਟੈਕਨੀਕਲੀ ਸਵਧਾਨਿਕ ਤੌਰ ਤੇ ਵੀ ਜਦੋਂ ਪਾਣੀ ਆ ਜਿਹੜਾ ਇੱਕ ਤੋਂ ਵੱਧ ਰਾਜ ਦੇ ਵਿੱਚ ਦੀ ਲੰਘਦਾ ਜਿਹਨੂੰ ਅੰਤਰਰਾਜੀ ਕਹਿੰਦੇ ਆ ਉਹ ਉਹ ਦੋ ਦੇਸ਼ਾਂ ਦੇ ਵਿੱਚ ਵੀ ਹੋ ਸਕਦਾ ਉਹ ਦੋ ਸੂਬਿਆਂ ਦੇ ਵਿੱਚ ਵੀ ਹੋ ਸਕਦਾ ਉਹ ਜਿਹੜੇ ਜਿਹੜੇ ਸੂਬੇ ਵਿੱਚ ਦੀ ਲੰਘਦਾ ਉਹ ਸੂਬੇ ਦਾ ਉਹ ਤੇ ਹੱਕ ਆ ਹੱਕ ਕਿਵੇਂ ਆ ਫਿਰ ਤੇ ਕਿੰਨਾ ਹੱਕ ਆ ਉਹ ਹੱਕ ਜਿਵੇਂ ਹਣ ਆਪਾਂ ਕਹਿ ਲਿਆ 7 ਦੀ ਜੇ ਆਪਾਂ ਗੱਲ ਕਰਦੇ ਹਿਮਾਚਲ ਤੇ ਪੰਜਾਬ ਦੀ ਹਿਮਾਚਲ ਤੇ ਪੰਜਾਬ ਦੋਨੇ 7 ਦੇ ਪਾਣੀ ਤੇ ਹੱਕ ਰੱਖਦੇ ਆ ਹਿਮਾਚਲ ਦਾ 7 ਦੇ ਪਾਣੀ ਤੇ ਹੱਕ ਉਹਨਾਂ ਜਿੰਨਾ ਉਹਦੇ ਹਿੱਸੇ ਦਾ ਪਾਣੀ ਆਉਂਦਾ ਜਦੋਂ ਅਸੀਂ ਉਹਦੀ ਖੇਤੀ ਤੇ ਉਹਦੀਆਂ ਜ਼ਰੂਰਤਾਂ ਨੂੰ ਕੈਲਕੂਲੇਟ ਕਰਾਂਗੇ ਪੰਜਾਬ ਦੀ ਇਰੀਗੇਸ਼ਨ ਤੇ ਪੰਜਾਬ ਦੀਆਂ ਜ਼ਰੂਰਤਾਂ ਨੂੰ ਕੈਲਕੂਲੇਟ ਕਰਾਂਗੇ ਉਹਦੀ ਰੇਸ਼ਿਓ ਚ ਪਾਣੀ ਵੰਡਿਆ ਜਾਂਦਾ ਪਰ ਹਿਮਾਚਲ ਸਤਲੁਜ ਨੂੰ ਰੋਕ ਕੇ ਜਾਂ ਬਦਲ ਕੇ ਇਹ ਜਿਹੜਾ ਇੰਟਰਨੈਸ਼ਨਲ ਰਿਪੇਰੀਅਨ ਲਾਅ ਦੀ ਕਲੋਜ਼ ਆ ਜਿਹੜੀਆਂ ਇੰਟਰ ਸਟੇਟ ਜਾਂ ਅੰਤਰਰਾਸ਼ਟਰੀ ਜਿੱਥੇ ਵੀ ਦਰਿਆ ਉਹ ਆਪਦੇ ਹਿੱਸੇ ਦਾ ਹਿੱਸਾ ਮ ਕਰ ਰਹੂਗਾ ਉਹਦਾ ਜਿਹੜੀ ਯੂਜ਼ ਲੈਂਡ ਕਰਦੀ ਆ ਜਾਂ ਡੋਮੈਸਟਿਕ ਨੀਡ ਆ ਉਹਦੇ ਦੇ ਸਤੇ ਉਹੋ ਹਿੱਸੇ ਦਾ ਪਾਣੀ ਵਰਤ ਸਕਦਾ ਪਰ ਉਹ ਪਾਣੀ ਨੂੰ ਕਿਸੇ ਨਾ ਹੋਰ ਸਟੇਟ ਨੂੰ ਡਾਇਵਰਟ ਕਰ ਸਕਦਾ ਨਾ ਰੋਕ ਸਕਦਾ ਵਹਾ ਨਹੀਂ ਕੁਦਰਤੀ ਬਾਹ ਨਹੀਂ ਬਦਲ ਸਕਦਾ ਇਸ ਕਰਕੇ ਹਿਮਾਚਲ ਪੱਤਰ ਆਪਦੇ ਹਿੱਸੇ ਦੀ ਬਿਜਲੀ ਵਰਤ ਰਿਆ ਆਪਦੇ ਹਿੱਸੇ ਦਾ ਪਾਣੀ ਵਰਤ ਰਿਆ ਹਿਮਾਚਲ ਕਿ ਤੋਂ ਮੁੱਲ ਲੈ ਕੇ ਨਹੀਂ ਕਰ ਰਿਆ ਉਹ ਆਪਦੀ ਨੀਡਸ ਵਰਤ ਰਿਆ ਕੱਲੋਂ ਹਿਮਾਚਲ ਦੀ ਨੀਡ ਵੱਧਦੀ ਆ ਉਸ ਰੇਸ਼ੋ 'ਚ ਹਿਮਾਚਲ ਤੇ ਪੰਜਾਬ ਦੇ ਵਿੱਚ ਪਾਣੀ ਡਿਵਾਈਡ ਹੋਊਗਾ ਆਪ ਜੇ ਕਹੇ ਵੀ ਹਿਮਾਚਲ ਰੋਕ ਕੇ ਹੁਣ ਹਰਿਆਣੇ ਨੂੰ ਕਰ ਤੂੰ ਇਹ ਕਾਨੂੰਨ ਦੀ ਉਲੰਘਣਾ ਵਾ ਸੋ ਉਹ ਨਹੀਂ ਕਰ ਸਕਦਾ ਹੁਣ ਜਿੱਥੇ ਗੱਲ ਰਹਿ ਗਈ ਵੀ ਜਿਹੜੀ ਚੀਜ਼ ਤੇ ਜਿਹਦਾ ਹੱਕ ਹੈ ਨਹੀਂ ਰਾਜਸਥਾਨ ਦਾ ਹੱਕ ਹੈ ਨਹੀਂ ਹਾਂ ਪੰਜਾਬ ਕੋਲ ਬਾਧੂ ਪਾਣੀ ਆ ਪੰਜਾਬ ਉਸ ਬਾਧੂ ਪਾਣੀ ਨੂੰ ਇੱਕ ਕਿਸੇ ਵੀ ਮੁੱਲ ਤੇ ਜਿਹੜਾ ਵੀ ਮੁੱਲ ਵਾਜਬ ਹੋਊਗਾ ਮੁੱਲ ਰੇਟ ਨਿਕਲ ਉਹ ਤੇ ਦੇ ਸਕਦਾ ਰਾਜਸਥਾਨ ਸੰਗਮਰਮਰ ਵੇਚਦਾ ਨਹੀਂ ਉਹ ਪੰਜਾਬ ਨੂੰ ਕਹਿੰਦਾ ਵੀ ਲੈ ਜਾਓ ਫਰੀ ਪੱਥਰ ਤੇ ਸੰਗਮਰਮਰ ਉਹ ਵੇਚਦਾ ਹਰ ਸਟੇਟ ਵੇਚਦੀ ਆ ਫਿਰ ਪੰਜਾਬ ਇੱਕ ਤਾਂ ਆਪ ਤੋ ਮਰ ਰਿਹਾ ਪਰ ਜੇ ਉਹਦੇ ਕੋਲ ਬਾਧੂ ਵੀ ਹੋਵੇ ਪੰਜਾਬ ਤੈ ਕਰੂਗਾ ਪੰਜਾਬ ਦੀ ਮਲਕੀਅਤ ਆ ਉਹ ਫਟ ਕਰੂਗਾ ਵੀ ਉਹਦੇ ਕੋਲ ਹੈ ਜਾਂ ਨਹੀਂ ਹੈ ਤੇ ਦੇਣਾ ਤਾਂ ਮੈਂ ਕਿੰਨੇ ਦਾ ਦੇ। ਹੂੰ। ਸੋ ਇਸ ਕਰਕੇ ਇਹ ਇਹ ਸਾਰੀ ਚੀਜ਼ ਨੂੰ ਰਾਜਸਥਾਨ ਦੇ ਅਗੇਂਸਟ ਨਹੀਂ ਪਰ ਅਸੀਂ ਜਦ ਭੁੱਖੇ ਮਰ ਰਹੇ ਹਾਂ ਅਸੀਂ ਦਈਏ ਕਿੱਥੋਂ ਹੈ ਨਹੀਂ ਮੈਂ ਕਿੱਥੇ ਬਿਲਕੁਲ। ਇਸ ਕਰਕੇ ਉਹ ਉਸ ਗੱਲ ਨੂੰ ਉਲਝਾਉਣ ਦੇ ਲਈ ਇਹ ਆਰਗੂਮੈਂਟ ਦਿੱਤਾ ਜਾਂਦਾ ਇਹ ਆਰਗੂਮੈਂਟ ਕਿਸੇ ਵੀ ਪੱਖੋਂ ਵੈਲਿਡ ਨਹੀਂ ਹੈਗਾ ਨਾ ਟੈਕਨੀਕਲੀ ਵੈਲਿਡ ਆ ਨਾ ਆਪਾਂ ਕਹਿੰਦੇ ਦੁਨੀਆਦਾਰੀ ਦੇ ਹਿਸਾਬ ਨਾਲ ਵੈਲਡਾ ਹੈ। ਭੈਜੀ ਤੁਹਾਡਾ ਧੰਨਵਾਦ ਤੁਸੀਂ 3 ਸਮਾਂ ਕੱਢ ਕੇ ਆਉਂਦੇ ਰਹੇ ਤੁਸੀਂ ਬਹੁਤ ਵਧੀਆ ਆਪਣਾ ਸਦ ਉਪਯੋਗ ਕੀਤਾ ਇਸ ਸਮੇਂ ਦਾ ਵੀ ਤੇ ਆਪਣੀ ਵਿਦਵਤਾ ਦੇ ਨਾਲ ਉਹ ਫਿਲਮ ਤੁਸੀਂ ਰਲ ਕੇ ਵੀਰਾਂ ਨੇ ਬਣਾਈ ਹੈ ਉਹਨੂੰ ਸਲੂਟ ਹੈ ਤੇ ਦੁਨੀਆ ਨੂੰ ਬੇਨਤੀ ਹੈ ਸਾਰਿਆਂ ਜਿੱਥੇ ਵੀ ਸੁਣਦੇ ਹੋ ਸ਼ੇਅਰ ਕਰੋ YouTube ਤੇ ਫਾਈਨਲ ਰਿਸਾਲਟ ਫਿਲਮ ਨੂੰ ਵੱਧ ਤੋਂ ਵੱਧ ਵੇਖੋ ਤੇ ਪੰਜਾਬ ਦੇ ਪਾਣੀਆਂ ਦਾ ਜਿਹੜਾ ਪਾਣੀਆਂ ਦਾ ਸੰਕਟ ਹੈ ਪੰਜਾਬ ਲਈ ਖਤਰੇ ਦੀ ਘੰਟੀ ਸਰਾਰ ਕਿਰਪਾਲ ਸਿੰਘ ਦਰਦੀ ਦੀ ਉਹ ਪੁਸਤਕ ਹੈ ਜਿਹੜੀ ਕਿਤਾਬ ਨਸ਼ਾਪੀ ਅਖੀਰ ਚ ਬਾਈ ਜੀ ਕੁਝ ਹੋਰ ਕਹਿਣ ਤੋਂ ਸਾਡੀ ਇੱਕ ਬੇਨਤੀ ਹੈ ਵੀਰ ਜੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬੀਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਵੀ ਅਸੀਂ ਸਮਝੀਏ ਚਾਲ ਚੱਲੀ ਕੀ ਜਾ ਰਹੀ ਹੈ ਤੇ ਸਾਡਾ ਰਿਸਪੌਂਸ ਕਿਵੇਂ ਹੋਣਾ ਚਾਹੀਦਾ ਕਿਉਂਕਿ ਉਹਨੇ ਜਿਵੇਂ ਪਾਸਟ ਦੇ ਵਿੱਚ ਇੱਕ ਸੈਕਸ਼ਨ ਨੂੰ ਟਾਰਗੇਟ ਬਣਾ ਕੇ ਇਹ ਉਹਨਾਂ ਦਾ ਘਾੜ ਕੀਤਾ ਸਿੱਖਾਂ ਦਾ ਤੇ ਪੰਜਾਬ ਨੂੰ ਲੁੱਟਿਆ ਹੋਰ ਜਦੋਂ ਹੀ ਹਣ ਰਾਜਸਥਾਨ ਜਾਂ ਹਰਿਆਣਾ ਕਿਉਂ ਬੋਲਦਾ ਜਦੋਂ ਉਹਨਾਂ ਨੇ ਇਹਨੂੰ ਇੱਕ ਡਿਸਪਿਊਟ ਬਣਾਤਾ ਜਿਹੜਾ ਕਿ ਨਹੀਂ ਸੀਗਾ ਹੁਣ ਕਰਦਿਆ ਨਾ ਵੀ ਅਸੀਂ ਪਾਣੀ ਦੀ ਖਾਤਰ ਯੁੱਧ ਕਰਾਂਗੇ ਜਾਟ ਅੰਦੋਲਨ ਅਸੀਂ ਦੇਖਿਆ ਅਸਲ 'ਚ ਜਿਹੜੀ ਕਿ ਡਿਸਪਿਊਟ ਹੈ ਹੀ ਨਹੀਂ ਸੀ ਜਦੋਂ ਡਿਸਪਿਊਟ ਬਣਾਤਾ ਸਾਡੇ ਨਾਲ ਸਿੰਘ ਫਸਾਪੇ ਪੰਜਾਬ ਦੇ ਬਡਾਂਗੇ ਦਾ ਥਾਂ ਖੜਾ ਕਰਤਾ ਤੇ ਜਿਸ ਤਰੀਕੇ ਨਾਲ ਉਹ ਅਗਲੀ ਗੇਮ ਪਲਾਨ ਖੇਡ ਰਿਆ ਜਿਹੜਾ ਗਾਹਲਾ ਪਾਣੀ ਲੈ ਕੇ ਸਾਨੂੰ ਉਹਦੀ ਸਮਝਣ ਵੀ ਬੜੀ ਲੋੜ ਆ ਉਹ ਬਿਲਕੁਲ ਉਹੀ ਬਾਤ ਹੈ ਆ ਵੀ ਇਹਨੂੰ ਫਿਰ ਹਿੰਦੂ ਸਿੱਖਾਂ ਦਾ ਫਸਾਦ ਬਣਾ ਕੇ ਸਰਸਤੀ ਦਾ ਇਸ਼ੂ ਬਣਾ ਕੇ ਧਾਰਮਿਕ ਇਸ਼ੂ ਬਣਾ ਕੇ ਲੁੱਟਿਆ ਜਾਵੇ ਅਸੀਂ ਸਾਰੇ ਪੰਜਾਬੀ ਉਹਦੀ ਉਸ ਚਾਲ ਨੂੰ ਭਾਰਤੀ ਸਟੇਟ ਦੀ ਉਸ ਚਾਲ ਨੂੰ ਸਮਝੀਏ ਕਿਵੇਂ ਉਹ ਉਸ ਖਿੱਤੇ ਵਿੱਚ ਸਾਰਿਆਂ ਦਾ ਘਾਣ ਕਰਾਉਣ ਦੀ ਤਿਆਰੀ ਚਾ ਉਹਦੇ ਅਕੋਰਡਿੰਗਲੀ ਅਸੀਂ ਆਪਣੇ ਰਿਸਪੌਂਸ ਦਈਏ ਤੇ ਸਾਰੇ ਇਕੱਠੇ ਹੋ ਕੇ ਇਸ ਪੰਜਾਬ ਦੀ ਇਸ ਬਰਬਾਦੀ ਨੂੰ ਰੋਕੀਏ ਸਿਕੂ ਬਾਈ ਜੀ ਬ੍ਰੇਸ਼ਰ ਸਾਹਿਬ ਇੱਕ ਮਿੰਟ ਤੁਹਾਡੇ ਕੋਲ ਅ ਸਰਾਰੀ ਸਿੰਘ ਜੀ ਮੈਂ ਤਾਂ ਸਾਰੇ ਸਰੋਤਿਆਂ ਦਾ ਤੁਹਾਡਾ ਰੇਡੀਓ ਕੇਆਰ ਪੀਏ 1550 ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿੰਨੇ ਸਾਨੂੰ ਮੌਕਾ ਦਿੱਤਾ ਜੀ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਵੀ 23 ਵਾਰੀ ਬੋਲਦੇ ਕੋਈ ਵੱਧ ਘੱਟ ਲਫਜ਼ ਕਿਸੇ ਦੇ ਬਾਰੇ ਕਿਹਾ ਜਾਂਦਾ ਅਸੀਂ ਮਾਫੀ ਚਾਹੁੰਦੇ ਆ ਜੀ ਦੇਖੋ ਸਾਡੀ ਇਹ ਬੇਨਤੀ ਤੁਸੀਂ ਪ੍ਰਵਾਨ ਕਰੋ ਜਿਹਦਾ ਸਦਾ ਸੁਖਦੀਪ ਸਿੰਘ ਨੇ ਕਿਹਾ ਵੀ ਤੁਸੀਂ ਆਪ ਸਾਰੇ ਪੰਜਾਬੀ ਇਸ ਮਸਲੇ ਨੂੰ ਸਟੱਡੀ ਕਰੋ ਖੁਸ਼ੀ ਇਸ ਸਾਲ ਥੋੜੀ ਜੀ ਇਸ ਗੱਲ ਦੀ ਆ ਜੀ ਵੀ ਪੰਜਾਬ ਦੇ ਵਿੱਚ ਬਹੁਤ سارے ਲੋਕਾਂ ਨੇ ਇਹ ਗੱਲ ਕਰਨੀ ਸ਼ੁਰੂ ਕੀਤੀ ਇਸ ਮਸਲੇ ਨੂੰ ਪੋਲੀਟੀਕਲ ਲੀਡਰਾਂ ਨੇ ਵੀ ਚੱਕਿਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਐਸ ਵਾਰ ਜਿਹੜੀ ਸੋਰਸ ਸੀਗੀ ਉਹ ਥੋੜੀ ਪਿਛਲੇ ਸਮਿਆਂ ਨਾਲੋਂ ਬੱਕਰੀ ਸੀ ਉਹਨਾਂ ਦੇ ਬਿਆਨ ਪਰ ਅਸੀਂ ਪੰਜਾਬ ਨੂੰ ਬਚਾਈਏ ਸਾਡੀ ਜਿਹੜੀ ਸੋਚ ਪੰਜਾਬ ਪੰਜ ਆਬ ਹੁਣ ਅਸੀਂ ਢਾਈ ਆਬ ਰਹਿ ਗਏ ਸਾਡਾ ਨਾਂ ਸਾਡੀ ਜਿਹੜੀ ਮਦਰ ਆ ਉਹਦਾ ਨਾਂ ਸਾਡੇ ਆਪਾਂ ਤੋਂ ਗਿਆ ਬਚਾਉਣਾ ਜ਼ਰੂਰੀ ਹੈ ਜੀ ਆਬ ਬਚੂ ਤਾਂ ਅਸੀਂ ਉਹਦੇ ਬਾਰੇ ਕੁਝ ਐਫਰਟ ਕਰਾਂਗੇ ਇੱਕ ਦੂਜੇ ਆਲੂ ਨਾਲ ਦੇਖਦੇ ਰਹੋ ਸਾਰੇ ਇਕੱਠੇ ਹੋ ਕੇ ਇਹਦੇ ਬਾਰੇ ਬਾਤ ਸਾਓ ਕੋਈ ਕਿਸੇ ਤਰੀਕੇ ਨਾਲ ਆਪਣੀ ਐਫਰਟ ਤੁਸੀਂ ਪਾ ਸਕਦੇ ਹੋ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਰੀ ਜੀ ਕੀ ਖਤਰੀ ਇਸ ਜਸਵਿੰਦਰ ਸਿੰਘ ਵਿਦੇਸ਼ ਅਸਟਾ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਹੈ ਜਿੰਨੇ ਸਾਡੇ ਅਸਾਸੇ ਨੇ ਜਿੰਨੇ ਸਾਡੇ ਚ ਵਿਦਵਤਾ ਜਿੰਨੀ ਕ ਮਾਲਕ ਨੇ ਤੌਫੀਕ ਦਿੱਤੀ ਹੈ ਉਹਦੇ ਹਿਸਾਬ ਨਾਲ ਜਿੰਨਾ ਕੁ ਪ੍ਰੋਸ ਸਕਦੇ ਆ ਉਹ ਪ੍ਰੋਸਟਿਆਂ ਤੁਹਾਡੇ ਸਾਹਮਣੇ ਕਦੇ ਦਾਬਾ ਨਹੀਂ ਵਾਦਾ ਨਹੀਂ ਕੀਤਾ ਕਿ ਸਭ ਤੋਂ ਵਧੀਆ ਅਸੀਂ ਆ ਮੈਂ ਆ ਸਾਰੇ ਅਸੀਂ ਕੋਸ਼ਿਸ਼ ਕਰਦੇ ਹਾਂ ਸਵੇਰ ਤੋਂ ਲੈ ਕੇ ਆਸਣ ਤੱਕ ਜਿੰਨੇ ਵੀ ਨਾਲ ਦੇ ਮੇਜ਼ਬਾਨ ਨੇ ਔਰ ਤੁਸੀਂ ਮਾਣ ਦਿੱਤਾ ਇਸ ਮੰਚ ਨੂੰ ਜਿਉਂ 2000 ਦਾ ਸ਼ੁਰੂ ਹੋਇਆ 16-17 ਸਾਲ ਹੋ ਗਏ ਪਹਿਲਾ ਇਹ ਰੇਡੀਓ ਸਟੇਸ਼ਨ ਸੀ ਜਿਸ ਪੈਸੇ ਲਾ ਕੇ ਬਾਦ ਪਰਿਵਾਰ ਨੇ ਸ਼ੁਰੂ ਕੀਤਾ ਇਸੇਰੇ ਪੰਜਾਬ ਦੇ ਨਾਂ ਥੱਲੇ ਉਸ ਤੋਂ ਬਾਅਦ ਜਦ ਫਿਰ ਜਿਹੜੀ ਪੂਰੀ ਚੜ੍ਹਾਈ ਹੋ ਗਈ ਫਿਰ ਉਹ ਕਹਿੰਦੇ ਫਿਜ਼ੀਕਲ ਨਹੀਂ ਇੱਥੇ ਰਹਿ ਸਕਦਾ ਨੈਟਵਰਕਿੰਗ ਅਮਰੀਕਾ ਮੂਵ ਕਰੋ ਚਲੋ ਹੁਣ ਸਾਡੇ ਓਨਰ ਹੋਰ ਨੇ ਪਰ ਸਾਡੀ ਜਿਹੜੀ ਹੈ ਟੇਸਟ ਉਹੀ ਹੈ ਕਿਉਂਕਿ ਸਾਨੂੰ ਜਿਵੇਂ ਅਸੀਂ ਜਿਹੜਾ ਵੀ ਮੇਜ਼ਬਾਨ ਜਿਵੇਂ ਬੋਲਦਾ ਉਸ ਤਰ੍ਹਾਂ ਜਿੱਥੇ ਮਰਜ਼ੀ ਬਿਠਾ ਦਿਓ ਇਉਂ ਹੀ ਬੋਲਾਂਗੇ ਤਾਂ ਕਿ ਬਾਹਲੇ ਆਂ ਸਾਨੂੰ ਝੱਲਣਾ ਨਹੀਂ ਇੱਕ ਜਗ੍ਹਾ ਹੀ ਸੈੱਟ ਹੈ ਔਰ ਇੱਥੇ ਹੀ ਜਿੰਨਾ ਜ਼ੋਰ ਲਾਉਣਾ ਲਾ ਦੇਣਾ ਹਰ ਰੋਜ਼ ਕੋਈ ਨਾ ਕੋਈ ਇਹ ਜਿਹੜਾ ਪਾਣੀਆਂ ਦੇ ਬਾਰੇ ਪਿਛਲੇ ਮੇਨਲਾ ਦਾ ਪੰਜ ਚਾਰ ਸਾਲਾਂ ਤੇ ਆਪਾਂ ਬਹੁਤ ਪ੍ਰੋਗਰਾਮ ਕੀਤੇ ਅਲਸੀ ਦੀ ਤੁਹਾਨੂੰ ਮੈਂ ਉਸ ਨੂੰ ਗੱਲ ਸੁਣਾਈ ਸੀ ਕਿਵੇਂ ਇੱਕ ਐਡੀ ਵੱਡੀ ਝੀਲ ਖਤਮ ਹੋ ਗਈ ਔਰ ਉਹ ਦੇਖਦੇ ਤੇ ਦੇਖਦੇ ਹੋ ਜਦ ਕਜ਼ਾਕਿਸਤਾਨ ਬਣਿਆ ਦੇਸ਼ ਤੇ ਟੁਕੜੇ ਹੋਏ ਜਿਹੜਾ ਕਿ ਰੂਸ ਦਾ ਹੀ ਹਿੱਸਾ ਸੀ ਪਰ ਜਦ ਰਸ਼ੀਆ ਅਲੱਗ ਹੋ ਗਿਆ ਉਹਨਾਂ ਦਾ ਪਾਣੀਆਂ ਦਾ ਵਹਾਅ ਉਹਨਾਂ ਨੇ ਮੋੜਤਾ ਅਸਜੀਲ ਸੁੱਕ ਗਈ ਹੁਣ ਉੱਥੇ ਤੋਂ ਉੱਡਦੇ ਰੇਤੇ ਨਾਲ ਲੋਕਾਂ ਨੂੰ ਕੈਂਸਲ ਹੋ ਰਿਹਾ ਬਣੇ ਬਣਾਏ ਸ਼ਿਪ ਜਿਹੜੇ ਮਛੇਰਿਆਂ ਦੇ ਸੀ ਜਿਹਦੇ ਕੰਡੇ ਕੈਨਰੀਆਂ ਸੀ ਤੇ ਲੱਖਾਂ ਹੀ ਲੋਕ ਰੋਟੀ ਖਾ ਰਹੇ ਸੀ ਉਹ ਸਾਰੇ ਉੱਜੜ ਗਏ ਮੰਗੋਲੀਆ ਦੇ ਵਿੱਚੋਂ ਪਾਣੀ ਮੁੱਕਿਆ ਤੇ ਲੋਕ ਉੱਜੜੇ 1.5 ਮਿਲੀਅਨ ਦੇ ਕਰੀਬ ਸਰਸਕਦੀਪ ਸਿੰਘ ਦੱਸ ਕੇ ਗਏ ਨੇ ਇਹ ਉਹਨਾਂ ਨੇ ਮਿਹਨਤ ਕੀਤੀ ਪੰਜਾਬ ਦੀ ਡਿਸਪਿਊਟ ਨੂੰ ਕਿ ਯਾਰ ਸਾਡੇ ਤੇ ਇਹ ਡਾਂਗ ਵਰਦੀ ਕਿਉਂ ਹੈ ਕਾਰਨ ਕੀ ਹੈ ਉਹ ਚੀਜ਼ ਨੂੰ ਲੈ ਕੇ ਆਂਦਾ ਤੇ ਆਪਣਾ ਆਧਾਰ ਪੇਸ਼ ਕੀਤਾ ਜਿਹਨੂੰ ਤਕਨੀਕੀ ਤੌਰ ਤੇ ਕਿਤੇ ਵੀ ਰੱਦ ਨਹੀਂ ਕੀਤਾ ਜਾ ਸਕਦਾ ਪਰ ਹੁਣ ਆਪਣੀ ਪਹੁੰਚ ਆਪਣੇ ਤੱਕ ਹੀ ਗਾਹ ਦੀ ਪਹੁੰਚ ਜਿਹੜੀ ਆ ਸਰਕਾਰਾਂ ਕਰਨ ਸੀਐਮ ਕਰੇ ਤੇ ਸੁਪਰੀਮ ਕੋਰਟ ਦੀ ਦਿਆਨਤਦਾਰੀ ਹੋਵੇ ਤਾਂ ਸੱਚ ਨੂੰ ਸੱਚ ਕਹੇ ਪਰ ਜਿੱਥੇ ਰਾਡੀ ਕਮਿਸ਼ਨ ਵਰਗੇ ਬੈਠਿਆ ਉਹ ਕਹਿੰਦਾ ਰਪੇਰੀਅਨ ਜਿਹੜਾ ਰਾਜ ਆ ਉਹਦੀਆਂ ਹੱਦਾਂ ਚੱਕ ਕੇ ਉੱਥੇ ਫਿੱਟ ਕਰ ਦੇਣਗੇ ਜਿੱਥੇ ਰਪੇਰੀਅਨ ਤੁਹਾਡਾ ਲਾਲੂ ਜਾਂ ਮੁੱਕ ਜੂ ਤੁਸੀਂ ਕਿਹੜੀ ਗੱਲ ਕਰਦੇ ਹੋ ਜਦ ਇਹੋ ਜਿਹਾ سلوਕ ਹੋਊਗਾ ਉਹਦੇ ਤੋਂ ਭੇਖ ਮੂਰੇ ਜੇ ਉਹ ਜਿਹਾ ਲੱਗਦਾ ਆਪਾਂ ਨੂੰ ਦੇਖਦਾ ਇਸ ਫਿਲਮ ਬਾਰੇ ਫਾਈਨਲ ਆ ਬਾਰੇ ਜਾਂ ਕੀਤੀਆਂ ਨੇ ਤਿੰਨੇ ਸੈਗਮੈਂਟਸ ਬਾਰੇ ਆਪਣੇ ਕੋਲ 5-7 ਮਿੰਟ ਨੇ ਤੁਹਾਡੇ ਮਨ ਚ ਵੀ ਕਈ ਵਾਰ ਸ਼ਬਦ ਹੁੰਦਾ ਕੋਈ ਗੱਲਬਾਤ ਕਰਨੀ ਤੁਹਾਡੇ ਮਨ ਚ ਬਲਬਲੇ ਹੁੰਦੇ ਆ 1844 247 1550 ਤੁਸੀਂ ਗੱਲਬਾਤ ਕਰ ਸਕਦੇ ਹੋ ਫਿਰ 12:00 1:20 ਮਿੰਟ ਤੋਂ ਬਾਅਦ ਡੋਨਲਡ 트ੰਪ ਦਾ ਸੱਤ ਦੇਸ਼ਾਂ ਤੇ ਲਾਇ ਬੈਨ ਦੇ ਪਿੱਛੇ ਕੀ ਹੈ ਉਹ ਨਾਲ ਹੋ ਕੀ ਸਕਦਾ ਉਹਦੀਆ ਤਕਨੀਕੀ ਕਿਹੜੀਆਂ ਕਿੜੀਆਂ ਗੱਲਾਂ ਨੇ ਜਿਹੜੀਆਂ ਪਵੇਖ ਨੂੰ ਪਵੇਖ ਜਿਹਦੇ ਨਾਲ ਨਾਲ ਨੇ ਤੇ ਕਿਸ ਤਰ੍ਹਾਂ ਉਹ ਕੁਛ ਨਾ ਕੁਛ ਅਜਿਹਾ ਹੋ ਸਕਦਾ ਹੈ ਜਿਹਦੀ ਤਵਕਕੂ ਕੀਤੀ ਜਾ ਸਕਦੀ ਹੈ 18442471550 ਹੋਣੇਰ ਨੰਬਰ ਪੰਜਾਬ ਦੇ ਪਾਣੀਆਂ ਦੇ ਬਾਰੇ ਤਿੰਨੇ ਕੜੀਆਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਪਤਾ ਲੱਗਿਆ ਹੁਣ ਕਿੰਨੀ ਕੁ ਤੁਸੀਂ ਸੋਚੀ ਬੈਠੇ ਹੋ ਔਰ ਤੁਹਾਡੇ ਹਿਸਾਬ ਨਾਲ ਕੀ ਹੋਏਗਾ ਤੇ ਕਹਜਾ ਸਮਾ ਮੂਹਰੇ ਆਏਗਾ ਇਸ ਸਰਕਾਰਾਂ ਸਹਿਰਦ ਪਹਿਲੀਆਂ ਦੇ ਨਾਲ ਅਗਲੀਆਂ ਸਰਕਾਰਾਂ ਸਹਿਰਦੋ ਕਿ ਪੰਜਾਬ ਦੇ ਪਾਣੀ ਲਈ ਖੜਨ ਗਈਆਂ 1843 247 1550 ਤੇ ਕੁਝ ਸੋਚਣ ਵਾਲਿਆਂ ਨੇ ਇਸ ਬਾਰੇ ਦੱਸਿਆ ਸੁਣਨ ਵਾਲਿਆਂ ਨੇ ਸਰਜਟਾਣਾ ਨੇ ਉਹ ਕਹਿੰਦੇ ਬਈ ਪੰਜਾਬ ਦੇ ਪਾਣੀ ਦਾ ਸੋਲੂਸ਼ਨ ਆ ਜਿਹੜਾ ਉਹ ਇਸ ਜੁਡੀਸ਼ਰੀ ਦੇ ਵਿੱਚ ਜਿਹੜਾ ਉਹ ਨਹੀਂ ਹੋ ਸਕਦਾ ਜੁਡੀਸ਼ਰੀ ਇਸ ਨੂੰ ਨਹੀਂ ਕਰ ਸਕਦੀ ਹਿਮਾਚਲ ਪੰਜਾਬ ਦਾ ਹਿੱਸਾ ਸੀ ਤੇ ਇੱਕ ਤੌਰ ਤੇ ਰਹਿੰਦੇ ਸੀ ਤੇ ਉਹਨਾਂ ਨੂੰ ਪਾਣੀ ਜਿੰਨੀ ਦੀ ਜ਼ਰੂਰਤ ਸੀ ਉਹ ਮਿਲ ਰਿਹਾ ਤੇ ਗੱਲ ਉਹਨਾਂ ਨੇ ਇੱਕ ਫੇਰ ਖਰਸ਼ਾ ਪ੍ਰਗਟਾਇਆ ਕਿ ਇਹ ਸਿੱਖਾਂ ਦੀ ਮੰਗ ਬਣ ਕੇ ਰਹਿ ਜਾਣੀ ਸੰਦੀਪ ਸਿੰਘ ਲਾਈਨ ਨੰਬਰ 3 ਲਾਈਨ ਨੰਬਰ 3 ਸੰਦੀਪ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਅਨੀ ਭਾਈ ਪਾਣੀਆਂ ਦੇ ਬਾਰੇ ਮੈਂ ਕਹਣਾ ਕਾਫੀ ਵਧੀਆ ਇਨਫੋਰਮੇਸ਼ਨ ਮਿਲੀ ਹੈ ਤੇ ਇਹ ਇੱਕ ਮੈਂ ਕਹਿਣਾ ਸੀ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਖੁੱਲੇ ਤੌਰ ਤੇ ਇਹ ਪਾਣੀਆਂ ਦਾ ਵੀ ਉਠਾਉਂਦੀ ਤਾਂ ਜਿਆਦਾ ਵਧੀਆ ਹੁੰਣਾ ਇੱਕ ਲੋਕਾਂ ਨੂੰ ਲੋਕਾਂ ਚ ਅਵੇਅਰਨੈਸ ਹੋਣੀ ਸੀ ਤੇ ਇੱਕ ਉਹਨਾਂ ਲਈ ਕਾਫੀ ਬੈਨੀਫਿਟ ਬੈਨੀਫੀਸ਼ੀਅਲ ਸਾਬਤ ਹੋਣਾ ਸੀਗਾ ਮੇਰੇ ਅਕੋਰਡਿੰਗ ਇੱਦਾਂ ਕਿਉਂਕਿ ਉੱਥੇ ਇੰਨੇ ਲੋਕੀ ਜਿਆਦਾ ਅਵੇਅਰ ਨਹੀਂ ਹੈਗੇ ਜਿਹੜੇ ਹੈਗੇ ਚਲੋ ਉਹ ਤਾਂ ਹੈਗੇ ਆ ਜਿਹੜੇ ਨਹੀਂ ਉਹਨਾਂ ਨੇ ਵੇਅਰ ਹੋਣਾ ਸੀ ਤੇ ਕਿ ਇਹਨਾਂ ਦੇ ਹੱਕ ਵਿੱਚ ਕਾਫੀ ਜ਼ਿਆਦਾ ਇਹ ਪਲੱਸ ਪੁਆਇੰਟ ਹੋਣਾ ਸੀ ਫੀ ਰਿਕਾਰਡਿੰਗ ਹਮ ਬਸ ਇਨ ਨਹੀਂ ਗੜਾ ਥੈਂਕ ਯੂ ਬਾਈ ਥੈਂਕ ਯੂ ਸ਼੍ਰੀ ਸਿੰਘ ਸੇਖੋਂ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜਾ ਨਾ ਆਪਣੇ ਇਹਨਾਂ ਦੀ ਬੇਈਮਾਨੀ ਸੀ ਜਿਹੜਾ ਹੁਣ ਬਲਾਸਪੁਰ ਜ਼ਿਲ੍ਹਾ ਉਹਨੂੰ ਹਿਮਾਚਲ ਤੇ ਰੱਖਿਆ ਗਿਆ ਤਾਂ ਕਿ ਜਿਹੜਾ ਹੈੱਡਵਰਕ ਦਾ ਪ੍ਰਬੰਧ ਆ ਉਹ ਹਾਲਾਂਕਿ ਆਪਾਂ ਰਪੇਰਿ ਦੇ ਵਿੱਚ ਆਉਂਦੇ ਆ ਵੀ ਫਲੱਡ ਦਾ ਡੈਮੇਜ ਪੰਜਾਬ ਨੂੰ ਨਹੀਂ ਹੋਣਾ ਦੋਨਾਂ ਦਰਿਆਵਾਂ ਦਾ ਤੇ ਉਹ ਸਾਡੇ ਕੋਲੇ ਨਹੀਂਗਾ ਹੁਣ ਜਿਹੜੀ ਉੱਥੇ ਕਮਿਸ਼ਨ ਜਿਹੜਾ ਬਣਾਇਆ ਗਿਆ ਉੱਥੇ ਅਟਰਵਿੰਡਲ ਬਣਾਇਆ ਗਿਆ ਪਾਣੀ ਦਾ ਡਿਸਟ੍ਰੀਬਿਊਸ਼ਨ ਵਾਸਤੇ ਉਹਦੇ ਜੀ ਵੀ ਪੰਜਾਬ ਦੀ ਮਿਨੋਰਟੀ ਆ ਆਪਾਂ ਕੋਲ ਡਿਸੀਜਨ ਨਹੀਂ ਉੱਥੇ ਬਣਾ ਸਕਦੇ ਪਾਣੀ ਹਰਿਆਣੇ ਨੂੰ ਕਿੰਨਾ ਦੇਣਾ ਆਪਾਂ ਨੂੰ ਕਿੰਨਾ ਡਿਸਟ੍ਰੀਬਿਊਟ ਕਰਨਾ ਬਾਕੀ ਜਿਹੜਾ ਇਹ ਭਾਖੜਾ ਡੈਮ ਹੈ ਦੀ ਜਿਹੜੀ ਹਾਈਟ ਆ ਇਹ तकरीबन 570 ਕਿਲੋਮੀਟਰ ਹਾਈਟ ਆ ਇਹਦੀ ਤੇ ਜਿੰਨੀ ਇਹਦੀ ਹਾਈਟ ਆ ਇਹਦੇ ਵਿੱਚੋਂ ਇਹਦੋਂ ਟ੍ਰਿਪਲ ਬਿਜਲੀ ਹਰੇ ਕੱਢੀ ਜਾ ਸਕਦੀ ਆ ਇਹਨਾਂ ਨੇ ਇੱਕ ਟੀਰੀ ਟਾਈਮ ਬਣਾਇਆ ਇਧਰ ਜੁਪੀ ਵਾਲੇ ਪਾਸੇ ਉਹ ਆ ਉਹਦੀ ਹਾਂਜੀ ਉਹਦੀਆਂ ਉਹਦੀਆਂ ਤਿੰਨ ਝਾਲਾ ਬਣਾਈਆਂ ਇਹਨਾਂ ਨੇ ਇਸੇ ਤਰ੍ਹਾਂ ਇਹਦੇ ਤੇ ਵੀ ਜੇ ਇਹ ਮਤਲਬ ਸਰਕਾਰ ਸੰਜੀਦਾ ਹੋਵੇ ਜਿੰਨੀ ਫਾਇਦਾ ਹੈ ਦੀ ਜਿਹੜੀ ਉਹ ਭੋਰ ਸਾਹਿਬ ਲੈ ਕੇ ਆ ਉਹਦੇ ਲੇਕ ਦਾ ਨੰਗਲ ਡੈਮ ਤੋਂ ਪਹਿਲਾਂ ਉੱਥੇ ਪਾਣੀ ਦੀ ਸਟੋਰੇਜ ਕਰ ਸਕਦੇ ਆ ਇਹ ਤੇ ਦੋ ਝਾਲਾ ਉੱਪਰ ਬਣਾ ਕੇ ਫਿਰ ਜਿਹੜਾ ਨੰਗਲ ਡੈਮ ਆ ਜਿੱਥੋਂ ਪਾਣੀ ਦੀ ਡਿਸਟ੍ਰਿਬਿਊਸ਼ਨ ਹੁੰਦੀ ਆ ਆਪਾਂ ਨਹਿਰਾਂ ਨੂੰ ਤੁਹਾਡੇ ਵਾਲੀ ਨੂੰ ਤੇ ਦੂਜੀਆਂ ਨੂੰ ਇਹ ਇੱਥੇ ਵੀ ਟਰਬਾਈਨ ਲੱਗ ਸਕਦੀਆਂ ਤੇ ਇਹਨਾਂ ਦੀ ਉਹ ਜਿਹੜੀ ਪਲਾਨਿੰਗ ਸੀ ਪੂਰ ਸੀ ਫੰਡ ਹੈ ਨਹੀਂ ਸੀਗੇ ਫਿਰ ਜਦੋਂ ਹਰੀਕੇ ਪੱਤਣ ਡੈਮ ਇਹ ਬਣਿਆ ਵਾ ਇੱਥੇ ਜਿਹੜਾ ਹੈਗਾ ਜੇ ਲੇਕ ਆ ਇਹਦਾ 3 ਫੁੱਟ ਪਾਣੀ ਦਾ ਹਾਈਟ ਹੋਰ ਕਰ ਲੈਣ ਇੱਥੇ 8 ਟਰਬਾਈਨਾਂ ਲੱਗ ਸਕਦੀਆਂ ਤੇ ਇਹ ਆ ਵੀ ਫੇਰ ਜਿਹੜੀ ਭਾਖੜਾ ਨਹਿਰ ਜਾਂਦੀ ਆ ਉਹਦੇ ਵਿੱਚ ਇੰਨੀ ਸਪੀਡ ਨਾਲ ਪਾਣੀ ਜਾਂਦਾ ਤੇ ਉਹਦੀਆਂ 30 35 ਝਾਲਾਂ ਆ ਉਹਨਾਂ ਝਾਲਾਂ ਦੇ ਉੱਤੇ ਟਰਬਾਈਨਾਂ ਲੱਗ ਸਕਦੀਆਂ ਬਿਜਲੀ ਪੈਦਾ ਹੋ ਸਕਦੀ ਹੈ ਪੰਜਾਬ ਨੂੰ ਕੋਲੇ ਵਾਲੀ ਬਿਜਲੀ ਤੋਂ ਬਿਲਕੁਲ ਹੀ ਖਤਮ ਕੀਤਾ ਜਾ ਸਕਦਾ ਸਲੂਸ਼ਨ ਫ੍ਰੀ ਬਿਜਲੀ ਨਾਲੇ ਫ੍ਰੀ ਦੀ ਬਿਜਲੀ ਆ ਇਹਦੇ ਤੇ 3 ਜਾਂ 4 ਸੈਂਟ ਕੋਸਟ ਆਉਂਦੀ ਆ ਉਹ ਵੀ ਮੇਨਟੇਨੈਂਸ ਦੀ ਆਉਂਦੀ ਆ ਜਿਹੜੀ ਦੂਜੀ ਉਹਦੇ ਤੇ 70% ਕੋਸਟ ਆਉਂਦੀ ਆ ਤੇ ਜਿਹੜਾ ਆਪਾਂ ਚੌਲ ਕਪਾਹ ਦੀ ਹੈਗੀ ਖੇਤੀ ਆ ਜਦੋਂ ਆਪਾਂ ਤੁਸੀਂ ਅਮਰੀਕਾ ਦੇ ਇਧਰ ਟਰੱਕ ਤੇ ਜਾਂਦੇ ਰਹੇ ਹੋਮੂਗੇ ਜਦੋਂ ਫਾਈਵ ਤੇ ਜਾਂਦੇ ਆ ਲਾਸ ਬੈਂਸ ਦਾ ਏਰੀਆ ਆਉਂਦਾ ਜਿੱਥੇ ਵਾਟਰ ਰਿਜ਼ਰਵ ਹੈ ਨਾਲ ਇਹਨਾਂ ਏਰੀਆ ਦੇ ਵਿੱਚ ਉਥੇ ਕਪਾਹ ਦੀ ਨਰਮੇਰੀ ਖੇਤੀ ਕਰਦੇ ਉਹਦੀ ਮੂਸਲੀ ਲੰਮੀ ਹੁੰਦੀ ਆ ਉਹ ਪਾਣੀ ਬਹੁਤ ਘੱਟ ਪੀਂਦੀ ਆ ਛੋਨੇ ਦੀ ਫਸਲ ਵੀ ਜਿਹੜੀ ਹੈਗੀ ਆ ਇਹਨੂੰ ਖਤਮ ਕਰਕੇ ਸਿਰਫ ਮੱਝੇ ਚ ਮੰਡ ਦੇ ਵਿੱਚ ਜਿੱਥੇ ਪਾਣੀ ਦਾ ਲੈਵਲ 3-4 ਫੁੱਟ ਤੇ ਆ ਸੀਮ ਆ ਉੱਥੇ ਬੀਜਿਆ ਜਾਵੇ ਬਾਕੀ ਥਾਵਾਂ ਦੇ ਉੱਤੇ ਆਪਣੀ ਚੜੀ ਬੀਜੀ ਜਾ ਸਕਦੀ ਆ ਮਿੱਠੀ ਚੜੀ ਆ ਜਿਹੜੀ ਬਰਾਜ਼ੀਲ ਚ ਬੀਜਦੇ ਆ ਜਿਹਦੇ ਐਥਨੋਲ ਬਣਾਉਂਦੇ ਆ ਗੰਨਾ ਬੀਜਿਆ ਜਾ ਸਕਦਾ ਆਪਣੇ ਗੁਵਾਰਾ ਬੀਜਿਆ ਜਾ ਸਕਦਾ ਤੇ ਬਾਜਰਾ ਬੀਜਿਆ ਜਾ ਸਕਦਾ ਹੋਰ ਜਿਹੜੀਆਂ ਫਸਲਾਂ ਆ ਉਹ ਆਲਟਰਨੇਟਿਵ ਬਹੁਤ ਹੈਗੀਆਂ ਮੱਕੀ ਬੀਜੀ ਜਾ ਸਕਦੀ ਆ ਜਿਹੜੀ ਮੂਸਲੀ ਲੰਮੀ ਆ ਜਿਹੜਾ ਹੁਣ ਝੋਨਾ ਉਹਦਾ ਤੁਸੀਂ ਦੇਖਾਉਣਾ ਜਿਹੜਾ ਤੜਾ ਹੁੰਦਾ ਉਹ ਛਤਰੀ ਵਾਂਗੂ ਹੁੰਦਾ ਥੱਲੇ ਜਿਹੜੀ ਉਹਦੀ ਜਾਲਾ ਹੁੰਦਾ ਜਿਹੜਾ ਜਿਹੜੀ ਜਦੋਂ ਆਪਾਂ ਕਪਾਹ ਪਾੜਦੇ ਆ ਕਪਾਹ ਫੁੱਟ ਰੂਟ ਫੁੱਟ ਤੱਕ ਚਲੀ ਜਾਂਦੀ ਆ ਉਹਨੂੰ ਪਾਣੀ ਦੀ ਘੱਟ ਲੋੜ ਹੁੰਦੀ ਆ ਇਹਨਾਂ ਨੂੰ ਖੇਤੀ ਦਾ ਜਿਹੜਾ ਨਾ ਮਤਲਬ ਲੋਕਾਂ ਲੋਕ ਵੀ ਅਵੇਅਰ ਨਹੀਂ ਗੇ ਹੁਣ ਉੱਥੇ ਨਾ ਪਿਛਲੇ ਪਿਛਲੇ ਸਾਲਾਂ ਦੇ ਵਿੱਚ ਮੋਟਰਾਂ 15 15 ਹਾਰਸ ਪਾਵਰ ਤੋਂ 25 25 ਦੀਆਂ ਕਿਰਾਏ ਉਹ ਹੁਣ ਉਹ ਜਿਹੜੇ ਅਣਪੜ੍ਹ ਜਾਂਤਾ ਉਹਨਾਂ ਦਾ ਕੜ ਹਿੱਲਿਆ ਅਖੇ ਜੀ ਵੀ ਪੱਟੀਆਂ ਕਰਨੀਆਂ ਟਰਾਂਸਫਾਰਮਰ ਕੱਲੀ ਕੱਲੀ ਤੇ ਲਵਾਉਣਾ ਉਹ ਨਾਲੇ ਦਾ ਸਾਡਾ ਲੱਖ ਲੱਖ ਰੁਪਈਆ ਲਵਾਤਾ ਨਾਲੇ ਉਹ ਪਾਣੀ ਹੋਰ ਡਬਲ ਕੱਢ ਜਾਂਦੇ ਆ ਅਸੀਂ ਲੜਦੇ ਆ ਵੀ ਪਾਣੀ ਨਾ ਕੱਢੋ ਤੇ ਪਾਣੀ ਜਿਹੜਾ ਨਹਿਰਾਂ ਦਾ ਸਾਨੂੰ ਪਾਣੀ ਆ ਬਾਕੀ ਮੀਂਹ ਦਾ ਪਾਣੀ ਸੇਵ ਕਰਨਾ ਪੈਣਾ ਕੱਲਾ ਆਪਾਂ ਨੂੰ ਨਹਿਰਾਂ ਦਾ 30% ਸੰਜਾਈ ਮਸਾਂ ਆਉਂਦੀ ਉਹ ਵੀ ਆਪਾਂ ਵੰਟ ਦੇਣੀਗੇ ਲੋਕਾਂ ਨੂੰ ਟੋਏ ਪੱਟਣੇ ਪੈਣੇ ਜਿਹੜੇ ਪਹਿਲਾਂ ਆਪਣੇ ਲੋਕ ਹੁੰਦੇ ਸੀ ਪੁਰਾਣੀ ਸਭਿਤਾ ਦੇਖੀ ਆਪਣੇ ਛੱਪਣ ਹੁੰਦੇ ਸੀ ਕੁਛ ਆਪਣਾ ਜਿਹਾ ਪਾਣੀ ਸਟੋਰੇਜ ਹੁੰਦਾ ਸੀ ਉਹਨੂੰ ਇਰੀਗੇਸ਼ਨ ਵਾਸਤੇ ਜਾਂ ਪੀਣ ਵਾਸਤੇ ਵਰਤਿਆ ਜਾਂਦਾ ਸੀ ਉਹ ਤਾਂ तकरीबन ਗੁਰੂ ਪੰਜਵੇਂ ਪਾਸ਼ਾ ਤੋਂ ਬਾਅਦ ਲੱਗਣ ਲੱਗੇ ਆ ਉਹਨਾਂ ਨੇ ਜਿੰਨੇ ਸਰੇਟਾ ਸਾਹਿਬ ਲਵਾਏ ਜਾਂ ਕੋਸ਼ ਲਵਾਏ ਬੋਲਿੰਗਾਂ ਲਵਾਈਆਂ ਉਹ ਵੀ ਸਿਰਫ ਪੀਣ ਵਾਸਤੇ ਵਰਤੀਆਂ ਜਾਂਦੀਆਂ ਸੀ ਇਰੀਗੇਸ਼ਨ ਵਾਸਤੇ ਨਹੀਂ ਤੇ ਜਿਹੜੀ ਸਚਾਈ ਸੀ ਉਹ ਉਹ ਸੀ ਜਿਹੜੀ ਉਹ ਸਾਰੀ ਮਤਲਬ ਨੇਚਰਲ ਵਾਟਰ ਨਾ ਹੁੰਦੀ ਸੀਗੀ ਜੇ ਹੁਣ ਅਸੀਂ ਮਤਲਬ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਖੇਤੀ ਕਰਾਂਗੇ ਉਸ ਤਰ੍ਹਾਂ ਵਾਟਰ ਸਿਸਟਮ ਨੂੰ ਸੇਵ ਕਰਾਂਗੇ ਤਾਂ ਵੀ ਨਾਲਾ ਪਾਣੀ ਤੇ ਆਪਣੀ ਲਾਈਫ ਬਚਣੀ ਹੈ ਜੀ ਧੰਨਵਾਦ ਥੈਂਕ ਯੂ ਸੇਕੁਰ ਸਰ ਰਣਜੀਤ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਗੱਲ ਸਾਹਿਬ ਬਾਈ ਜੀ ਭਾਈ ਸਾਹਿਬ ਨਾਲ ਰਾਜਸਥਾਨ ਚ ਬਿਲੋਂਗ ਕਰਦਾ ਚਲੋ ਤੁਸੀਂ ਇਹਨਾਂ ਨੇ ਕੁਝ ਨਹੀਂ ਕਰਨਾ ਨਾ ਹੀ ਆਪਣੇ ਤੋਂ ਲੈ ਗਏ ਆ ਇਹ ਆਪਾਂ ਨੂੰ ਕਰਨਾ ਪੈਣਾ ਜੇ ਪੰਜਾਬ ਨੂੰ ਮਿਲ ਵੀ ਜਾਂਦਾ ਖਾਲੇ ਆਪਣੇ ਪੱਕੇ ਨਹੀਂ ਇਹਨਾਂ ਦੇ ਅਹਿਮ ਕਿੱਲੇ ਤਾਂ ਜਾ ਕੇ ਰਾਜਸਥਾਨ ਚ ਜਾ ਕੇ ਦੇਖੋ ਜੀ ਕਿਸੇ ਨੇ ਵੀ ਪਾਰਟੀ ਆਈ ਐ ਰਾਜਸਥਾਨ ਦੇ ਪੰਜਾਬੀਆਂ ਨੇ ਜਾਂ ਜੱਟਾਂ ਨੇ ਆਹ ਦੇ ਹੱਥ ਪੁੱਟੇ ਐਂਡ ਤਾਂ ਦੂਜਾ ਜੀ ਜੇ ਇੱਕ ਵਿੰਡੋ ਹੋਰ ਖੋਲ ਜੇ ਇਸ ਪਾਣੀ ਵਾਲੇ ਮਸਲੇ ਦੇ ਵਿੱਚ ਮੈਨੂੰ ਲੱਗਦਾ ਆਪਾਂ 50 ਸਾਲ ਹੋ ਗਏ ਲੜਦੇ ਨੂੰ ਤੇ 50 ਹੋਰ ਲੱਗ ਜਾਣਗੇ ਤੇ ਜੇ ਵਿੰਡੋ ਹੀ ਖੋਲ ਲਈਏ ਇੱਕ ਹੋਰ ਇਹਦੇ ਚ ਕਰ ਲਈਏ ਜਿਹੜੀ ਇਹ ਕਰ ਰਹੇ ਕਹਿੰਦੇ ਵੀ ਉਜਾਗਰ ਕਰੋ ਬੰਦਿਆਂ ਨੂੰ ਜਿਆਦਾ ਪੜਾਓ ਦੱਸੋ ਹਨਾ ਉਹਦੇ ਚ ਇਹ ਕਰ ਲਈਏ ਕਿ ਜੇ ਇੰਟਰਕੌਮ ਸਿਸਟਮ ਹੀ ਕਰ ਦਿੱਤਾ ਜਾਵੇ ਦੇਸ਼ ਦੇ ਪਾਣੀ ਦਾ ਤਾਂ ਉਹਦੇ ਫਿਰ ਕੀ ਤੁਹਾਡਾ ਖਿਆਲ ਹੈ ਕੀ ਭਾਈ ਜੀ ਪਲਵੰਤ ਸਿੰਘ ਚੀਮਾ ਲਾਈਨ ਨੰਬਰ 2 ਹਾਂਜੀ ਭਾਈ ਸਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਮੈਂ ਨਾ ਕੈਲੀਫੋਰਨੀਆ ਚ ਰਹਿੰਦਾ ਵਾਂ ਤੇ ਇੱਥੇ ਨਾ ਪਿਛਲੇ ਚਾਰ਼ 5 ਸਾਲਾਂ ਤੋਂ ਮੀਂਹ ਪਾਣੀ ਬਹੁਤ ਕਿਲਤ ਆ ਗਈ ਸੀ ਤੇ ਹੁਣ ਪਾਣੀ ਐ ਤੇ ਮੀਂਹ ਬਹੁਤ ਪਿਆ ਤੇ ਇਹਨਾਂ ਕੋਲ ਨਾ ਹੁਣ ਪਾਣੀ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਇਹਨਾਂ ਨੇ ਸਟੇਟ ਗਵਰਨਰ ਨੇ ਕਿਹਾ ਤਾਂ ਕਿ ਸਾਨੂੰ ਹੁਣ ਪਾਣੀ ਬਹੁਤ ਮਿਲ ਗਿਆ ਅਗਲੇ 2-3 ਸਾਲਾਂ ਤੱਕ ਤੁਹਾਨੂੰ ਸਾਡੇ ਤੋਂ ਪਾਣੀ ਬਹੁਤ ਜ਼ਿਆਦਾ ਇਤੋਂ ਇਦਾਂ ਹੀ ਪਾਕਿਸਤਾਨ ਇਹ ਇਤਿਹਾਸ ਦੇਖਿਆ ਕਿ ਕਿਉਂਕਿ ਇੱਥੇ ਇਹਨਾਂ ਨੇ ਪਾਣੀ ਸਟੋਰੇਜ ਦੀ ਬਹੁਤ ਕੀਤਾ ਹੋਇਆ। ਇਹ ਕੈਲੀਫੋਰਨੀਆ ਵਿੱਚ ਘਟੋਖੱਟ 30 40 ਤਾਂ ਹੈਗੀਆਂ ਝੀਲਾਂ ਜਿੱਥੇ ਪਾਣੀ ਸਟੋਰੇਜ ਕਰ ਲੈਂਦੇ ਆ। ਪਲੱਸ ਇਹਨਾਂ ਨੇ ਕੁਝ ਛੋਟੇ ਛੋਟੇ ਡੈਮ ਵੀ ਬਣਾਏ ਹੋਏ ਜਿਹੜੇ ਬਿਜਲੀ ਨਹੀਂ ਬਣਾਉਂਦੇ ਲੇਕਿਨ ਪਾਣੀ ਸਟੋਰੇਜ ਕਰਕੇ ਰੱਖਦੇ ਆ। ਉਹ ਜਦੋਂ ਸਾਡੇ ਪੰਜਾਬ ਦੇ ਵਿੱਚ 2 ਮਹੀਨੇ ਮੀਂਹ ਪੈਂਦਾ ਵਾ ਬਹੁਤ ਜਿਆਦਾ ਪ੍ਰਸਾਦ ਪੈਂਦੀ ਆ। ਕਹਿੰਦੇ ਜੀ ਹਾਰ ਆ ਗਏ, ਖਾੜ ਆ ਗਏ, ਪਾਣੀ ਸਾਹਮਣੇ ਹੁੰਦਾ, ਪਾਣੀ ਰੋੜ ਕੇ ਸਾਰਾ ਪਾਕਿਸਤਾਨ ਚੱਲ ਜਾਂਦਾ। ਜਾ ਦੂਜੀਆਂ ਸਟੇਟਾਂ ਵਿੱਚ ਚੱਲ ਜਾਂਦਾ ਏ ਤੇ ਕਿਉਂ ਨਹੀਂ ਸਾਡੀ ਗਵਰਨਮੈਂਟ ਮਤਲਬ ਇੰਨਾ ਕਰਦੀ ਕਿ ਛੋਟੇ-ਛੋਟੇ ਡੈਮ ਬਣਾਏ ਜਾਣ ਪਾਣੀ ਸਟੋਰ ਚ ਕੀਤਾ ਜਾਵੇ ਤਾਂ ਕਿ ਉਹ ਜਿਹੜੇ 10 ਮਹੀਨੇ ਫਿਰ ਅਸੀਂ ਉੱਥੋਂ ਪਾਣੀ ਲੋਕਾਂ ਨੂੰ ਵੰਡ ਸਕੀਏ ਜਿੱਦਾਂ ਇੱਕ ਹੁਸ਼ਿਆਰਪੁਰ ਆ ਪਖਾਨਕੋਟ ਆ ਜਾਂ ਤੁਸੀਂ ਰੂਪੜ ਦਾ ਉੱਪਰਲਾ ਏਰੀਆ ਲਾ ਲਓ ਕਿ ਉੱਥੇ ਛੋਟੇ-ਛੋਟੇ 3-4 ਡੈਮ ਬਣਾਏ ਜਾਣ ਪਾਣੀ ਸਟੋਰ ਦੇ ਕੀਤਾ ਜਾਵੇ ਨਾਲੇ ਪੰਜਾਬ ਨੂੰ ਪਾਣੀ ਦਿੱਤਾ ਜਾਵੇ ਔਰ ਨਾਲੇ ਹਰਿਆਣੇ ਨੂੰ ਰਾਜਸਥਾਨ ਨੂੰ ਪਾਣੀ ਦਿੱਤਾ ਜਾਵੇ ਇੱਥੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਗੱਲ ਇਹ ਆ ਕਿ ਗਵਰਨਮੈਂਟ ਨੂੰ ਇਹ ਕੰਮ ਕਰਨਾ ਚਾਹੀਦਾ ਜੇ ਤੁਸੀਂ ਲੋਕਾਂ ਨੂੰ ਫੜਕਾਉਨੇ ਆ ਜੀ ਪਾਣੀ ਸਾਡਾ ਲੁੱਟ ਲਿਆ ਪਾਣੀ ਲੁੱਟ ਲਿਆ ਇਹ ਤਾਂ ਸਾਡੀ ਰਾਜਸਥਾਨ ਦੀ ਲੜਾਈ ਆ ਸਾਡੀ ਹਰਿਆਣਾ ਦੀ ਲੜਾਈ ਆ ਜੀ ਬਾਕੀ ਇਹਨੇ ਵਿਚਾਰ ਆ ਜੀ ਥੈਂਕ ਯੂ ਸਰਵਾਜੀ ਗਿਲਸਾਹਬ ਲਾਈਨ ਨੰਬਰ 3 ਗਿਲਸਾਹਬ ਸਤਿ ਸ੍ਰੀ ਅਕਾਲ ਮੈਂ ਥੋੜੀ ਹੋਰ ਨੈਕਸਟ ਸਲਾਈਡ ਵੀ ਤੁਸੀਂ ਪਹਿਲੇ ਗੱਲ ਕਰਦੇ ਚ ਗੱਲ ਕਰ ਸਕਦਾ ਮੈਂ ਨਹੀਂ ਮੈਂ ਨਕਸ ਦੀ ਗੱਲ ਨਹੀਂ ਸੀ ਕਰ ਰਿਹਾ ਮੈਂ ਤਾਂ ਥੋੜੀ ਜੀ ਉਸ ਸਮੇਂ ਦੀ ਗੱਲ ਕਰ ਰਿਹਾ ਪੰਜਾਬ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਚੋਂ ਨਿਕਲਿਆ ਮੈਂ ਤਾਂ ਪਾਣੀ ਦੀ ਗੱਲ ਕਰ ਰਹੀ ਹਾਂ ਚਲੋ ਡੋਨਲਡ 트ੰਪ ਨੇ ਐਗਜ਼ੈਕਟ ਆਰਡਰ ਦਿੱਤਾ ਕਿ ਇਰਾਕ, ਇਰਾਨ, ਸੀਰੀਆ, ਯਮਨ, ਸੁਡਾਨ, ਸੋਮਾਲੀਆ ਤੇ ਲਿਬੀਆ ਇਹਨਾਂ ਦੇ ਵਿੱਚੋਂ ਇਮੀਗ੍ਰੇਸ਼ਨ ਆਉਣ ਵਾਲੇ 4 ਮਹੀਨਿਆਂ ਲਈ ਜਾਂ ਕੋਈ ਵੀ ਇਮੀਗ੍ਰੇਸ਼ਨ ਜਾਂ ਰਿਫਿਊਜੀ ਉਬੈਨ ਉਸਨੇ ਤਰਸੱਲੀ ਮਚਾ ਦਿੱਤੀ ਅਮਰੀਕਾ ਦੇ ਵਿੱਚ ਰੋਹ ਪ੍ਰਦਰਸ਼ਨ ਹੋ ਰਹੇ ਨੇ ਦੁਨੀਆਂ ਦੇ ਲੀਡਰ ਇਸ ਬਾਰੇ ਗੱਲਾਂ ਕਰ ਰਹੇ ਨੇ ਨੀਤੀ ਘਾੜੇ ਇਸ ਬਾਰੇ ਗੱਲਾਂ ਕਰ ਰਹੇ ਨੇ 에어ਪੋਰਟ ਤੇ ਲੋਕ ਉਤਰ ਗਏ ਵੀਜ਼ੇ ਹੱਥ ਚ ਨੇ ਜਿਨ੍ਹਾਂ ਨੇ ਦੂਸਰੇ ਦਿਨ ਫਲਾਈ ਕਰਨਾ ਸੀ ਉਹ ਜਿੱਥੇ ਹੈ ਉੱਥੇ ਹੀ ਰਹਿ ਗਏ 에어ਪੋਰਟ ਤੇ ਉਤਰੇ ਬੰਦਿਆਂ ਨੂੰ ਵਕੀਲਾ ਨੇ ਜ਼ਰਾ ਕਰਕੇ ਤੇ ਅਦਾਲਤ ਦੇ ਵਿੱਚ ਚਰ ਜੋ ਜੋਈ ਕਰਕੇ ਬੰਦੇ ਕੱਢ ਲੇ ਹੁਣ ਕੀ ਹੋ ਰਿਹਾ ਅਗਲਾ ਅਗਲੀ ਗੱਲ ਇਹ ਹੋ ਰਹੀ ਆ ਕਿ ਆਪਣੀ ਆਪਣੀਆਂ ਆਪਣੇ ਆਪਣੇ ਪੱਖ ਸਾਰੇ ਪੇਸ਼ ਕਰ ਰਹੇ ਨੇ ਡੋਨਲਡ 트럼ਪ ਕਹਿੰਦਾ ਵੀ ਮੇਰੇ ਦੇਸ਼ ਦੇ ਵਿੱਚ ਆ ਕੇ ਲੋਕ ਗੜਬੜ ਕਰਦੇ ਆ ਸਾਡੇ ਤੇ ਹਮਲਾ ਕੀਤਾ ਤੇ ਮਸਲਮ ਕੰਟਰੀ ਜਿਹੜੀਆਂ ਬਹੁਤ ਦੇਸ਼ਾਂ ਚ ਮੁਸਲਮ ਲੋਕ ਵੱਸਦੇ ਐ ਸੱਤਾਂ ਦੇਸ਼ਾਂ ਤੋਂ ਬਿਨਾ ਜੇ ਸਾਰੇ ਅਰਬ ਦੇ ਤੁਸੀਂ ਦੇਖੋ ਸਾਊਦੀ ਅਰਬ ਹੈ ਕਵੇਤ ਹੈ ਦੋਹਾ ਕਤਰ ਹੈ ਦੁਬਈ ਹੈ عمان ਹੈ ਉੱਥੇ ਲਾਈ ਹੁਣ ਇਰਾਕ ਦੇ ਵਿੱਚ ਇਰਾਨ ਦੇ ਵਿੱਚ ਸੀਰੀਆ ਦੇ ਵਿੱਚੋਂ ਯਮਨ ਦੇ ਵਿੱਚ ਇਰਾਕ ਦੇ ਵਿੱਚ ਅਲਕਾਇਦਾ ਤੇ ਆਈਸਿਸ ਸੁਡਾਨ ਸੋਮਾਲੀਆ ਤੇ ਲਿਬੀਆ ਦੇ ਵਿੱਚ ਸ਼ਰਿਆ ਅਮਰੀਕਾ ਦੇ ਝੰਡੇ ਸਾੜੇ ਜਾ ਰਹੇ ਨੇ ਤੇ ਹਮਲਾ ਤੁਹਾਨੂੰ ਪਤਾ ਲਿਬੀਆ ਚ ਕਿੱਡਾ ਹੋਇਆ ਸੀ ਕੌਂਸੂਲੇਟ ਤੇ 13 ਘੰਟੇ 30 ਆਵਰਸ ਇੱਕ ਮੂਵੀ ਬਣੀ ਵੇਖਣ ਵਾਲੀ ਅਤੇ ਬੰਦੇ ਮਾਰ ਘੱਤੇ ਸੀ ਉੱਥੇ ਡੋਨਲਡ ਟਰੰਪ ਕਹਿੰਦਾ ਮੈਂ ਵਾਅਦਾ ਕੀਤਾ ਮੇਰਾ ਦੇਸ਼ ਮੈਂ ਆਪਣਾ ਸਿਕਿਉਰ ਕਰਨਾ ਤੇ ਮੇਰੀਆਂ ਹੱਦਾਂ ਨੇ ਮੈਂ ਰਾਸ਼ਟਰਪਤੀਆਂ ਮੇਰੇ ਕੋਲ ਪਾਵਰ ਆ ਤੇ ਮੈਂ ਬੰਦ ਕਰ ਦਿੱਤੀ ਤੇ ਉਸ ਤੋਂ ਅੱਗੇ ਗੱਲ ਇਹ ਹੈ ਕਿ ਅਲ ਤੇ ਆਈਸਿਸ ਜਿਹੜੀ ਸਦਾ ਇਹ ਸਲੋਗਨ ਨਾਰਾ ਦਿੰਦੀ ਆ ਕਿ ਵੈਸਟ ਜਿਹੜਾ ਮੁਸਲਮ ਦੇ ਖਿਲਾਫ ਆ ਮੁਸਲਮਾਨਾਂ ਦੇ ਖਿਲਾਫ ਆ ਤੁਹਾਨੂੰ ਇਹ ਖਤਮ ਕਰ ਰਹੇ ਉਹ ਗੱਲ ਉਹਨਾਂ ਦੀ ਸੱਚ ਹੋ ਨਿਬੜੂ ਕਿ ਆਮ ਮੁਸਲਮਾਨ ਦੇ ਦਿਲ ਤੇ ਇਹ ਗੱਲ ਆਊਗੀ ਪਹਿਲਾਂ ਤਾਂ ਜਿਹੜਾ ਪੱਖ ਰੋਕਣ ਵਾਲੇ ਦੇ ਡੋਨਲਡ 트াম্প ਨੇ ਵਾਅਦੇ ਕੀਤੇ ਸੀ ਕਿ ਮੈਂ ਕੰਧ ਬਣਾਉਣੀ ਆ ਮੈਂ ਮੇਡ ਇਨ ਅਮਰੀਕਾ ਦੀ ਗੱਲ ਕਰਨੀ ਆ ਸਟਰੋਂਗ ਕਰਨਾ ਤੇ ਇਹ ਲੋਕਾਂ ਨੂੰ ਪਤਾ ਹੈ ਉਹਦਾ ਤੇ ਉਹਦੀ ਕੈਬਨਿਟ ਦਾ ਜਿਹੋ ਜਿਹ ਬੰਦੇ ਉਹਨੇ ਰੱਖੇ ਆ ਉਹਦੇ ਵਿੱਚ ਦੂਸਰੀ ਸ਼ੱਕ ਨਹੀਂ ਪਰ ਲੋਕਾਂ ਜਿਨ੍ਹਾਂ ਨੇ ਉਹਨੂੰ ਵੋਟ ਪਾਈ ਉਹ ਇਸ ਗੱਲ ਤੇ ਖੁਸ਼ ਨੇ ਕਾਰ ਪਿਛਲੇ ਸਮੇਂ ਚ ਰਫਿਊਜ਼ੀਆਂ ਨੇ ਜਰਮਨ ਦੇ ਵਿੱਚ ਫਰਾਂਸ ਦੇ ਵਿੱਚ ਬੈਲਜੀਅਮ ਦੇ ਵਿੱਚ ਇਹ ਜਿਹੇ ਹਮਲੇ ਕੀਤੇ ਤੇ ਜੀਵਨ ਇਧਰੋਂ ਇਧਰ ਕਰ ਦਰਦਾ ਪਹਿਲਾਂ ਤਾਂ ਇਹ ਦੇਸ਼ ਪਨਾਹ ਦੇਣ ਫਿਰ ਇਹ ਦੇਸ਼ ਦੇ ਵਿੱਚ ਰਹਿ ਕੇ ਬਾਲ ਬੱਚੇ ਪੈਦਾ ਕਰਕੇ ਇਹਨਾਂ ਤੇ ਹਮਲਾ ਕੀਤਾ ਜਾਵੇ ਇਹ ਵੀ ਗੱਲ ਮੂਲੋਂ ਮਾੜੀ ਹੈ ਦੂਸਰੇ ਪਾਸੇ ਜਿਹੜੇ ਇਸ ਗੱਲ ਨੂੰ ਨਿੰਦ ਰਹੇ ਨੇ ਉਹ ਕਹਿੰਦੇ ਵੀ ਕਿਹੜੇ ਬੰਦਿਆਂ ਨੇ ਇਹਨਾਂ ਦੇਸ਼ਾਂ 'ਚ ਆ ਕੇ ਤੇਰੇ ਤੇ ਹਮਲਾ ਕੀਤਾ ਸਤੰਬਰ ਲੈਣ ਦਾ ਸਭ ਤੋਂ ਵੱਡਾ ਹਮਲਾ ਸੀ ਉਹਦੇ ਵਿੱਚ ਸਭ ਤੋਂ ਵੱਡਾ ਅਟੈਕਰ ਤਾਂ ਸਾਊਦੀ ਅਰਬ 'ਚੋਂ ਆਏ ਸੀ ਕੁਝ ਈਜਿਪਟ ਦੇ ਸਨ ਤੇ ਉਹ ਸਾਊਦੀ ਅਰਬ ਨੂੰ ਤੋਂ ਬੈਨ ਨਹੀਂ ਕਰ ਰਿਹਾ ਤੇ ਉਹਨਾਂ ਦਾ ਇੱਕ ਇਹ ਤਰਕ ਹੈ ਵੀ ਦੁਨੀਆ ਦੇ ਅਮੀਰ ਦੇਸ਼ਾਂ ਦੇ ਵਿੱਚੋਂ ਤੁਸੀਂ ਦੇਸ਼ ਹੋ ਜੇ ਵਰਦੇ ਗੋਲਿਆਂ ਦੇ ਵਿੱਚੋਂ ਇਨਸਾਨੀਅਤ ਨਿਕਲ ਕੇ ਆਉਂਦੀ ਹੈ ਉਹਨਾਂ ਨੂੰ ਫਿਰ ਹੱਥ ਕਿਹਨੇ ਅੱਗੇ ਕਰਨਾ ਉਹਨਾਂ ਨੂੰ ਸਾਹਮਣਾ ਕਿਹਨੇ ਇਹਦੇ ਵਿੱਚ ਉਹ ਕਹਿੰਦਾ ਸਾਹਮਣੇ ਜ਼ਰੂਰ ਹੈ ਪਰ ਸ਼ਰੀਆ ਲਾ ਲੱਗ ਰਿਹਾ ਸਾਡੇ ਤੇ ਇੰਗਲੈਂਡ ਦੇ ਵਿੱਚ ਇਹ ਗੱਲ ਜ਼ੋਰ ਫੜ ਚੁੱਕੀ ਹੈ ਜਿੱਥੇ ਵੱਧ ਲੋਕ ਮੁਸਲਮਾਨਾਂ ਦੇ ਉਹ ਕਹਿੰਦੇ ਸ਼ਰੀਆ ਲਾ ਚਾਹੀਦਾ ਇੱਥੇ ਸ਼ਰੀਆ ਇੱਕ ਕਾਨੂੰਨ ਨਹੀਂ ਉਹ ਕਹਿੰਦਾ ਸਾਡੇ ਇੱਕ ਜੀਵਨ ਜਿਉਣ ਦੀ ਰੀਤ ਮੁਸਲਮਾਨ ਧਰਮ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਤੇ ਸ਼ਰਾਬ ਨਹੀਂ ਪੀਤੀ ਜਾਣੀ ਇੱਥੇ ਸਿਗਰਟ ਨਹੀਂ ਪੀਤੀ ਜਾਣੀ ਇੱਥੇ ਇਸਤਰੀਆਂ ਪਤਾ ਨਹੀਂ ਹੁਣ ਸ਼ਰੀਆ ਲਾ ਦੇ ਵਿੱਚ ਕੀ ਕੀ ਹੈ ਇਸ ਗੱਲ ਦੀ ਦੂਜੀ ਪੀੜ੍ਹੀ ਜਿਹੜੀ ਜੰਮੀ ਹੈ ਇੰਗਲੈਂਡ ਦੇ ਵਿੱਚ ਜਿਹੜੇ ਬਿਲਕੁਲ ਉੱਥੇ ਦੀ ਭਾਸ਼ਾ ਬੋਲਦੇ ਨੇ ਬਿਨ ਬਾਊਟ ਐਕਸੈਂਟ ਇੰਗਲਿਸ਼ ਬੋਲਦੇ ਆ ਉਹ ਕਹਿੰਦੇ ਸ਼ਰੀਆ ਲਾ ਜ਼ਰੂਰ ਹੈ ਤੀਸਰੀ ਵਿਰੋਧੀ ਜਿਹੜੇ ਕਹਿ ਰਹੇ ਨੇ ਨੌਲਨ ਟਰੰਪ ਤੇ ਉਹਦੀ ਉਹ ਖਾਂਦੇ ਵੀ ਇਹ ਬੰਦੇ ਆਉਂਦੇ ਨੇ ਪੰਜ-ਪੰਜ ਚਾਰ-ਚਾਰ ਜਵਾਕ ਨੇ ਆਉਣ ਵਾਲੇ ਪੰਜਾ ਸੱਤਾ ਸਾਲਾਂ 'ਚ ਪੰਜ-ਪੰਜ ਛੇ-ਛੇ ਹੋਰ ਇਹਨਾਂ ਨੇ ਕਰ ਦਿੰਨੇ ਸਾਡੀ ਤਾਂ ਗਿਣਤੀ ਘਟ ਗਈ ਓਬਵੀਅਸਲੀ ਕਿਸੇ ਵੀ ਮੇਜ਼ਬਾਨ ਦਾ ਇਹ ਮਨ ਹੈ ਕਿ ਯਾਰ ਮੈਂ ਪਨਾਹ ਤਾਂ ਦੇ ਦੂੰ ਕੱਲੋਂ ਅਸੀਂ ਪਨਾਹ ਦੇਣ ਵਾਲੇ 100 ਰਹਿ ਗਏ ਤੇ ਇਹ 800 ਹੋ ਗਏ ਸਾਡੀ ਤਾਂ ਘਟ ਗਣ ਤੇ ਉਹ ਸਾਡਾ ਤਾਂ ਗਲ ਫੜ ਲੈਣਗੇ ਇਹ ਲੋਕ ਤੁਹਾਡੇ ਸਾਹਮਣੇ ਆ ਗਦਾਫੀ ਦੇ ਬੋਲ ਸਾਹਮਣੇ ਨੇ ਗਦਾਫੀ ਕਹਿੰਦਾ ਤੁਸੀਂ ਕਮਲਿਆਂ ਲੜਦੇ ਕਿਉਂ ਪਹੁੰਚੋ ਯੂਰਪ ਚ ਰਿਫਿਊਜੀ ਬਣੋ ਕੁਛ ਬਣੋ ਜਵਾਕ ਪੈਦਾ ਕਰੋ ਕੱਲੋਂ ਉਹ ਘੱਟ ਗਿਣਤੀ ਚ ਹੋਗੇ ਤੁਹਾਡੀ ਵਸੋਂ ਹੋ ਗਈ ਕੱਲੋਂ ਤੁਹਾਡੀ ਵਸੋਂ ਹੋ ਗਈ ਤੁਸੀਂ ਪੋਲੀਟੀਕਲ ਸਿਸਟਮ ਚ ਆਓ ਐਮਐਲਏ ਐਮਪੀ ਬਣੋ ਤੁਸੀਂ ਉੱਪਰਲੀਆ ਸਫਾ ਚ ਬੈਠੋਗੇ ਤੁਸੀਂ ਕੰਟਰੋਲ ਕਰੋ ਹੁਣ ਕੈਨੇਡਾ ਬਿਲਕੁਲ ਰਿਫਿਊਜੀਆ ਨੂੰ ਲੈ ਰਿਹਾ ਇਹ ਵੋਟਾਂ ਦਾ ਰੇਡ ਕਾ ਵੀ ਲਾ ਲਓ ਇਨਸਾਨੀਅਤ ਦੇ ਤੌਰ ਤੇ ਵੀ ਅਲੰਬਰਦਾਰ ਦੇਸ਼ ਆ ਇਹ ਪਰ ਜੇ ਤੁਸੀਂ ਇਹਨੂੰ ਵੇਖੋ ਆਉਣ ਵਾਲੇ 15 ਸਾਲਾਂ ਚ ਕਿਹੋ ਜੀ ਗੱਲ ਹੋਊਗੀ ਦੇਖੋ ਕਿਸੇ ਵੀ ਦੇਸ਼ ਚ ਕੋਈ ਆ ਸਕਦਾ ਸਿੱਖ ਆ ਜਾਣ ਹਿੰਦੂ ਆ ਜਾਣ ਮੁਸਲਮਾਨ ਐਸਾਈ ਆ ਜਾਣ ਪਰ ਜਿਹੜੇ ਦੇਸ਼ ਚ ਆਪਾਂ ਰਹਿਣਾ ਆ ਕੇ ਜੇ ਉਸ ਦੇਸ਼ ਦੇ ਕਾਇਦੇ ਕਾਨੂੰਨ ਨੂੰ ਅਸੀਂ ਬਦਲਣ ਦੀ ਗੱਲ ਕਰਦੇ ਆਂ ਫੇਰ ਗੱਲ ਮੂਲੋਂ ਮਾੜੀ ਜਾਂ ਜਿਹੜੇ ਦੇਸ਼ ਚ ਆ ਕੇ ਅਸੀਂ ਹਮਲਾ ਕਰਦੇ ਆਂ ਉਹ ਗੱਲ ਮੂਲੋਂ ਮਾੜੀ ਹੁਣ ਇਸ ਗੱਲ ਨੂੰ ਸਿੱਖਾ ਤੇ ਵੀ ਲਾਇਆ ਜਾ ਸਕਦਾ ਵੀ ਸਿੱਖਾ ਕੇ ਪਿਛਲੇ ਸਮੇਂ ਦੇ ਜਿਹੜਾ ਪੰਜਾਬ ਚ ਕਰਦੇ ਆ ਉਹੀ ਇੱਥੇ ਕੱਟ ਕਰਦੇ ਆ ਉਸ ਤਰ੍ਹਾਂ ਹੀ ਨਗਰ ਕੀਰਤਨ ਕੱਢਦੇ ਆ ਉਸ ਤਰ੍ਹਾਂ ਹੀ ਇਹ ਗੱਤਕੇ ਖੇលਦੇ ਆ ਉਸ ਤਰ੍ਹਾਂ ਹੀ ਇਹ ਸਾਰਾ ਕੁਝ ਕਰੀ ਫਿਰਦਾ ਹੈ ਦਸਤਾਰਾ ਮੰਨ ਕੇ ਮੋਟਰਸਾਈਕਲ ਚਲਾਈ ਫਿਰਦਾ ਦੇਖੋ ਟ੍ਰੈਡੀਸ਼ਨ ਰੱਖਣਾ ਸੱਭਿਆਚਾਰ ਰੱਖਣਾ ਇੱਕ ਗੱਲ ਹੈ ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਇੱਥੇ ਸ਼ਰੀਆ ਲਾ ਲਾਉਣਾ ਇੰਗਲੈਂਡ ਦੇ ਵਿੱਚ ਇਸ ਗੱਲ ਤੋਂ ਲੋਕ ਵੈਸਟ ਦੇ ਖਫਾ ਹੋਗੇ ਡੋਨਲਡ 트ੰਪ ਨੇ ਉਹ ਉਹਦੀ ਪਤਾ ਹੀ ਸੀ ਉਹਨੇ ਜਿੱਤਣ ਤੋਂ ਬਾਅਦ ਉਹਨੇ ਪਹਿਲਾ ਕਲੀਅਰ ਕੀਤਾ ਸੀ ਵੀ ਮੈਂ ਬੰਦੇ ਬੰਦ ਕਰ ਦੇਣਾ ਜਿਹੜੇ ਦੇਸ਼ਾਂ ਚੋਂ ਟੈਰਰਿਸਟ ਆਉਂਦੇ ਨੇ ਕੀ ਹੁਣ ਉਹਨਾਂ ਦੇਸ਼ਾਂ ਦੇ ਵਿੱਚੋਂ ਕੋਈ ਟੈਰਰਿਸਟ ਆ ਕੇ ਉਹਨੇ ਅਮਰੀਕਾ ਦੀ ਧਰਤੀ ਤੇ ਹਮਲਾ ਕੀਤਾ ਜਿਹੜੇ ਦੇਸ਼ ਗਿਣ ਰਹੇ ਨੋ ਸੰਭਰ ਲਾਇਆ ਉਹਨ ਸਾਰੇ ਅਟੈਕਰ ਜਿਆਦਾ ਸਾਊਦੀ ਅਰਬ ਦੇ ਸੀ ਇਸ ਗੱਲੋਂ ਡੋਨਲਡ 트ੰਪ ਜਿਹੜਾ ਉਹ ਝੂਠਾ ਪੈ ਰਿਹਾ ਔਰ ਅਲ ਵਰਗੀਆਂ ਤੇ ਆਈਐਸਐਸ ਵਰਗੀਆਂ ਜਥੇਬੰਦੀਆਂ ਨੇ ਹੁਣ ਉਹ ਆ ਰੋਲ ਕਰ ਦੇਣਾ ਵੀ ਆ ਦੇਖੋ ਲੋਕੋ ਇਹ ਮੁਸਲਮਾਨਾਂ ਦੇ ਖਿਲਾਫ ਨੇ ਮੁਸਲਮਾਨਾਂ ਦੇ ਵੈਸਟ ਖਿਲਾਫ ਆ ਤੁਸੀਂ ਸਾਡੀ ਮੰਨ ਲਓ ਇਹਨਾਂ ਦੇ ਵਿਰੁੱਧ ਜਿਹਹਾਦ ਛੇੜੋ ਆਮ ਲੋਕ ਉਹਨਾਂ ਦੀ رائے ਨਾਲ ਜੁੜ ਰਿਹਾ ਵੀ ਹਾਂ ਇਹ ਵਾਕਈ ਸਾਡੇ ਨਾਲ ਇਉਂ ਹੋ ਰਿਹਾ ਹੁਣ ਇਹ ਇਹ ਕਹਿ ਰਹੇ ਨੇ ਪ੍ਰਾਈਵੇਸੀ ਕਹਿ ਰਿਹਾ ਵੀ ਮੁਸਲਮਾਨਾਂ ਦੇ ਖਿਲਾਫ ਨਹੀਂ ਹੈ ਇਹ ਸਾਡਾ ਬੈਂਡ ਫਿਰ ਉਹ ਦੇਸ਼ਾਂ 'ਚ ਤਾਂ ਰਹੇ ਨੇ ਜਿਹੜੇ ਤੂੰ ਦੇਸ਼ ਬੰਦ ਕਰ ਰਿਹਾ ਆਪਣੀ ਆਪਣੇ ਪਾਸਿਓਂ ਸਾਰੀਆਂ ਚੀਜ਼ਾਂ ਨੂੰ ਸਹੀ ਕਰਕੇ ਕਰ ਰਹੇ ਨੇ ਇੱਕ ਗੱਲ ਸਭ ਤੋਂ ਵੱਡੀ ਕਿ ਅਮੀਰ ਦੇਸ਼ਾਂ ਨੂੰ ਗਰੀਬ ਦੀ ਬਾਹ ਫੜਨੀ ਪੈਣੀ ਜਿਹੜਾ ਉੱਜੜ ਰਿਹਾ ਪਰ ਜੇ ਆ ਕੇ ਗਰੀਬ ਬੰਦਾ ਗੋਲਿਆਂ 'ਚੋਂ ਵਰਕੇ ਆ ਕੇ ਇੱਥੇ ਗੋਰਿਆਂ-ਗੋਰੀਆਂ ਦੇ ਨਾਲ ਪੜਦਾ ਬੱਚਾ ਇੱਥੇ ਪੈਦਾ ਹੁੰਦਾ ਸਾਰਾ ਵੈਸਟਰਨਾਈਜ਼ ਕਲਚਰ 'ਚ ਪੜ ਕੇ ਆਪਣਾ ਧਰਮ ਰੱਖਦਾ ਔਰ ਧਰਮ ਰੱਖੇ ਮਲਟੀ ਕਮਿਊਨਿਟੀ ਆ ਇੱਥੇ ਸਾਰੇ ਮਲਟੀ ਫੇਥ ਲੋਕ ਰਹਿੰਦੇ ਆ ਪਰ ਜੇ ਮੇਰਾ ਮੰਨ ਇਹ ਆ ਕਿ ਮੈਂ ਲਾ ਆਪਣਾ ਇੱਥੇ ਅਵੈਂਚੂਰਲੀ ਲਾਉਣਾ ਹੈ ਫੇਰ ਵੈਸਟਰਨ ਵਰਲਡ ਵੀ ਉਸ ਗੱਲ ਨੂੰ ਸੋਚੂ ਵੀ ਅਸੀਂ ਸੱਦਣਾ ਜਾਂ ਨਹੀਂ ਸੱਦਣਾ ਇੰਗਲੈਂਡ 'ਚ ਬਹੁਤ ਗੱਲ ਜ਼ੋਰ ਫੜ ਚੁੱਕੀ ਹੈ ਤੁਸੀਂ ਮਾੜਾ ਜਿਹਾ YouTube ਤੇ ਪਾਇਓ ਵੀ ਸ਼ਰੀਆ ਲਾ ਦੀ ਕਿੰਨੀ ਡਿਮਾਂਡ ਹੋ ਰਹੀ ਤਹਜ ਜ ਸਮਾ ਹੂ આજ ਤੋਂ 10-15 ਸਾਲ 20 ਸਾਲ ਨੂੰ ਪਰ ਹੁਣ ਉੱਥੇ ਲੋਕ ਉਜੜ ਰਹੇ ਨੇ ਜਿਹੜੇ ਉਹਨਾਂ ਦੀ ਵੀ ਮਦਦ ਦੀ ਲੋੜ ਹੈ ਇਹ ਬੈਨ ਆ ਜਿਹੜਾ ਇਹਨੂੰ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਕਿਹੋ ਜਿਹਾ ਤੁਹਾਨੂੰ ਇਹ ਲੱਗਦਾ ਹੈ ਇਹ ਚ ਡਿਊਲ ਕਲੀਅਰ ਕਰ ਲਿਓ ਵੀ ਜਿਹੜੇ ਡਿਊਲ ਸਿਟੀਜ਼ਨ ਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਇਹਨਾਂ ਦੇਸ਼ਾਂ ਦੀ ਉਹਨਾਂ ਕੋ ਸਿਟੀਜ਼ਨ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਕੋਈ ਪਾਬੰਦੀ ਨਹੀਂ ਪਹਿਲਾਂ ਤਾਂ ਗ੍ਰੀਨ ਕਾਰਡ ਵੀ ਬੰਦ ਕਰਤੇ ਸੀ ਹੁਣ ਗ੍ਰੀਨ ਕਾਰਡ ਹੋਲਡਰ ਇਹਨਾਂ ਦੇਸ਼ਾਂ 'ਚ ਵਾਪਸ ਆ ਸਕਦੇ ਨੇ ਮੇਰੇ ਖਿਆਲ ਵੈਨ ਦੇ ਨਾਲੋਂ ਜੇ ਅਦਰ ਵੇ ਅਰਾਊਂਡ ਇਹ ਗੱਲ ਕਰ ਦਿੰਦਾ ਇਹਦੇ ਕੋਲ ਆਪਣੀਆਂ ਪਾਵਰ ਸੀ ਉਹ ਕਹਿ ਦਿੰਦਾ ਵੀ ਸਕੂਟਨੇਾਈਜ਼ ਇੰਨਾ ਟਾਈਟ ਕਰ ਦੋ ਬੰਦਿਆਂ ਨੂੰ ਇਹ ਦੇਸ਼ਾਂ 'ਚ ਵੀਜ਼ਾ ਨਹੀਂ ਦੇਣਾ ਖਤਮ ਕਹਾਣੀ ਨਾ ਰੋਲਾ ਪੈਣਾ ਸੀ ਨਾ ਕੋਈ ਗੱਲ ਹੋਣੀ ਸੀ ਨਾ ਕੋਈ ਲੋਕ ਅਪਲਾਈ ਕਰੀ ਜਾਂਦੇ ਰਿਫਿਊਜ਼ ਕਰੀ ਜਾਂਦੇ ਖਤਮ ਅੰਬੈਸੀ ਨੂੰ ਕੌਣ ਕੌਂਸੂਲੇਟ ਨੂੰ ਕੌਣ ਚੈਲੰਜ ਕਰ ਸਕਦਾ ਕੋਈ ਨਹੀਂ ਜੇ ਅੰਦਰ ਇਹ ਚੀਜ਼ਾਂ ਕਰ ਦਿੰਦਾ ਪਰ ਉਹਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਬੈਨ ਕਰੂੰ ਉਹਨੇ ਵੈਨ ਕਰ ਦਿੱਤੇ ਤੁਹਾਡੇ ਥਾਟ 1843 247 1550 ਗੁਰਚਨ ਕੁਲਾਰ ਜੀ ਲਾਈਨ ਨੰਬਰ 2 ਸਰ ਸਿਗਾ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਧੰਨਵਾਦ ਸਗੋਂ ਉਸ ਦੇਸ਼ 'ਚ ਰਹਿੰਦੇ ਹੋ ਤੁਸੀਂ ਤੁਸੀਂ ਇਸ ਹਾਲਾਤ ਨੂੰ ਬਹੁਤ ਵਧੀਆ ਤਰੀਕੇ ਨਾਲ ਵੇਖੋਗੇ ਦੱਸੋ ਹੁਣ ਤੁਸੀਂ ਕਿਸ ਤਰ੍ਹਾਂ ਸੋਚਦੇ ਨੇ ਇਹਦੇ ਬਾਰੇ ਜਿਸ ਤਰ੍ਹਾਂ ਉਹਨਾਂ ਦਾ ਥਿੰਕ ਟੈਂਕ ਆ ਐਂਡ ਆਫ ਦਾ ਡੇ ਜਿਹੜਾ ਉਹ ਸੋਚ ਰਿਹਾ ਕਿ ਇਹਨਾਂ ਦਾ ਵਾਅਦਾ ਹੋ ਰਿਹਾ ਆ ਉਹ ਆਪਣੇ ਹਿਸਾਬ ਨਾਲ ਸਹੀ ਆ ਮੈਂ ਕਹਿੰਨਾ ਉਹ ਆਪਣੇ ਹਿਸਾਬ ਨਾਲ ਠੀਕ ਚੱਲ ਰਿਹਾ ਆ ਪਰ ਇਹ ਇਹ ਕਿ ਮੁਲਕ ਉਹਨਾਂ ਦਾ ਆ ਲਾਅ ਉਹਨਾਂ ਦਾ ਹੀ ਫਾਲੋ ਹੋਣਾ ਚਾਹੀਦਾ ਨਾ ਕਿ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਕਹੀਏ ਕਿ ਸਾਡੀ ਇੱਥੇ ਮਰਿਆਦਾ ਕਾਇਮ ਕਰੋ ਜੀ ਨਹੀਂ ਜਾਂ ਉਹ ਮੁਸਲਮਾਨ ਕਹਿੰਣ ਕਿ ਸਾਡਾ ਸ਼ਰੀਆ ਲਾਅ ਲਾਗੂ ਕਰੋ ਇਹ ਗੱਲ ਗਲਤ ਆ ਵੈਸੇ ਮੈਂ ਇਹਨਾਂ ਦੇ ਨਾਲ ਜਿੱਦਾਂ ਗੋਰਿਆਂ ਦੇ ਕਨਾਂਜ ਵੀ ਜਾਨਾ ਆ ਇਹਨਾਂ ਨਾਲ ਗੱਲਬਾਤ ਵੀ ਹੁੰਦੀ ਆ ਤੇ ਜਦੋਂ ਜਿਹੜਾ ਜ਼ਿਆਦਾ ਰੇਸਿਸ ਗੋਰਾ ਹੁੰਦਾ ਨਾ ਉਹ ਪਹਿਲਾਂ ਪੁੱਛਦਾ ਤੇਰਾ ਮੁਲਕ ਕਿਹੜਾ ਆ ਜਦੋਂ ਮੈਂ ਕਹਿ ਦੇ ਕਹਿ ਦਿੰਦਾ ਮੇਰਾ ਮੁਲਕ ਇੰਡੀਆ ਆ ਫਿਰ ਫੇ ਖੁੱਲ ਤੇ ਬਹੁਤ ਜ਼ਿਆਦਾ ਆ ਨਹੀਂ ਹੁੰਦੇ ਕਾਨੂੰਨ ਤੋਂ ਡਰਦੇ ਆ ਤੇ ਇਹ ਨਹੀਂ ਲਾਉਣੀ ਲੱਗ ਹੋਣਾ ਚਾਹੀਦਾ ਇਹ ਗਲਤ ਆ ਕਿਉਂਕਿ ਕੰਟਰੀ ਤੋਂ ਨਾ ਆ ਨਾ ਉਹਨਾਂ ਦੇ ਉੱਤੇ ਹੁਣ ਯੂਰਪ ਦੇ ਵਿੱਚ ਜੇ ਦੇਖਿਆ ਜਾਵੇ ਤੇ ਹਾਲੈਂਡ ਆ ਜਾਂ ਹੋਰ ਚਾਰ ਪੰਜ ਕੰਟਰੀਆਂ ਉੱਥੇ ਪਿਛੇ ਜਾ ਰਿਪੋਰਟਾਂ ਆਈਆਂ ਸੀ ਬਹੁਤ ਜ਼ਿਆਦੀ ਸੰਖਿਆ ਇਹਨਾਂ ਦੀ ਵਧ ਰਹੀ ਆ ਕਿਉਂਕਿ ਬੱਚੇ ਪੈਦਾ ਕਰ ਕਰਕੇ ਇਸ ਧਰਮ ਦੇ ਵਿੱਚ ਜਿਹੜੇ ਬੱਚੇ ਨੇ ਆਉਣਾ ਪੈਦਾ ਹੋਣਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਗੈਰ ਕੁਦਰਤੀ ਸਮਝਦੇ ਨੇ ਪਰ ਇਹ ਹੁਣ ਸਮਝ ਨਹੀਂ ਆਉਂਦੀ ਵੀ ਇਹ ਲੋਕ ਗਰੀਬੀ 'ਚ ਜਿੱਥੇ ਗੋਲੇ ਵੱਧ ਰਹੇ ਨੇ ਉਹਨਾਂ ਨੂੰ ਕੋਈ ਸਾਂਭੇ ਜੇ ਉਹ ਸਾਂਭੇ ਤਾਂ ਕੌਣ ਸਾਂਭੇ ਪੰਪ ਦੇ ਬੈਨ ਨੂੰ ਕੀ ਸੋਚ ਰਹੇ ਹੋ ਤੁਸੀਂ ਉਹਦਾ ਬੈਨ ਲਾਉਣਾ ਠੀਕ ਹੈ ਨਹੀਂ ਉਹਨੇ ਬੈਨ ਜਿਹੜਾ ਟੈਂਪਰਰੀ ਲਾਇਆ ਵੈਸੇ ਬੈਨ ਉਹ ਆ ਇਸ ਕਰਕੇ ਉਹਨੇ ਉਹ ਵਾਅਦਾ ਪੂਰਾ ਕਰਨਾ ਸੀਗਾ ਔਰ ਉਹ ਇੱਕ ਬਹੁਤ ਕਟੜ ਹੈ ਉਹਨੇ ਕੁਝ ਹੱਦ ਤੱਕ ਉਹਦਾ ਬੈਨ ਸਹੀ ਵੀ ਆ ਮੈਂ ਉਹਦੇ ਬੈਨ ਨੂੰ ਬਹੁਤ ਜ਼ਿਆਦਾ ਗਲਤ ਨਹੀਂ ਮੰਨਦਾ ਕਿਉਂਕਿ ਜੇ ਇਹ ਸਮੇਂ ਦੀ ਮੰਗ ਹੈ ਨਾ ਹੁਣ ਕਿ ਕਿਸ ਤਰ੍ਹਾਂ ਫੜ ਲੋਗੇ ਬੱਚੇ ਇੱਥੇ ਹੀ ਫਾਇਦਾ ਹੋ ਕੇ ਇੱਥੇ ਜੰਮ ਕੇ ਇੱਥੇ ਦੇ ਕਲਚਰ ਦੇ ਵਿੱਚ ਜਦੋਂ ਗੰਨਾ ਲੈ ਕੇ ਵੜ ਜਾਂਦੇ ਪੱਬ ਦੇ ਵਿੱਚ ਜਵਾਬ ਦੇਣਾ ਲੋਕਾਂ ਨੂੰ ਉਹਨਾਂ ਨੇ ਵੀ ਤਾਂ ਜਵਾਬ ਦੇਣਾ ਲੋਕਾਂ ਨੂੰ ਹੁਣ ਸ਼ਾਇਦ ਤੁਹਾਡੇ ਵੀ ਫਰੈਂਡ ਸਰਕਲ ਦੇ ਵਿੱਚ ਜਰਮਨ ਦੇ ਵਿੱਚ ਲੋਕੀ ਹੋਣਗੇ ਇੰਨੀ ਜਿਆਦੀ ਭੀੜ ਭੜਕਾ ਜਾਂ ਲੋਕੀ ਡਰਦੇ ਆ ਸਾਡੇ ਵੀ ਹੈਗੇ ਆ ਫੈਮਲੀ ਉਹ ਵੀ ਦੱਸਦੇ ਆ ਕਿ ਲੋਕ ਪੀੜ ਵਾਲੇ ਥਾਂ ਤੋਂ ਜਾਣ ਤੋਂ ਡਰਦੇ ਆ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਥੈਂਕ ਯੂ ਕਿਉਂਕਿ ਉਹਨੇ ਬਹੁਤ ਵੱਡੀ ਗਲਤੀ ਕੀਤੀ ਜਿਹੜੇ ਉਹਨਾਂ ਨੇ ਇੰਨੇ ਜ਼ਿਆਦੇ ਰਿਫਿਊਜੀ ਲਏ ਆ ਥੈਂਕ ਯੂ ਹਰਪਾਲ ਕੰਗ ਜੀ ਲਾਈਨ ਨੰਬਰ 3 ਮੰਗੜ ਸਾਹਿਬ ਲਾਈਨ ਨੰਬਰ 4 ਸ ਸਿੰਘ ਜੀ ਲਾਈਨ ਨੰਬਰ ਸਤਿ ਸ੍ਰੀ ਅਕਾਲ ਜੀ ਸਸੀ ਕਾਲ ਜੀ ਜਨੂ ਸਾਹਿਬ ਦੇਖੋ ਹੁਣ ਜਿਹੜੀ ਰਾਂਪਰ ਦੀ ਗੱਲ ਆ ਨਾ ਹੂੰ ਜਦੋਂ ਹਾਂ ਰਾਂਪਰ ਇਹ ਵਾਦਾ ਕੀਤਾ ਪੂਰਾ ਕਰਨਾ ਆ ਬੰਦੇ ਜੀ ਪਹਿਲਾਂ ਗੱਲ ਕਰਦੇ ਪਾਣੀ ਵਾਧੂ ਦੇਵਾਂਗੇ ਨਹੀਂ ਦੇਣਾ ਠੀਕ ਨਹੀਂ ਤੇ ਉਹਦੇ ਕੋਲ ਬੰਦੇ ਲੋੜਦੇ ਮਗਾਲੂਗਾ ਲੋੜਨੇ ਤਾਂ ਕਿਉਂ ਨਾ ਵਾਧੂ ਬੰਦੇ ਅਸੀਂ ਪਾਣੀ ਹੈਗੇ ਪਾਣੀ ਨਹੀਂ ਦੇਣਾ ਸਾਡਾ ਪਾਣੀ ਲੋੜਿਆ ਬਾਅਦ ਵਿੱਚ ਵਾਧੂ ਦੇਵਾਂਗੇ ਇਸ ਕਰਕੇ ਹਰ ਇੱਕ ਬੰਦੇ ਦਾ ਆਪਣਾ ਹੱਕ ਆ ਬਾਕੀ ਜੇ ਅਸੀਂ ਚੰਗੀ ਤਰ੍ਹਾਂ ਰਹਾਂਗੇ ਤਾਂ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਕਿ ਗਲਤੀ ਇਹ ਗੱਲਾਂ ਕਰੇ ਜਦੋਂ ਉਹ ਗਲਤ ਗੱਲ ਕਰਨੇ ਫਿਰ ਸਾਡੇ ਤੇ ਵੀ ਤੋਂ ਸ਼ੱਕ ਕਰਦਾ ਆ ਜੇ ਹੋਰ ਕੋਈ ਸ਼ੱਕ ਗਲਤ ਕੰਮ ਕਰੇ ਸਾਨੂੰ ਸ਼ੱਕ ਸ਼ੱਕ ਉਹ ਮਾਰ ਨਹੀਂ ਕਰ ਰਿਹਾ ਕੁਛ ਨਾ ਕੁਛ ਕਰੂਗਾ ਥੋੜੀ ਸਖਾਈ ਕਰ ਲੋ ਬੰਦੇ ਹੀ ਲੋੜ ਰਹਿਣੀ ਬੰਦੇ ਆਉਂਦੇ ਰਹਿਣੇ ਆ ਕੋਈ ਤਰੀਕਾ ਹੋਰ ਆ ਬੰਦੇ ਦਾ ਇਹ ਜ਼ਰੂਰੀ ਹੈ ਕਿ ਬੰਦੇ ਉਹਨੇ ਬੰਦ ਕਰੇ ਨਾ 10 ਵੀ ਲੱਖ ਬੰਦਾਂ ਨੂੰ ਲੈਣਾ ਪਹਿਲਾਂ ਹੀ ਪੈਣਾ ਹੈ ਥੈਂਕ ਯੂ ਜੀਰ ਸਾਹਿਬ सिलिकॉन वैली ने हुणे गल्ला शुरू कर देती हां वो कहंदे 70% ਸਾਡੇ ਟੈਕਨੀਸ਼ੀਅਨ ਇੰਜੀਨੀਅਰਸ ਨੇ ਜਿਹੜੇ ਉਹ ਵੀਜ਼ੇ ਤੇ ਆਉਂਦੇ ਨੇ 4-4 ਸਾਲਾਂ ਦੇ ਅਸੀਂ ਤਾਂ ਮੰਨ ਜ ਜਾਵਾਂਗੇ ਪਰ ਉਹ ਇਹ ਟੈਂਪਰੇਰੀ ਬੈਨ ਲਾਇਆ ਪਰ ਮੈਨੂੰ ਨਹੀਂ ਲੱਗਦਾ ਇਹ ਬੈਨ ਉਠੂਆ ਮੰਨ ਲਿਓ ਗੱਲ ਉਹਨੇ ਦੇਖਣੀ ਹੈ ਇਹ ਤਪਸ਼ ਕਿੰਨੀ ਕਰ ਪਰ ਇੱਕ ਗੱਲ ਜੇ ਹੁਣ ਇੱਕ ਗੱਲ ਦੇ ਆਪਾਂ ਧਾਰਨੀਆਂ ਪੰਜਾਬ ਚੋਂ ਵੀ ਸਾਨੂੰ ਕਹਿ ਕੇ ਵੋਟਾਂ ਲੈ ਕੇ ਰਾਜਨੀਤਿਕ ਬੰਦੇ ਮੋੜ ਜਾਂਦੇ ਅਸੀਂ ਕਹਿੰਦੇ ਆ ਨਾ ਬਈ ਆ ਮੁਕਰ ਗਿਆ ਮੁਕਰ ਗਿਆ ਮੁਕਰ ਗਿਆ ਹੁਣ ਜੇ ਹੁਣ 트럼ਪ ਨੇ ਇਹ ਕਹਿ ਕੇ ਵੋਟਾਂ ਲਈਆਂ ਉਹ ਮੁਕਰਦਾ ਫਿਰ 트럼ਪ ਲਈ ਵੀ ਮਾੜੀ ਗੱਲ ਫਿਰ ਡਬਲ ਸਟੈਂਡ ਨਹੀਂ ਸਾਡਾ ਚਾਹੀਦਾ ਫਿਰ ਜੇ ਉਹਨੇ ਵਾਦਾ ਕੀਤਾ ਉਹ ਵਾਦਾ ਆਪਣਾ ਪੂਰਾ ਕਰ ਰਿਹਾ ਇਹਦੇ ਵਿੱਚ ਗਲਤ ਕੁਝ ਨਹੀਂ ਹੈ ਜੈਸੋ ਗਰੀਬ ਜਿਹੜੇ ਬੰਦੇ ਆ ਉਹਨਾਂ ਨੂੰ ਮਦਦ ਚਾਹੀਦੀ ਹੈ ਪਰ ਜੇ ਹੁਣ ਸੀਰੀਆ ਨੂੰ ਦੇ ਵਿੱਚੋਂ ਉਜੜ ਰਹੇ ਬੰਦਿਆਂ ਨੂੰ ਕੋਈ ਮੁਸਲਮ ਕੰਟਰੀ ਲੈ ਦੇ ਵਿੱਚ ਤੇ ਤੁਰਕੀ ਦਾ ਨਾਲ ਦੇ ਸਾਊਦੀ ਅਰਬ ਦਬਈ ਜਿੱਥੇ ਇੱਕ ਇੱਕ ਰਾਤ ਦਾ 25000 ڈالر ਬਰਜ ਖਲੀਫਾ ਦੇ ਵਿੱਚ ਉਹ ਲੋਕ ਲੈ ਰਹੇ ਨੇ ਜਿੱਥੇ ਅਰਬਾਂ ਦੀ ਪ੍ਰਾਪਰਟੀ ਆ ਪਾਣੀ ਸਮੁੰਦਰ ਦੇ ਵਿੱਚ ਭਰ ਕੇ ਉੱਥੇ ਲੋਟਾਂ ਕੱਟ ਕੇ ਉਹਦੇ ਵਿੱਚ ਲੋਕ ਲੈ ਰਹੇ ਸੀ ਤੇ ਉਹ ਇਹ ਰਿਸ਼ੂ ਜੀ ਕਿਉਂ ਨਹੀਂ 20-50000 ਲੈ ਸਕਦੇ ਬਈ ਉਹਨਾਂ ਦਾ ਦੇਸ਼ ਹੈ ਉਹ ਉਹਨਾਂ ਦੇ ਧਰਮ ਦੇ ਲੋਕ ਨੇ ਆਪਣੇ ਧਰਮ ਦੇ ਲੋਕਾਂ ਤੇ ਪਿਆਰ ਹੈ ਵੇ ਵੈਸਟਰਨ ਵਰਲਡ ਦੇ ਉਹਨਾਂ ਨੂੰ ਲੱਗੇ ਤੇ ਵੈਸਟਰਨ ਵਰਲਡ ਤੇ ਜਦ ਹਮਲਾ ਹੁੰਦਾ ਹੁਣ ਕੀ ਹੋਇਆ ਨਾਈਸ ਦੇ ਵਿੱਚ ਫਰਾਂਸ ਦੇ ਵਿੱਚ ਲੈ ਕੇ ਟਰੱਕ ਜਿਹੜਾ ਉਹ ਬੰਦਿਆਂ ਤੇ ਚੜਤਾ ਸੀ ਇਉਂ ਹੀ ਹੁਣ ਬਰਲਿਨ ਦੇ ਵਿੱਚ ਹੋਇਆ 크리스마ਸ ਦੇ ਦਿਨਾਂ 'ਚ ਲਾਟੂ ਲਾ ਕੇ ਲੋਕ ਖੁਸ਼ ਹੋਣ ਦੇ ਟਰੱਕ ਚੜਤਾ ਉਹ ਲੋਕ ਕਰਨ ਕੀ 14 ਸਾਲ ਦਾ ਜਵਾਕ ਹੈ ਜਿਹੜਾ ਉਹ ਵੈਸਟ ਲਈ ਫਿਰਦਾ ਬੰਬ ਦੀ ਤੇ ਘਰੋਂ ਬਣਾ ਕੇ ਤੇ ਗੁਲਮੇਖਾਂ ਭਰੀ ਫਿਰਦਾ ਉਹ ਪੁਲਿਸ ਨੇ ਫੜਿਆ ਸਮਝ ਨਹੀਂ ਆਉਂਦੀ ਕਿ ਕਿੱਥੋਂ ਸ਼ੁਰੂ ਹੋਵੇ ਤੇ ਕਿੱਥੇ ਮੁੱਕੇ ਵਪਾਰਕ ਸੰਮੇਲ ਸੇਮ ਟੋਕਨ ਤੇ ਜਿਹੜਾ ਕੰਮ ਹੋ ਰਿਹਾ ਅ ਅਬੋਰਸ਼ਨ ਕਲੀਨਿਕ ਦੀ ਫੰਡਿੰਗ ਹੈ ਜਿਹੜੀ ਉਹ ਬੰਦ ਕਰ ਦਿੱਤੀ ਤੁਹਾਨੂੰ ਦੱਸਿਆ ਕਿ ਰਾਸ਼ਟਰਪਤੀ ਉਪਰਾਸ਼ਟਰਪਤੀ ਪੈਂਸ ਅਬੋਰਸ਼ਨ ਦੇ ਬਹੁਤ ਖਿਲਾਫ ਹੈ ਸੋ ਅਨਦਰ ਜੇ ਇਹਨੂੰ ਅਦਰ ਵੇ ਅਰਾਊਂਡ ਜੇ ਕਹਿਣਾ ਹੋਵੇ ਵੀ 크ਰਿਸਚੀਅਨ ਦੀ ਜਿਹੜੀ ਹੈ ਉਹ ਗਣਤੀ ਵਧਣੀ ਚਾਹੀਦੀ ਹੁਣ ਗੱਲ ਕੀ ਹੈ ਲੋਕ ਬਾਹਰਵੇਂ ਵੀ ਕੀ ਕਰਨ ਇੱਥੇ ਤਾਂ ਪਹਿਲਾਂ ਵਿਆਹ ਨਹੀਂ ਕਰਾਉਂਦੇ ਜੇ ਕੋਈ ਵਿਆਹ ਕਰਾ ਲੋਂਦਾ ਬੱਚੇ ਨਹੀਂ ਪੈਦਾ ਕਰਦਾ ਤੇ ਹੁਣ ਜਿਹੜੇ ਬੱਚੇ ਪੈਦਾ ਕਰਦੇ ਉਹਨਾਂ ਤੇ ਦੋਸ਼ ਤਾਂ ਹੈ ਨਹੀਂ ਨਾ ਕਿਸੇ ਦੇ ਇਹ ਵੱਡੀ ਜਿਹੜੀ ਪ੍ਰੋਬਲਮ ਪਰ ਇਸ ਦਾ ਸਥਾਈ ਔਰ ਅਸਥਾਈ ਹੱਲ ਕੀ ਹੈ ਅਮਨਦੀਪ ਸਿੰਘ ਲਾਈਨ ਨੰਬਰ 2 ਹਲੋ ਹਾਂਜੀ ਵੀ ਜੀ ਆਪਸੀ ਗੱਲ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਆ ਬੋਲਣਾ ਸੀ ਇੱਕ ਤਾਂ ਥੋੜਾ ਜਿਹਾ ਪਾਣੀ ਦੇ ਮਸਲੇ ਬੋਲ ਸਕਦੇ ਹਾਂਜੀ ਜੀ ਮੈਂ ਮੈਂ ਪੋਲਟਿਕਸ ਬਹੁਤ ਮਤਲਬ ਪੜਦਾ ਜੀ ਬਹੁਤ ਦੇਖਿਆ ਕਿ ਉਹਨਾਂ ਪੰਜਾਬ ਦੇ ਚਾਹੇ ਕਾਲੀ ਜੇ ਕਾਂਗਰਸ ਚਾਹੇ ਆਮ ਆਦਮੀ ਹੋਵੇ ਉਹਨਾਂ ਨੂੰ ਕਿਸੇ ਨੂੰ ਵੀ ਪੰਜਾਬ ਦੇ ਹਿੱਤ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਬਸ ਵੋਟਾਂ ਜਾਂਦੇ ਨੇ ਤੇ ਆਪਾਂ ਐਂ ਹੀ ਕਰ ਸਕਦੇ ਆ ਕਿ ਜੇ ਸਾਰੇ ਲੋਕ ਇਕੱਠੇ ਹੋ ਜਾਣ ਤੇ ਉਹਨਾਂ ਨੂੰ ਉਹਨਾਂ ਦਾ ਫਾਇਦਾ ਦੱਸਣ ਕਿ ਜੇ ਤੁਸੀਂ ਪੰਜਾਬ ਦਾ ਫਾਇਦਾ ਸੋਚੋਗੇ ਅਸੀਂ ਥੋੜਾ ਫਾਇਦਾ ਸੋਚਾਂਗੇ ਤਾਂ ਹੀ ਉਹ ਕੁਝ ਕਰਨਗੇ ਹੁੰਦੇ ਆ ਕਿ ਆਪਾਂ ਸਾਨੂੰ ਲੋਕਾਂ ਨੂੰ ਉਹਨਾਂ ਦਾ ਫਾਇਦਾ ਦੱਸ ਕੇ ਵੋਟ ਲੈਂਦੇ ਉਹਨਾਂ ਕੋਲ ਅਗਲੀ ਗੱਲਬਾਤ ਹੈ ਜੀ 트럼ਪ ਬਾਰੇ ਅਗਲੀ ਗੱਲਬਾਤ ਬਾਰੇ ਜੀ 트럼ਪ ਬਾਰੇ ਇਹ ਹੈ ਕਿ ਉਹਦੀ ਬੈਨ ਕਮ ਦਾ ਕੁਝ ਹੱਦ ਤੱਕ ਸਹੀ ਵੀ ਆ ਤੇ ਆ ਆ ਇਹ ਵੀ ਹੈਗੀ ਹੈ ਜੀ ਗੱਲ ਕਿ ਆ ਮੁਸਲਮਾਨ ਹੁਣ ਰਿਫਿਊਜੀ ਇੱਥੇ ਵੀ ਕੈਨੇਡਾ ਚ ਵੀ ਆਏ ਹੋਏ ਨੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਬੇਸ਼ ਕਰਦਾ ਮੈਂ ਤੇ ਆ ਕੋਲੋਨਾ ਜੀ ਤੇ ਮੇਰੇ ਅੰਕਲ ਦੇ ਫਾਰਮ ਨੇ ਤੇ ਉਹ ਕਹਿੰਦੇ ਮੈਂ ਗਰੋਸਰੀ ਸਟੋਰ ਗਿਆ ਸੀਗਾ ਤੇ ਉੱਤੇ ਮੈਨੂੰ ਦੋ ਕ ਵੀ ਰਿਫਿਊਜੀ ਮਿਲੇ ਉਹਨਾਂ ਨੂੰ ਮੈਂ ਪੁੱਛਿਆ ਕਿ ਆ ਜਾਓ ਬਈ ਹਾਂ ਵੀ ਕੰਮ ਕਰ ਲਓ ਇੱਥੇ ਉਹ ਕਹਿੰਦੇ ਨਾ ਆਈ ਆਈ ਆਈ ਵਿਲ ਨਾਟ ਵਰਕ ਕਿਉਂਕਿ ਉਹਨਾਂ ਨੂੰ ਫੈਡਰਲ ਵੱਲੋਂ ਪੈਸੇ ਮਿਲ ਰਹੇ ਨੇ ਸਾਲ-ਸਾਲ ਵਾਸਤੇ ਰਾਸ਼ਨ ਦੇ ਕਾਰਡ ਕ੍ਰੈਡਿਟ ਕਾਰਡ ਦਿੱਤੇ ਹੋਏ ਨੇ ਤੇ ਨੋ ਮਤਲਬ ਉਹ ਵੀ ਮਤਲਬ ਕੰਮ ਨਹੀਂ ਕਰ ਰਹੇ ਹੈਗੇ ਮਤਲਬ ਤੁਸੀਂ ਇਹ ਤੋਂ ਸੋਚ ਲੋਗੇ ਤੁਸੀਂ ਕਿ ਕਿਰਜੇ ਮਤਲਬ ਜੇ ਉਹਨਾਂ ਨੂੰ ਪੈਸਿਆਂ ਦੀ ਲੋੜ ਹੈਗੀ ਤਾਂ ਉਹ ਕੰਮ ਕਰ ਸਕਦੇ ਨੇ ਇੱਥੇ ਜਿੰਨਾ ਮਰਜ਼ੀ ਕੰਮ ਕਰ ਲੈਣ ਜੀ ਸ਼ਿਕਾ ਵੀ ਜੀ ਥੈਂਕ ਯੂ ਬਸ ਆਹੀ ਕਰਨਾ ਸੀ ਓਕੇ ਥੈਂਕ ਯੂ ਸਤੰਦਰ ਰੰਦਾਵਾ ਜੀ ਲਾਈਵ ਰਹੀ ਅਸੀਲ ਬਾਈ ਜੀ ਸਤਿ ਰੋਟੀ ਕਾੰਦੇ ਸਾਡੇ ਬਜ਼ੁਰਗ ਜਾ ਕੇ ਉਹਨਾਂ ਕੰਟਰੀਆਂ ਦੇ ਵਿੱਚ ਰੋਟੀ ਕਮਾ ਕੇ ਕੰਮ ਕਰਕੇ ਸਾਨੂੰ ਵਧੀਆ ਰੋਟੀ ਪਾਣੀ ਦਿੰਦੇ ਰਹੇ ਆ ਜਾ ਕੇ ਪਿੰਡ ਵਾਪਸ ਉਹ ਮੌਲਕਾਂ ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਇਹਨਾਂ ਨੇ ਗੱਲ ਛੇੜੀ ਪਹਿਲਾਂ ਨਾ ਕਸੂਰਤਾ ਇਹਨਾਂ ਦਾ ਆਪ ਦਾ ਉਹਨਾਂ ਦੇ ਜਾ ਕੇ ਬੰਦ ਸਿੱਟੇ ਉਹਨਾਂ ਨੂੰ ਡਿਸਟਰਬ ਕੀਤਾ ਤੁਸੀਂ ਆਹ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਹੁਣ ਸਾਊਦੀਆ ਦੇ ਨਹੀਂ ਇਹਨਾਂ ਨੇ ਮੰਦੀ ਲਾ ਮੁਸਲਮਾਨ ਕੰਟਰੀ ਆ ਧੂਣੀ ਵਾਲੀ ਉਹ ਜਿਹੜੀ ਧੂਣੀ ਵਾਲੀ ਆ ਉਸ ਤੇ ਸੇਖ ਸਾਨੂੰ ਵੀ ਲੱਗਣਾ ਇਹ ਭੁੱਲ ਜੀਏ ਗੱਲ ਵੀ ਇਹ ਮੁਸਲਮਾਨਾਂ ਨੂੰ ਕੱਲਿਆਂ ਨੂੰ ਲੱਗਣਾ ਇਹ ਸਾਨੂੰ ਵੀ ਸਹਿਣਾ ਪੈਣਾ ਆ ਸਾਡੇ ਬੱਚਿਆਂ ਨੂੰ ਹਾਲਾਤ ਇੱਥੇ ਤੱਕ ਆ ਜਾਣੇ ਆ ਜਿਹੜੀ ਇਹਨੇ ਧੂਣੀ ਵਾਲੀ ਜਦੋਂ ਭੰਬੜ ਵੰਡਣਾ ਸਾਡੇ ਜਵਾਕਾਂ ਨੂੰ ਕਿਸੇ ਨੇ ਜੋਬ ਨਹੀਂ ਦੇਣੀ ਤੇ ਸਾਡਾ ਇੱਥੇ ਰਹਿਣਾ ਮੁਸ਼ਕਲ ਹੋ ਜਾਣਾ ਸਾਨੂੰ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਬਹੁਤ ਸਾਡਾ ਖਰਾਬ ਹੋ ਜਾਣਾ ਹੈ ਸਾਨੂੰ ਉਹਨਾਂ ਨੇ ਉਸੇ ਲਈ ਦੇ ਵਿੱਚ ਬਰਨਾ ਹੌਲੀ ਹੌਲੀ ਇਹ ਅਸੀਂ ਚਾਹੁੰਦੇ ਆ ਇੱਕ ਤਾਂ ਗੁਰੂ ਸਾਹਿਬ ਨੇ ਸਾਡੇਆਂ ਨੇ ਦੱਸਿਆ ਵੀ ਭਾਈ ਸਾਰਿਆਂ ਦੇ ਨਾਲ ਹੋ ਕੇ ਤੁਰੋ ਜਿਹਦੇ ਨਾਲ ੱੱਟਾ ਹੁੰਦਾ ਤੇ ਜੇ ਇਹ ਵੀ ਨਹੀਂ ਤੇ ਜੇ ਅਸੀਂ ਆਪਦਾ ਫਿਊਚਰ ਵੇਖੀਏ ਤਾਂ ਸਾਡਾ ਇਹ ਮਤਲਬ ਬਣਦਾ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਹੈਲਪ ਕਰੀਏ ਉਹਨਾਂ ਨਾਲ ਸੁਰੀਏ ਮੁਜਾਰੇ ਕਰੀਏ ਜੋ ਵੀ ਉਹ ਚਾਹੁੰਦੇ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਹੋ ਕੇ ਤੁਰੀਏ ਇਹ ਨਾ ਸੋਚੀਏ ਕਿ ਉਹਨਾਂ ਦੇ ਘਰਾਂ ਅੱਗ ਲੱਗੀ ਆ ਕੋਈ ਗੱਲ ਨਹੀਂ ਸਾਡਾ ਤਾਂ ਸੇਫ ਆ ਅਸੀਂ ਅਸੀਂ ਉਹਨਾਂ ਦੇ ਵਿੱਚੋਂ ਹੀ ਆਉਂਦੇ ਆ ਹੌਲੀ ਹੌਲੀ ਵੇਖਿਓ ਉਹਨਾਂ ਨੇ ਕਿੱਥੇ ਧੱਕ ਲੈ ਆ ਵੇਖਿਓ ਉਹ ਵਿੱਚੇ ਹੀ ਅਸੀਂ ਆਉਂਦੇ ਨਾ ਸਾਹਿਬ ਦੀ ਠੀਕ ਹੈ ਕੋਗ ਵਸਦੇ ਉਹ ਦੇਸ਼ ਸੀ ਲਿਬੀਆ ਵੀ ਕੋਗ ਸੀ ਇਰਾਕ ਵੀ ਵਸਦਾ ਸੀ ਈਰਾਨ ਵੀ ਵਸਦਾ ਸੀ ਤੇ ਉਹਦੇ ਵਿੱਚ ਜੀ ਇਹਦੇ ਕੋਲ ਹਥਿਆਰ ਨੇ ਜੀ ਇਹ ਮਾੜਾ ਜੀ ਇਹਨੇ ਖੁਰਦ ਮਾਰਤੇ ਜੀ ਇਹਨੇ ਗੈਸਾਂ ਚ ਭੁੰਨਤੇ ਜੀ ਸਲਾਮ ਹੁਸੈਨ ਨੇ ਚਲੋ ਉਹਨੇ ਮਾੜੀ ਕੀਤੀ ਉਹ ਕਵੇਤ ਨੂੰ ਚੜ ਗਿਆ ਪੁੱਠੇ ਕੰਮ ਉਹਨੇ ਵੀ ਕੀਤੇ ਤੇ ਟਿਕਿਆ ਰਹਿਦਾ ਟਿਕਿਆ ਸੀ ਪਰ ਗਦਾਫੀ ਤਾਂ ਕਹਿੰਦਾ ਹੀ ਕੱਖ ਨਹੀਂ ਸੀ ਕਿਸੇ ਨੂੰ ਹੁਣ ਕੁਝ ਨਹੀਂ ਸੀ ਕਹਦਾ ਕਿਸੇ ਨੂੰ ਹੁਣ ਉੱਥੇ ਦੇ ਲੋਕ ਜਿਹੜੇ ਰੋਟੀ ਤੋਂ ਆਤਰ ਹੋ ਗਏ ਉਹ ਕਿੱਥੇ ਨੂੰ ਜਾਣ ਇਧਰ ਪਾਬੰਦੀ ਹੈ ਯੂਰਪ ਵਾਲੇ ਪਰਸੇ ਭਰਤਾ ਉਹਨਾਂ ਨੇ ਸਾਰੇ ਗਲਤ ਇਹ ਹੈ ਵੀ ਆਪਾਂ ਉਸੇ ਉਸ ਜਗ੍ਹਾ ਤੇ ਹੋਈਏ ਵਿਆਲਦ ਵਾਲੇ ਬੰਬ ਲੇਖਦੇ ਹੁਣ ਦੋ ਜਵਾਕ ਹੋਣ ਤੇ ਘਰ ਵਾਲੀ ਹੋਵੇ ਅਗਲਾ ਕਹਿੰਦਾ ਜਾਈਏ ਕਿੱਥੇ ਨੂੰ ਹੋਕਰ ਕਰੋਕਾ ਪਾ ਗਣਾ ਵੀ ਬੱਚਿਆਂ ਨੂੰ ਤਾਂ ਬਚਾਈਏ ਇਉਂ ਹੀ ਭੱਜਿਆ ਆਪਾਂ ਜਿਹੜੇ ਰਿਫਿਊਜੀ ਆ ਕੇ ਚਾ ਝੂਠੇ ਆ ਕੇ ਸੱਚੇ ਹੋ ਗਏ ਮਾਨ ਸਾਹਿਬ ਦੀਆਂ ਚਿੱਠੀਆਂ ਤੇ ਅੱਜ ਉਹਦੀਆਂ ਗੱਲਾਂ ਨਾ ਕਰਨਾ ਇੱਥੇ ਬੈਠੇ ਆ ਸਾਰੇ ਉਹਨਾਂ ਪੁੱਛ ਲਾਵੇ ਮਾਨ ਦਾ ਲੈਟਰ ਲਿਆਏ ਸੀ ਫਿਰ ਅੱਜ ਉਹਨੂੰ ਕੋਈ ਕਹਿੰਦਾ ਵੀ ਇਹ ਠੀਕ ਨਹੀਂ ਇਹਦਾ ਮਾਨਸਿਕ ਲੈਵਲ ਠੀਕ ਨਹੀਂ ਹੈ ਉਹ ਹੈ ਇਉਂ ਹੀ ਆ ਜਦ ਵਕਤ ਲੰਘ ਜਾਂਦਾ ਫਿਰ ਚੀਜ਼ਾਂ ਇਉਂ ਹੀ ਹੁੰਦੀਆਂ ਪਰ ਹੁਣ ਇਹ ਬਸ ਉਹ ਆਪਣੀ ਜਗ੍ਹਾ ਠੀਕ ਬੈਠਾ ਕਹਿੰਦਾ ਮੈਂ ਵਾਦਾ ਕੀਤਾ meri ginti kat rahi hai mere desh secure karna sab to pehla kujh ke leader ohnu keh rahe ne theek hai anglia markal keh rahi hai ke na theek nahi america de gal theek nahi hai par oh same token ya refugee ho te te hamla karde ne oh dukhi hai te canada wale passe khulli chutti hai bhajje phirdeya saadi mukhyamantri kehndi jinne marzi aun te udharon pradhan mantri kehda jinne marzi aun ਆਈ ਜਾਣ ਆਉਣ ਦੀ ਕੋਈ ਕਿਸੇ ਦੇ ਸਿਰ ਤੇ ਨਹੀਂ ਬੈਂਦਾ ਪਰ ਉਹਦੀ ਕਾਸਟ ਕੀ ਹੈ 35-3500 ਡਾਲਰ ਇੱਕ ਘਰ ਨੂੰ ਜਿਹੜਾ ਜਾ ਰਿਹਾ ਮਹੀਨੇ ਦਾ ਉਹ ਕੌਣ ਦੇ ਰਿਹਾ ਇਹ ਵੀ ਦੇਖੋ ਹੱਟੇ-ਕੱਟੇ ਬੰਦੇ ਜਿਹੜੇ ਜਵਾਕ ਪੈਦਾ ਕਰ ਸਕਦੇ ਆ ਉਹ ਕੇਂਦਰੀਆਂ ਦੇ ਵਿੱਚ ਫਾਰਮਾਂ ਦੇ ਵਿੱਚ ਕੰਸਟ੍ਰਕਸ਼ਨ ਦੇ ਵਿੱਚ ਟਰੱਕਾਂ ਦੇ ਵਿੱਚ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਵਰਕ ਪਰਮਿਟ ਉਹਨਾਂ ਨੂੰ ਕੰਮ ਕਰਨ ਦੀ ਉਹਨਾਂ ਦੇ ਹੱਥ 'ਚ 7 ਡਾਲਰ ਦਾ ਕੱਪ ਹੈ ਆ ਗਿਲਫਰ ਮਾਲ ਦੇ ਵਿੱਚ ਸਿਕਟੋ ਦੇ ਹੱਥ ਚ ਲਈ ਹੋਈ ਆ ਉਹਦਾ ਗੱਲ ਕਰਕੇ ਉਹ ਕਹਿੰਦਾ ਮੈਂ ਕਿਉਂ ਰੇਸ਼ਨ ਐ 슈ਗਰ ਅਰਬੀ ਚ ਕਹਿੰਦਾ ਉਹ ਕਹਿੰਦਾ ਮੈਂ ਕਿਉਂ ਕੰਮ ਕਰਾਂ ਕਹਿੰਦਾ ਖਾਣ ਨੂੰ ਮਿਲਦਾ ਜਵਾਕ ਨੇ ਆ ਪਰਲੇ ਬੰਨੇ ਸੈਂਡਮੈਨ ਇੱਚ ਰਹ ਰਹੇ ਆ ਤੂੰ ਕੀ ਕੱਟੀ ਪਈ ਆ ਉਹ ਪਤਾ ਨਹੀਂ ਹੁਣੇ ਕਿੱਥੋਂ ਜਾ ਕੇ ਰੁਕੂ ਗੱਲ ਇੱਕ ਬੰਨੇ ਇਨਸਾਨੀਅਤ ਐ ਜਿਨ੍ਹਾਂ ਦਾ ਹੱਥ ਫੜਨਾ ਪੈਣਾ ਦੂਜੇ ਬੰਨੇ ਦੇਸ਼ ਦੀਆਂ ਕਦਰਾਂ ਕੀਮਤਾਂ ਦੀ ਉਹ ਗੱਲ ਕਰਦੇ ਆ ਤੀਸਰਾ ਇਹ ਆ ਕਿ ਇਹਨਾਂ ਨੂੰ ਛੇੜਿਆ ਡੂਮਣਾ ਕੀਨੇ ਇਹ ਘੁਗ ਵਸਦੇ ਅਜਾੜੇ ਕਿਹਨੇ ਹਥਿਆਰ ਕਿਹਨੇ ਵਿੱਚ ਹਥਿਆਰ ਵੀ ਅਮਰੀਕਾ ਨੇ ਵੇਚਿਆ ਧੜਾ ਧੜ ਧੜਾ ਧੜ ਸਿੱਟਦਾ ਸਾਰਾ ਕੁਝ ਅਫਗਾਨਿਸਤਾਨ ਢਾ ਲਿਆ ਉਹਦੇ ਬਾਅਦ ਇਰਾਕ ਢਾ ਲਿਆ ਇਰਾਕ ਤੋਂ ਬਾਅਦ ਅਫਗਾਨਿਸਤਾਨ ਫਿਰ ਲਿਬੀਆ ਢਾ ਲਿਆ ਸਾਊਦੀ ਅਰਬ ਚੋਂ 20 ਆ ਕੇ ਜਿਨ੍ਹਾਂ ਨੇ ਬੰਬ ਆ ਕੇ ਜਹਾਜ਼ ਮਾਰੇ ਨੇ ਉਹਨਾਂ ਨੂੰ ਕਿਹਾ ਕੱਖ ਨਹੀਂ ਉੱਥੇ ਝੁੱਕ ਕੇ ਸਲਾਮਾ ਫਜ਼ਲ ਦੇ ਕਰਦੇ ਆ ਜਾ ਕੇ ਜਿਹੜਾ ਰਾਜਾ ਸੀ ਉਹਦੇ ਜਦ ਮਰਿਆ ਤੇ ਉੱਥੇ ਸਾਰੇ ਸਜਦਾ ਕਰਨ ਲੱਗੇ ਹੋ ਸੀ ਸਮਝ ਨਹੀਂ ਆਉਂਦੀ ਜਮੇ ਚੱਕਰ ਵੀ ਬਣਿਆ ਪਿਆ ਜਲੇਬੀਓ ਬਣਿਆ ਪਿਆ ਵਪਾਰਕ ਸੰਦੇਸ਼ ਏਸੀ ਜੀ ਦਾ ਪ੍ਰੋਗਰਾਮ ਬਖ ਬਖ ਹਿੱਸਿਆਂ ਦੇ ਵਿੱਚ ਦੀ ਲੰਘਾ ਕੇ ਇਹਨੂੰ ਆਪਾਂ ਲੈ ਕੇ ਆਏ ਆਂ ਰਾਜਨੀਤਿਕ ਪੈਂਤੜੇ ਦੇ ਵਿੱਚ ਆਪਣੇ ਆਪ ਨੂੰ ਸੈੱਟ ਰੱਖਿਆ ਕਰੋ ਥੋੜਾ ਜਿਹਾ ਖਿਆਲ ਨਾਲ ਰਹਿਆ ਕਰੋ ਇੱਕ ਦੂਜੇ ਦਾ ਮਾਣ ਸਤਿਕਾਰ ਰੱਖਿਆ ਕਰੋ ਝੂਠ ਝੂਠ ਹੈ ਸੱਚ ਸੱਚ ਹੈ ਪਾੜਗਿਰੀ ਨਾ ਕਰਿਆ ਕਰੋ ਤੇ ਕੱਲ ਨੂੰ 11 ਵਜੇ ਫੇਰ ਮੁਰਦਾ ਰਬ ਅੰਗ ਸੰਗਤ ਚੜ੍ਹਦੀ ਕਲਾ ਚ